ਕਹੂੰ ਪਏ ਕਿਨਰ ਪ੍ਰਸਾਦ ਕਹੂੰ ਪ੍ਰੇਤ ਹੋ ਕੌ ਜੱਛਕ ਧਰਵ ਜੱਛ ਇਹ ਦੇਵਤੇ ਦੇਵ ਲੋਕ ਦੇ ਵਿੱਚ ਪ੍ਰਾਣੀਆਂ ਅਸਨ ਦੇ ਵਿੱਚ ਇਹ ਜਾਤਾਂ ਦੇ ਆ ਜਿਹੜੀਆਂ ਜਾਤਾਂ ਇਹਨਾਂ ਨੇ ਬਾਅਦ ਚ ਬਣਾਇਆ ਬਣਾਏ ਹੋਏ ਨੇ ਪਹਿਲਾਂ ਇਹੀ ਹੁੰਦੇ ਸੀ ਜੱਛਕ ਧਰਵ ਕਿਨਰ ਔਰ ਗਦਰ ਵਿਦਾਇਤ ਆਰਫ ਯਾਨੀ ਕਿਤਾਬਾਂ ਚ ਕਾਨੂੰ ਸੀ ਗਣਜਛ ਅਪਛਰ ਨਿਰਤ ਦਿਖਾਵੇ ਜਛ ਸੀਗੇ ਵਚਣ ਵਾਲੇ ਗਦਰਬ ਰਗੀ ਕਰਤੀ ਬਜਾਉਣ ਵਾਲੇ ਸਾਜ ਬਜਾਉਣ ਵਾਲੇ ਸਿਰਫ ਕਿੱਦੜ ਕਾਉਣ ਵਾਲੇ ਸੀ ਸਾਜ਼ ਵਜਾਉਣ ਵਾਲੇ ਸਿਰ ਸਾਜ਼ੇ ਵਜਾਉਂਦੇ ਸੀ ਗਾਉਣ ਵਾਲੇ ਗਾਉਂਦੇ ਸੀ ਟੱchn ਵਾਲੇ ਨੱਚਦੇ ਸੀ ਉਦੇਸ਼ੀ ਧਾਰਮਿਕ ਤੇ ਉਹ ਜਿਹੜੇ ਉਹ ਗਾਇਨ ਚੱਲਣ ਗਾਇਨ ਕੇ ਲੈਣੇ ਸਨ ਹੈ ਸੀ ਧਰਮ ਦਾ ਹੀ ਪ੍ਰਚਾਰ ਹੁੰਦਾ ਪਰ ਉਹ ਨੱਚਦੇ ਵੀ ਸੀ ਗਾਉਂਦੇ ਵੀ ਸੀ ਸਾਜ਼ ਵੀ ਵਜਦੇ ਸੀ ਧਰਮ ਦਾ ਹੀ ਪ੍ਰਚਾਰ ਹੁੰਦਾ ਧਰਮ ਦੇ ਕਥਾ ਕਹਾਣੀਆਂ ਸੁਣਾਉਂਦੇ ਸੀ ਪਹਿਲਾਂ ਤਾਂ ਸੁਣਾਉਂਦੇ ਸੀਗੇ ਕੁਝ ਇਹ ਯਹੀ ਜਹ ਜਹ ਲਿਖਿਆ ਹੋਇਆ ਹੌਲੀ ਹੌਲੀ ਫਿਰ ਰਾਜਿਆਂ ਦੀਆਂ ਕਥਾ ਕਹਾਣੀਆਂ ਸੁਣਾਉਣ ਲੱਗੇ ਉਹਨਾਂ ਦੀ ਬੜੀਆਂ ਕੰਨ ਲੱਗੇ ਡਿੱਗਦਾ ਡਿੱਗਦਾ ਡਿੱਗਦਾ ਡਿੱਗਦਾ ਜਿਹੜਾ ਹੈ ਨਾ ਉਹ ਸਦਾਰ ਥੱਲੇ ਡਿੱਗ ਗਿਆ ਦੂਤ ਜਿਵੇਂ ਪਹਿਲਾਂ ਛੇਵੇਂ ਪਾਸ਼ਾ 12 ਜਿਹੜੀਆਂ ਗੁਰਬਾਣੀ ਚ ਨੇ ਉਹ ਸ਼ੁਰੂ ਕੀਤੀ ਸੀ ਊਡੂ ਡੁਪਟਾਂਗੇ ਗਾਈ ਜਾਂਦੇ ਨੇ ਯਾ ਤੇ ਢਾਡੀ ਆਪਣੇ ਆਪਣੀ ਹੀ ਇਹ ਗੁਰੂਆਂ ਦੀ ਇਤਿਹਾਸ ਦੀ ਬਾਰੇ ਇਹ ਨਹੀਂ ਸੀ ਇਹ ਮੈਂ ਬਣਾ ਸੀ ਗੁਰੂ ਘਰ ਤੇ ਥਾਸ ਬਣਾ ਹਾਂ ਤੁਹਾਡੀ ਗੁਰੂ ਪ੍ਰਵਾਨ ਜੋ ਹੋਵੇ ਗੁਰੂ ਬਾਗ ਦੇ ਵਿੱਚ ਤੁਹਾਡੇ ਨਾਨਕ ਆਪ ਨੂੰ ਆਹੋ ਤੁਹਾਡੇ ਦਾ ਜੀਤ ਹੋਰ ਉਤਮ ਜੀਤ ਕਹਿੰਦੇ ਜਿਹੜਾ ਹਰ ਜਾਸ ਕਰਦਾ ਉਹ ਡਾਡੀ ਜਿਹੜਾ ਹਰ ਜਾਸ ਨਹੀਂ ਕਰਦਾ ਡਾਡੀ ਨਹੀਂ ਹਰ ਜਾਸ ਕਰਨ ਵਾਲੇ ਡਾਡੀ ਦੂਜਾ ਨਹੀਂ ਡਾਡੀ ਜੋ ਕਹੂੰ ਜਾਤਛ ਗੰਦਰਬ ਉਰਗ ਕਹੂੰ ਵਿਦਿਆਧਰ ਕਹੋ ਵਿਦਿਆਧਰ ਵਿਦਿਆ ਵਿਦਵਾਨ ਵਿਦਿਆਧਰ ਵਿਦਿਆ ਪੜਨ ਵਾਲੇ ਕਹੂੰ ਪਏ ਕਿਨੇ ਦਾ ਪਿਛਾਜ ਕਹੂੰ ਪ੍ਰੇਤ ਹੋ ਕਿਤੇ ਕਿੰਨਾ ਰਹਿ ਤੂੰ ਇਹਦੀ ਕਿੰਨਰ ਦੇ ਵਿੱਚ ਵੀ ਉਹੀ ਆਤਮਾ ਹੈ ਉਹੀ ਹੁਕਮ ਹੈ ਸ਼ਬਦ ਹੈ ਉਹਨੂੰ ਸਿਖਾ ਦੇਣ ਵਾਲਾ ਉਤਰਾਤਮਾ ਦੀ ਆਵਾਜ਼ ਸਾਰਿਆਂ ਦੇ ਵਿੱਚ ਹੈ ਸਿੱਖਿਆ ਦੇਣ ਵਾਲਾ ਵੀ ਉਹੀ ਹੈ ਤੇ ਆਤਮਾ ਵੀ ਉਹੀ ਹੈ ਆਤਮਾ ਦਾ ਸਾਰਿਆਂ ਦੇ ਕੋਈ ਨਹੀਂ ਆਤਮਾ ਦੇ ਵਿੱਚ ਗੁਣ ਔਗਣ ਵਧ ਘਟ ਹੋ ਸਕਦੇ ਨੇ ਪਾਣੀ ਧਰਤੀ ਚੋਂ ਨਿਕਲ ਵਾਲਾ ਪਾਣੀ ਹੈ ਕਿਸੇ ਧਰਤੀ ਦਾ ਪਾਣੀ ਖਾਰਾ ਕਿਤੇ ਕੋਲਾ ਕਿਤੇ ਮਿੱਠਾ ਉਹ ਥੋੜਾ ਫਰਕ ਹੈ ਕਹਿੰਦੇ ਉਹਨੂੰ ਪਾਣੀ ਹੁੰਦੇ ਸਾਰੇ ਉਜਾਇ ਜੀ ਕੋ ਮਲਾਵਟ ਜੇ ਔਗਣਾ ਦੀ ਬਲਾਵਟ ਹੈ ਜਰੂਰ ਔਗਣਾ ਨੇ ਬਲਾਵਟ ਕਰਕੇ ਆਤਮਾ ਦੇ ਉੱਤੇ ਫਰਕ ਪਿਆ ਹੈ ਮਾਇਆ ਦਾ ਪ੍ਰਭਾਵ ਦੇ ਪ੍ਰਭਾਵ ਕਰਕੇ ਫਰਕ ਆ ਅਸੇ ਆਤਮਾ ਮੂਰੂ ਦੇ ਵਿੱਚ ਆਤਮਾ ਇੱਕੋ ਹੀ ਹੈ ਪਵਿੱਤਰ ਹੋ ਕੇ ਆਤਮਾ ਸਭ ਇੱਕੋ ਹੀ ਜੀ ਉਹ ਹੁਏ ਗਾਇਤਰੀ ਕੋ ਤੂੰ ਹਿੰਦੂ ਧਰਮ ਰੋਸ ਸਿਆਰ ਕੀਤਾ ਹੈ ਅਤਵਾਨਾ ਕੀਤਾ ਹੋਇਆ ਨਾ ਗਲਤ ਆਤਵਾਨੀ ਹੋ ਗਈ ਜੀ ਇੱਥੇ ਗਾਇਤਰੀ ਕੋ ਗੁਪਤੀ ਜਪਿਓ ਗਾਇਤਰੀ ਦਾ ਪਾਠ ਗੁਪਤ ਕਰਦੇ ਹੁੰਦੇ ਸੀ ਦੂਏ ਨੂੰ ਨਾ ਥੋੜੇ ਉਹ ਤਾਂ ਮਤਲਬ ਇਹ ਗਾਇਤਰੀ ਮੰਤਰ ਦਾ ਪਾਠ ਜਪਦਾ ਹੁਣ ਗਾਇਤਰੀ ਦੀ ਸਾਡੇ ਬੂਲ ਮੰਤਰ ਦਾ ਪਾਠ ਜਿ ਬਣਾ ਲੱਗਿਆ ਕੋਈ ਹੋਰ ਸ਼ਬਦੇ ਬਣਾ ਕੇ ਇਹ ਖੰਡਨ ਕੀਤਾ ਹੋਇਆ ਅਸਲ ਤੇ ਖੰਡਨ ਕੀਤਾ ਨਹੀਂ ਤਾਂ ਗਾਇਤਰੀ ਦਾ ਵੀ ਲਫ਼ਜ਼ ਤਾਂ ਗਾਇਤਰੀ ਤਾਂ ਵੀ ਠੀਕ ਨੇ ਇਹ ਉਹ ਗੱਲ ਤਾਂ ਸਾਡੇ ਆਲਾ ਵੀ ਗਲਤ ਹੈ ਇਹਨਾਂ ਨੇ ਘਮੋ ਹੀ ਰੱਖਿਆ ਸੰਧਾਬ ਸ਼ਬਦ ਨੂੰ ਇਹ ਬਦਲ ਨਾ ਜੀ ਹੋਂ ਤਾਂ ਅਸੀਂ ਗੁਰਬਾਣੀ ਜਪਦੇ ਹਾਂ ਕੈਸਰੀ ਤੇ ਜਪਦੇ ਨਹੀਂ ਪਖੰਡਵਾਦ ਉਬਾਲ ਲਿਆ ਉਹ ਜਿਵੇਂ ਇੱਕੋ ਵढਾਈ ਵੜਾਉਂਦੇ ਨੇ ਉਸੇ ਉਹ ਰੰਗ ਬਦਲ ਦਿੰਦੇ ਉਹਦਾ ਵੇਹਾਂ ਜ ਨਹੀਂ ਵੜਾਉਂਦੇ ਇਕੋ ਜਿਹੀ ਦੇ ਪਾੜ ਕੇ ਬਣਉਦੇ ਨੇ ਉਹਨਾਂ ਐ ਰੰਗ ਹੋਰ ਦੇ ਦੇ ਇਹ ਜਿਹੜੇ ਸ਼ਾਤਰ ਲੋਕ ਉਹਨਾਂ ਨੇ ਹਜੇ ਕੰਮ ਕਰ ਦੇ ਹੁੰਦੇ ਸੀ ਕਹੂੰ ਹੋਏ ਕਿ ਤੁਰਕਾ ਤੂੰ ਉੱਚੀ ਪੁਕਾਰ ਕੇ ਅਸਲ ਤੋ ਬੇੜਾ ਹੋ ਗਿਆ ਆਪਣੇ ਆਜ਼ਵੀਰੂ ਸੱਜਣ ਵਾਸਤੇ ਅਜ਼ਾਨ ਕਹਿੰਦੇ ਜੂੜੂ ਆਪਾਂ ਵਾਂਗ ਕਹਿੰਦੇ ਅਜ਼ਾਨ ਕਹਿੰਦੇ ਕੋਹੂੰ ਕੋਕ ਕਾਬ ਹੋਇ ਕੈ ਪ੍ਰਾਣ ਕੋ ਫੜਤ ਮਤ ਕਤੂੰ ਪ੍ਰਾਣ ਕੋ ਨਿਦਾਨ ਜਾਣ ਲੈ ਤੋ ਕੋਕ ਆ ਗਿਆ ਇੱਥੇ ਕੋਕ ਕਾਬ ਕੋਕ ਕਿਆ ਕਾਲਸਤ ਤੁੰ ਲਾ ਮੰਦੇ ਨੇ ਹੋ ਬਾਣੀ ਐ ਇੱਥੇ ਕੋਕ ਦੀ ਗੱਲ ਕਿਉਂ ਕਰਤੀ ਦਸਮ ਬਾਦਸ਼ਾ ਨੇ ਇੱਥੇ ਵੀ ਕੋਕ ਦੀ ਗੱਲ ਕਿਤੇ ਕੋਕ ਕਾਬ ਦਾ ਕੋਕ ਦੀ ਕਹਾਣੀ ਅੱਗੇ ਅੱਗੇ ਦੋ ਤਿੰਨ ਵਾਰ ਆਉਣਾ ਹੈ ਕੋਕ ਦੀ ਗੱਲ ਕਿ ਤੇ ਕੋਕ ਆ ਪੜਦਾ ਤੂੰ ਕੋਕ ਸ਼ਾਸਤਰ ਨੂੰ ਪੁਰਾਣਾ ਦੀ ਮੱਤ ਪੁਰਾਣਾ ਦੇ ਵਿੱਚ ਇਹ ਸਾਰੇ ਪੁਰਾਣਾ ਦੀਆਂ ਮੱਤਾਂ ਨੇ 18 ਪ੍ਰਾਣ ਕੋਕ ਦਾ ਵੀ ਇੱਕ ਵਿੱਚ ਉਹਦੇ ਚੈਪਟਰ ਚੈਪਟਰ ਪ੍ਰਾਣ ਕੋ ਪੜਤ ਦੀ ਮੱਤ ਇਹਦੇ ਇਸ਼ਾਰੇ ਹੱਥ ਦੇ ਵਿੱਚ ਵੀ ਨੇ ਆਦੀ ਬਣੀ ਜਾਣੀ ਗੱਲ ਕੋਖਦੀ ਹੋ ਕੀਤੀ ਹੋਈ ਹੈ ਕੰਮ ਆ ਰੂਪ ਹੈ ਦੋਸਤੀ ਭੁੱਖੇ ਸਾਦੇ ਗੰਢ ਭੁੱਖ ਦੀ ਗੱਲ ਹੈ ਰੂਪੇ ਕੰਮ ਤੇ ਦੋਸਤੀ ਭੁੱਖੇ ਸਾਦੇ ਗੰਢ ਦੋ ਸਚਾਈਆਂ ਨੇ ਰੂਪ ਔਰ ਕੰਮ ਤੁਸੀਂ ਸਚਾਈ ਕਿਸੇ ਤੇ ਨਹੀਂ ਮਤਕਰ ਹੋ ਸਕਦੇ ਦੋਸਤੀ ਦਾ ਬਤਨ ਦੋ ਸਚਾਈਆਂ ਦੋ ਸਚਾਇਾਨਾ ਇੱਕ ਦੂਏ ਦੀ ਕਦੂਏ ਵੱਲ ਖਿੱਚ ਹੈ ਆਕਰਸ਼ਨ ਐਡਾ ਬੜਾ ਸ਼ਕਤੀ ਹੈ ਕਿ ਮਤਬਾਰੀ ਬਈ ਆਦਮੀ ਜਿਹੜੀ ਆਦਮੀ ਦੀ ਮਤਬਾਰ ਕੇ ਆਪਣੇ ਚੁਗਲ ਦੇ ਵਿੱਚ ਸ਼ਕਤੀ ਨਿਕਲ ਨਹੀਂ ਦਿੰਦੀ ਉਹਨੂੰ ਇਕਨੋਰ ਕਰਦੇ ਹੋ ਤੁਸੀਂ ਇਕਨੋਰ ਦੁਸ਼ਮਣ ਦੀ ਤਾਕਤ ਨੂੰ ਜਿਹੜਾ ਇਕਨੋਰ ਕਰਦਾ ਮਰ ਜਾਂਦਾ ਦੁਸ਼ਮਣ ਦੀ ਤਾਕਤ ਨੂੰ ਧੀਪਲੀ ਸਟੱਡੀ ਕਰਨਾ ਚਾਹੀਦਾ ਇਹ ਸਾਰੇ ਸਾਡੇ ਵਕਾਰ ਦੁਸ਼ਮਣ ਦੇ ਦੁਸ਼ਮਣ ਦੀ ਜਿਹੜੀ ਤਾਕਤ ਹੈ ਨਾ ਉਹਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਉਹਦੀ ਤਾਕਤ ਨੂੰ ਫालतੂ ਜੇ ਸ਼ੇਰ ਦਾ ਦੁਸ਼ਮਣ ਹੈ ਤਾਂ ਉਹਨੂੰ ਸਵਾਦਾਇਰ ਬਣਾਉਣਾ ਚਾਹੀਦਾ ਕਹਿੰਦੇ ਨਾ ਕਿ ਗਿੱਦੜ ਮਾਰ ਜਾਈਏ ਤੇ ਸ਼ੇਰ ਦਾ ਸਬਾਨ ਲੱਗ ਜਾਈਦਾ ਕਹਦਾ ਕਿਉਂ ਕਹਿੰਦਾ ਕੀ ਬਦਾ ਜੰਗਲ ਦੇ ਉਹਰੇ ਸ਼ੇਰ ਨਿਕਲਿਆ ਵੇ ਫੇਰ ਤੁਹਾਨੂੰ ਉਹ ਨਹੀਂ ਘੜ ਰੋੜ ਦੇ ਲੋੜ ਸ਼ਿਕਾਰ ਘੜਨ ਚਾਹੀਏ ਕਿ ਦਰਦਾ ਤੇ ਸ਼ੇਰ ਦਸਮਾਨ ਲੈ ਕੇ ਜਾਈਦਾ ਸਿਆਣੇ ਤਾਂ ਹੈ ਕਹਿੰਨਾਂ ਨੇ ਤੇ ਚੱਲਿਓ ਤੁਸੀਂ ਨੱਥ ਪਾਉਣ ਬਕਾਰਾਂ ਦੇ ਤੁਹਾਨੂੰ ਦਾ ਕੀ ਮਤਲਬ ਹੈ ਤੁਹਾਨੂੰ ਦਾ ਬਕਾਰਾਂ ਨਾਲ ਲੜਨਾ ਨੱਥ ਪਾਉਣੀ ਸਟੱਡੀ ਤੁਸੀਂ ਉਹਨਾਂ ਨੂੰ ਕਰਦੇ ਨਹੀਂ ਤੁਸੀਂ ਸੱਜਰੇ ਨੱਥ ਪਾ ਲਓ ਉਹਨਾਂ ਦੇ ਇਹਨਾਂ ਲੋਕਾਂ ਨੂੰ ਧਰਮ ਦੇ ਕੋ ਮਤਲਬ ਹੀ ਨਹੀਂ ਨਾ ਏ ਧਰਮ ਜਾਣਦੇ ਨੇ ਨਾ ਇਹਨਾਂ ਨੂੰ پتہ ਧਰਮ ਦਾ ਕੀ ਹੈ ਨਾ ਇਹਨਾਂ ਨੇ ਧਰਮ ਕੋ ਪੜਨਾ ਉਹਦਾ ਚੈਪਟਰ 8 ਧਰਮ ਬੰਨ ਵਾਲਾ ਸਲਾਹਾਂ ਦਿੰਦੇ ਨੇ ਸਾਲੂ ਉਹਨਾਂ ਨੂੰ ਸਲਾਹਾਂ ਦਿੰਦੇ ਨੇ ਜਿਹੜੇ ਪਹਾੜ ਤੇ ਚੜ ਰਹੇ ਨੇ ਗਏ ਹੋਏ ਨੇ ਜਿਹੜੇ ਡੇੜੇ ਗਏ ਨੇ ਉਹਨਾਂ ਨੂੰ ਸਲਾਹਾਂ ਦਿੰਦੇ ਨੇ ਆਪ ਇਹਨਾਂ ਨੂੰ ਚੜ੍ਹਦੇ ਹੀ ਨਹੀਂ ਆਪ ਪਿੱਠ ਕਰੀ ਖੜੇ ਨੇ ਤੁਸੀਂ ਉਹਨਾਂ ਨੂੰ ਸਲਾਹਾਂ ਕੀ ਦਿੰਦੇ ਆਪ ਦੇਖੋ ਚੜ੍ਹ ਕੇ ਥੋੜਾ ਜਾ ਤੁਸੀਂ ਫਿਰ ਤੁਹਾਨੂੰ ਕਾਇਆ ਲੱਗੇ ਜਿਹੜਾ ਆਪ ਚੜ ਰਿਹਾ ਤਾਂ ਠੀਕ ਹੋਦਾ ਦੂਏ ਨੂੰ ਗੱਲ ਕਹੇ ਥੱਲੇ ਵਾਲੇ ਨੂੰ ਉਹ ਜਿਹੜਾ ਨੇੜੇ ਖੜਾ ਹੈ ਚੜਿਆ ਹੋਇਆ ਉਹਨੂੰ ਤੁਸੀਂ ਸੁਲਾ ਦੇਣ ਆਪ ਤੁਹਾਡੀ ਪਿੱਠ ਗਰੀ ਹੋਈ ਹੈ ਉਹਨੂੰ ਇਹਨਾਂ ਦੀ ਗੱਲ ਸੁਣੇ ਕੌਣ ਕਿਉਂ ਸੁਣੇ ਇਹਨਾਂ ਦੀ ਗੱਲ ਕੀ ਅਧਿਕਾਰ ਹੈ ਇਹਨੂੰ ਗੱਲ ਕਰਨ ਸਮਝ ਨਹੀਂ ਆਉਂਦੀ ਵੀ ਅਧਿਕਾਰ ਕੀ ਹੈ ਇਹਨੂੰ ਗੱਲ ਕਰਨ ਕਿਸ ਬੇਸਤੇ ਗੱਲ ਕਰ ਰਹੇ ਹਿੰਦੇ ਧਾਰਮਿਕ ਬੰਦੇ ਯਾ ਧਾਰਮਿਕ ਬੰਦਾ ਹੀ ਨਹੀਂ ਧਾਰਮਿਕ ਬੰਦੇ ਨੂੰ ਸਲਾਹ ਕਿਉਂ ਦੇ ਰਹੇ ਡਾਕਟਰ ਨੂੰ ਸਲਾਹ ਦੇ ਰਹੇ ਕੋਈ بڑا ਆਦਮੀ ਆਪ ਰੋਗੀ ਹੋ ਡਾਕਟਰ ਨੂੰ ਸਲਾਹ ਦੇ ਰਿਹਾ ਬਹੁਤ ਵਧੀਆ ਡਾਕਟਰ ਨੂੰ ਕੇ ਸਲਾਹ ਦੇ ਰੋਗੀ ਆਪ ਨੂੰ ਦੁਨੀਆ ਵਰਦੇ ਰੋਗ ਚ ਬੜੇ ਹੋੜ ਇਹ ਉਹਨਾਂ ਦੀ ਇਹ ਗੱਲ ਆਪਰਾ ਦੇ ਚੁੱਲੂ ਪਰ ਪਾਣੀ ਤੇ ਅੰਡੇ ਜੇ ਗੰਦਾ ਨਹੀਂ ਇਹ ਹੋਰ ਆਪ ਦਾ ਕੋਣ ਕੁਝ ਵੀ ਨਹੀਂ ਆਨੰਦ ਧਰਮ ਤਾਲਨ ਕਰਨਾ ਨਾ ਉਤੋਂ ਨੂੰ ਨਾ ਕੋਈ ਗੱਲ ਹੈ ਨਾ ਬਾਤ ਹੈ ਸੁਲਾ ਦੇ ਰਹੇ ਨੇ ਉਹਨਾਂ ਨੂੰ ਜਿਹੜੇ ਕਿਤੇ ਅਧ ਪਚਦ ਤੁਰੇ ਹੋਏ ਨੇ ਪਹਿਲਾਂ ਤੁਰੇ ਹੋયા ਨੇ ਮਗਰ ਤੁਰੇ ਹੋਏ ਨੂੰ ਸੁਣਿਆ ਵੀ ਹੋਇਆ ਅਗਲੇਾਂ ਤੇ ਪਹਿਲੇਾਂ ਤੇ ਜਿਹਨੇ ਮਗਰ ਲੱਗ ਕੇ ਤੁਰਿਆ ਨੇ ਉਹ ਵੀ ਤਾਂ ਕੋਈ ਠੀਕ ਹੈਗੀ ਕਹੂੰ ਕੋ ਕਾਬ ਹੋਏ ਕੇ ਪ੍ਰਾਣ ਕਿਤੇ ਕੋਕ ਹੋ ਕੇ ਪੁਰਾਣਾ ਦੀ ਮਤ ਪੜਨਾ ਹੂੰ ਕੁਰਾਨ ਨਿਦਾਨ ਜਾਣ ਲੈ ਤੋ ਕਾਟੋਂ ਕੁਰਾਨ ਕੁਰਾਨ ਕਿਤੇ ਕੁਰਾਨ ਨੂੰ ਦੇ ਭੇਦ ਨੇ ਜਿਹੜੇ ਕੁਰਾਨ ਦੇ ਭੇਦ ਉਹਨਾਂ ਨੂੰ ਸਮਝਦੇ ਮੁਸਲਮਾਨ ਹੋ ਕੇ ਕਹੂੰ ਬੇਦ ਰੀਤ ਕਹੂੰ ਤਾਸ਼ ਬਪਰੀਤ ਕਹੂੰ ਤਰਗੁਣ ਅਤੀਤ ਕਹੂੰ ਸੁਰਗੁਣ ਸਮੇਤ ਹੋ ਕਿਤੇ ਬੇਦ ਰੀਤ ਹੈ ਬੇਦ ਰੀਤ ਕਿੰਦ ਬੇਦ ਰੀਤ ਨਾਲ ਅੰਤਰਾਤ ਮਿਲਿਆ ਵਾਯਾ ਜੇ ਇਹ ਬੇਦ ਹੈ ਗਲਦ ਰੀਤ ਨਾ ਕਮੂੜ ਚਾਰਕ ਪੈਦਾ ਪਾਵਤ ਭੇਦਾ 베ਦਾ ਨੇ ਉਹਨਾਂ ਦਾ ਭੇਦ ਪਾਇਆ ਨਹੀਂ ਉਹ ਭੇਦਾ ਨੇ ਜਿਹੜਾ ਸੱਚ ਤੇ ਖੜਾ ਉਹਨਾਂ ਦਾ ਭੇਦ ਪਾਇਆ ਨਹੀਂ ਆ ਜਿਹੜਾ ਮਾਨਾ 420 ਸਿਆਂ ਕਰਦਾ ਉਹ ਨੂੰ ਸਿੱਖਿਆ ਦੇ ਰਿਹਾ ਮੂਰਖਾ ਜਿਹੜੇ ਉਹ ਭੇਦ ਦਾ ਕਰ ਰਿਹਾ ਹੈ ਜਿਹੜਾ ਉਹ ਤੁਰਦਾ ਉਹਦਾ ਭੇਦ ਹੈ ਨਹੀਂ ਤੈਨੂੰ ਕਿੱਥੇ ਹੋ ਗਿਆ ਗੁਰਮਤ ਦਾ ਇਹਨਾਂ ਨੂੰ ਕਿੱਥੋਂ ਭੇਦ ਹੋ ਗਿਆ ਗੁਰਮਤ ਨਾਨਕ ਨੇ ਬਣਾਈ ਆ ਜੇ ਗੁਰਮਤਿ ਦੀ ਗੱਲ ਪੁੱਛਣਵੇਂ ਫੇ ਵਿਦਵਾਨ ਦੋਵੇਂ ਜਵਾਬ ਤੁਸੀਂ ਦੋ ਤੇਨੂੰ ਕੀ ਹੋਇਆ ਤੇਰੇ ਸੁਣ ਹੁੰਦਾ ਤੂੰ ਦੇ ਜਵਾਬ ਜੇ ਗੁਰਮਤਿ ਦੀ ਗੱਲ ਕੋਈ ਪੁੱਛੇ ਫੇ ਜਵਾਬ ਕੋਈ ਹੋਰ ਦਵੇ ਉਹ ਗੁਰਮਤਿ ਆਪ ਲਿਖਦਾ ਰੋਜ਼ ਮੈਂ ਉਹ ਜਾਣਦਾ ਗੁਰਬਤ ਨਾਨਕ ਨਹੀਂ ਚਲਾਇਆ ਸੀ ਇਹ ਚਲਾਇਆ ਸੀ ਉਹ ਚਲਾਇਆ ਸੀ ਹੋਰ ਵੀ ਜਦ ਕੋਈ ਗੱਲ ਪੁੱਛਦਾ ਗੁਰਮਤਿ ਦਾ ਭੇਦ ਦੀ ਤਾਂ ਤੂੰ ਲੋਕਾ ਰੁਕਾਣਾ ਤੁਸੀਂ ਦੋ ਜਵਾਬ ਤੇ ਤੂੰ ਹੀ ਵਿਆਕਰ ਜਵਾਬ ਦੇ ਤੈਨੂੰ ਪਤਾ ਸਮਝਦਾ ਪਤਾ ਨਹੀਂ ਲੋਕਾਂ ਨੂੰ ਗਿਆਨ ਨਹੀਂ ਹੈ ਮੈਂ ਕੀ ਹਾਂ ਤੂੰ ਆ ਪਾਗਲ ਹੈ ਆਪ ਸਦਾਈ ਹੈ ਸਾਰੇ ਨੂੰ ਪਤਾ ਵੀ ਤੂੰ ਸਦਾਈ ਹੈ ਤੇ ਤੋਹਫਾ ਉਸਾਨੇ ਨੇ ਬੰਦੇ ਜਗਿੰਦਰ ਸਿੰਘ ਹੋਰ ਕਹਣ ਜਗਿੰਦਰ ਸੌਦੀ ਗੱਲ ਕਰਦਾ ਹਾਂ ਮੈਂ ਖਿਦੀ ਕਰਦਾ ਜਿਹੜੇ ਰੋਜ਼ ਖੁੱਲ ਗਏ ਜਾਂ ਕੋਈ ਸਵਾਲ ਪੁੱਛਦਾ ਫਿਰ ਤਾਂ ਵਿਦਵਾਨਾਂ ਨੂੰ ਕਹੇ ਵੀ ਤੁਸੀਂ ਦੱਸੋ ਉਹ ਕਹਿੰਦਾ ਬਾਬੇ ਨਾਲ ਗਨਮਾ ਚਲਾਈ ਸੀ ਜੀ ਉਹ ਕਲੋ ਦਾ ਆਰਟੀਕਲ ਨਹੀਂ ਪੜਿਆ ਬਾਬੇ ਨਾਲ ਗਨਮਾ ਚਲਾਈ ਦੀ ਤੇ ਰਾਜੇ ਰਬੀ ਲਿਓ ਕੀ ਚਲਾਈ ਸੀ ਨਾਲ ਦਾ ਨੂੰ ਪਤਾ ਨਹੀਂ ਲੱਗਾ ਕਿਸ ਨੂੰ ਸਵਾਲ ਲੈਣ ਦੇ ਕੋਈ ਬਾਤ ਨਹੀਂ ਹੋਇਆ ਉਹ ਚ ਜਿਹੜੀ ਸੌਖੀ ਹੋਈ ਆ ਇਹ ਉਹ ਤਾਂ ਕਹਿੰਦਾ ਕੋਟਰ ਨਾ ਕੋਟਰ ਮੈਂ ਨਾ ਨਾਨਕ ਦਾ ਕਹਿੰਦਾ ਹੈਂਡ ਬਿਰਲੇ ਨਹੀਂ ਘਣੇ ਕੋਈ ਬਿਰਲਾ ਤੂੰ ਕਹਿੰਦਾ ਬਹੁਤ ਸੋਖੀ ਮੱਤ। ਜੋ ਤਾਂ ਸਮਝਿਆ ਉਲਟਾ ਫਿਰ। ਪ੍ਰਵਾਨੀ ਨਹੀਂ ਬੰਦੀ ਹੈ। ਉਹਦਾ ਕਹਿੰਦਾ ਗਖੜੀਕਾਰ ਹੈ ਬਹੁਤ ਔਖੀ ਹੈ ਤੂੰ ਕਹਿੰਦਾ ਸੋਖੀ ਹੈ ਬਹੁਤ। ਤਾਂ ਕੁਝ ਹੋਰ ਸਮਝਿਆ ਹੋਇਆ। ਜਦ ਤੂੰ ਸਮਝੇਂਗਾ ਫਿਰ ਪਤਾ ਲੱਗੂਗਾ ਵੀ ਕੀ ਹੈ। ਕਹੂੰ ਬੇਦਰੀਤ ਕਹੂੰ ਤਾਂਸੋਂ ਬੇਦਰੀਤ। ਅਬੇ ਤੇਰਾ ਜੀਰੂ ਬੇਦ ਬੇਦਰੀਤਾ ਬੇਦ ਗਿਆਨ ਨੂੰ ਕਹਦੇ ਸੇ ਗਿਆਨ ਦੀ ਰੋਸ਼ਨੀ ਚੱਲਦਾ ਜਾਂ ਦੀਵਾ ਤੇਰੇ ਕੋਲ ਦਿੱਤਾ ਹੋਇਆ ਹੈ ਕਬੀਰ ਕੰਨ ਹਾਥ ਦੀਪ ਪੜ ਜਾਂ ਤੇਰਾ ਦੀਵਾ ਹੈ ਗਿਆਨ ਦਾ ਅਕਲ ਦਾ ਤੂੰ ਅਕਲ ਦੀ ਰੋਸ਼ਨੀ ਚੱਲ ਅੰਤਰਾਤਮਾ ਅਕਲ ਦਾ ਹੀ ਨਾ ਉਹਦੀ ਰੋਸ਼ਨੀ ਜਮਲੀ ਚੱਲਦਾ ਹੈ ਮਨ ਦੇਰੇ ਚੱਲਦਾ ਉਡਾਰੀਆਂ ਮਾਰਦਾ ਜੇ ਅਕਲ ਦੀ ਰੋਸ਼ਨੀ ਚ ਮੰਨ ਚੱਲੇ ਅਕਲ ਦੇ ਕਾਬੂ ਚ ਰਹਿ ਕੇ ਚੱਲੇ ਫਿਰ ਗਲਤੀਆਂ ਨਹੀਂ ਕਰਦਾ ਫਿਰ ਵਿਚਾਰ ਕੇ ਕੰਮ ਕਰਦਾ ਜਾਂ ਸੋਚ ਕੇ ਕਰਦਾ ਫਿਰ ਅਕਲ ਨੂੰ ਅਕਲ ਤਾਂ ਪੁੱਠਾ ਹੋ ਕੇ ਚੱਲਦਾ ਫਿਰ ਇਹ ਬੇਅਕਲੀ ਦਾ ਕੰਮ ਕਰਦਾ ਕੋਹ ਤਾਂ ਵਿਪਰੀਤ ਕਿਤੇ ਤਾਂ ਬੇਦਰੀਤ ਹੈ ਬੇਦਰੀਤ ਅੰਤਰਾ ਦੀ ਆਵਾਜ਼ ਹੈ ਵਿਪਰੀਤ ਕੀ ਹੈ ਵਿਪਰੀਤ ਕਲਪਨਾ ਫਿਰ ਸਾਡੀ ਆਪਣੀ ਸੋਚ ਹੈ ਨਾ ਵੇਦ ਰੀਤ ਤਾਂ ਕਹਿੰਦੀ ਹੈ ਹੁਕਮ ਦੇ ਨਾਲ ਚੱਲ ਕੁਦਰਤ ਦੇ ਨਾਲ ਚੱਲ ਆਪਣੀ ਮਰਜ਼ੀ ਹੈ ਸਾਡੀ ਕੁਦਰਤ ਤੋਂ ਵਿਰੋਧ ਕਰਦੀ ਹੈ ਉਹ ਇਹ ਵਿਪਰੀਤ ਹੈ ਦੋ ਤਰ੍ਹਾਂ ਦੇ ਹੁਕਮ ਨੇ ਮਨ ਭਾਗ ਦੇ ਇਹ ਵਿਪਰੀਤ ਹੈ ਬਾਣੇ ਚੱਲਣਾ ਵੇਦ ਹੈ ਵੇਦ ਚੱਲਣਾ ਬਾਣੇ ਚੱਲਣ ਨੁਕਸਾਨ ਹੋ ਗਿਆ ਕੋਈ ਨਹੀਂ ਭਾਈ ਹੋਣਾ ਹੀ ਸੀ ਹੋ ਗਿਆ ਇਹ ਵੇਦ ਰੀਤ ਕਿਉਂ ਹੋ ਗਿਆ ਉਹ ਲਗੜਾਈ ਕਰਨੀ ਘਰਦਿਆਂ ਵਾਲੇ ਜਿਹੇ ਕਹਤੇ ਹੋ ਗਿਆ ਇਹ ਵਿਪਰੀਤ ਹੈ। ਨੁਕਸਾਨ ਤਾਂ ਕਹਿੰਦਾ ਵੀ ਰੋਕਦਾ। ਵਿਚਾਰ ਕਰੀ ਚੱਲੇ। ਇਹ ਤਾਂ ਕਹਿ ਸਕਦਾ ਭਾਈ ਵਿਚਾਰ ਕਰੀ ਚੱਲੇ। ਤਾਂ ਜੋ ਵਿਪਰੀਤ ਕਹੂੰ ਤਰਗੁਣ ਅਤੀਤ ਕਹੂੰ ਜਿਹੜਾ ਬੇਦਰੀਤ ਉਹ ਜਿਹੜਾ ਬੇਦਰੀਤ ਉਹ ਤੇਰਗੁਣ ਅਤੀਤ ਹੋਊਗਾ। ਬੇਦਰੀਤ ਕਿ ਮਾਰਗ ਹੈ। ਸਦਾ ਸਟਾਰਟ ਬੇਦਰੀ ਤੋਂ ਹੁੰਦਾ ਸਟਾਰਟ ਅੰਤਰਾਧਮਨ ਦੇਖੋ ਨਾ ਸਟਾਰਟ ਤਾਂ ਕਿੱਥੋਂ ਹੁੰਦਾ ਸਟਾਰਟ ਕਿਥੋਂ ਆ ਦੇਵਤੇ ਤੇ ਦੇਵਤੇ ਕੀ ਦੇਵਤਾ ਬੇਦਰੀ ਹੈ ਉਹ ਤੇਰੇ ਅਤੀਤ ਹੋ ਜਾਂਦਾ ਸਿਲੇਬਸ ਰੋਜ਼ ਬਦਲਦਾ ਰੋਜ਼ ਅਕਲ ਵੱਧਦੀ ਉਹਦੀ ਰੋਜ਼ ਨਵੀਂ ਅਕਲ ਆਉਂਦੀ ਹੈ ਤੇ ਯਾਰ ਬੇ ਜੋ ਸਿੱਖਦਾ ਹੈ ਤਿਰਗੋਣਾ ਤੀਰ ਹੋ ਜਾਂਦਾ ਤਿਰਗੋਣਾ ਤੀਰ ਘੇਰ ਜੋ ਤਮਸਤੋ ਤੇ ਨਾ ਉਹਾਂ ਦੇ ਉੱਪਰ ਉੱਠ ਖੜਦਾ ਕਹੂੰ ਸੁਰਗਣ ਸਮੇਤ ਹੋ ਅਵਤਾਰ ਬਣਦੇ ਨੇ ਇਹਦੂ ਕੁਰਬਾਨੇ ਇਹਨਾਂ ਦੇ ਅਵਤਾਰਾਂ ਤੋਂ ਉੱਤੇ ਉੱਠਣ ਦੀ ਗੱਲ ਕਰ ਰਹੀ ਹੈ ਇਹ ਤਿਰਗਣ ਜਿਹੜੇ ਨੇ ਨਾ ਤਿੰਨਾਂ ਕੁੜਾਲੇ ਨੂੰ ਅਵਤਾਰ ਬਣਦੇ ਨੇ ਜਿਹੜਾ ਸਰਗੁਣ ਸੁਮੇਤ ਕਹਿੰਦੇ ਨੇ ਉਹ ਤਿੰਨ ਗੁਣ ਵਾਲੇ ਨੂੰ ਸਰਗੁਣ ਕਹਿੰਦੇ ਨੇ ਤਾਲ ਸੁਰ ਗੁਣ ਲਿਖਿਆ ਸਰਗੁਣ ਤੂੰ ਸਾਹਿਬ ਗੁਣੀ ਤੇ ਤੁਹਾਨੂੰ ਉਹਦੇ ਕੋਲ ਨੇ ਗੁਣ ਸਰਗੁਣ ਸੁਮੇਤ ਪਰਮੇਸ਼ਰ ਹੋਰ ਕੋਈ ਨਹੀਂ ਹੈ ਜੇ ਸਾਡੇ ਕੋਲ ਕੋਈ ਆਉਂਦੇ ਵੀ ਨਾ ਅਸੀਂ ਇਹ ਕਹਿੰਦੇ ਸਭ ਗੁਣ ਤੇਰੇ ਮੈਂ ਨਹੀਂ ਕੋਈ ਤਰਾਦਵਾ ਦੇ ਵਿੱਚ ਗੋਲ ਨੇ ਮੇਰੇ ਕੋਲ ਕੋਈ ਗੋਲ ਨਹੀਂ ਹੈ ਮੈਂ ਤਾਂ ਉਗਣਾ ਹਾਰਾ ਸੀ ਇਹਨੇ ਉਗਣਾ ਕਰਨਾ ਹੀ ਛੱਡਣਾ ਹੈ ਗੋਲਡੀ ਹਸਲ ਕਰਨਾ ਕੋਈ ਗੋਲਾਂ ਦਾ ਖਜ਼ਾਨਾ ਦਾ ਅੰਦਰ ਵਾਲੇ ਕੋਲ ਹੈ ਇਹਨੇ ਉਗੜ ਜਿਹੜੇ ਕਰੀ ਜਾਂਦਾ ਹੈ ਨੂੰ ਬੈਲੈਂਸ ਕਰੀ ਜਾਂਦਾ ਉਹਦੇ ਇਹਨੇ ਉਗਣ ਕਰਨਾ ਹੀ ਛੱਡਣਾ ਉਹਦੇ ਨਾਲ ਕੁਝ ਨਹੀਂ ਕਰਨਾ ਮੁੰਡੇ बस ਉਗਣਾ ਕਰਨਾ ਹੀ ਛੱਡ ਦੇ ਬਾਕੀ ਲੋੜ ਕੁਝ ਨਹੀਂ ਇਹ ਤੂੰ ਕਰ ਜੇ ਔਗੜ ਕਰਨਾ ਛੱਡਦੇ ਤੇਰ ਕੋਲ ਲਤੀਤ ਹੋ ਗਿਆ ਤੇਰ ਕੋਲ ਅਤੀਤ ਆਪੇ ਹੋ ਗਿਆ ਔਗੜ ਛੱਡ ਤੇ ਉਹ ਤਿੰਨੇ ਗੁਣ ਜਿਨ੍ਹਾਂ ਨੂੰ ਗੁਣ ਕਹਿੰਦੇ ਨੇ ਦੋ ਮਾਰ ਤਾਲੇ ਔਗੜਨੇ ਹੋ ਉਹਨਾਂ ਨੂੰ ਗੁਣ ਨੇ ਅਸਲ ਦੇ ਵਿੱਚ ਔਗੜਨੇ ਤਰੇ ਗੁਣ ਬੈਠੇ ਖਾਈਏ ਉਹੀ ਗੁਣ ਤਾਂ ਮਟਾਉਣੇ ਨੇ ਖਤਮ ਕਰਨੇ ਨੇ ਤਿੰਨੇ ਗੁਣ ਤਾਂ ਜੇ ਗੁੜ ਹੁੰਦੇ ਗੁੜ ਘਾਤ ਕਰੀਦੇ ਨੇ ਉਹ ਗੋਲ ਨੇ ਖਤਮ ਕਰੀ ਦੇ ਓਗੜ ਨੇ ਅਸਲ ਦੇ ਵਿੱਚ ਉਹ ਗੁਣ ਕਹਿੰਦੇ ਨੇ ਉਹਨਾਂ ਨੂੰ ਐ ਇੱਕ ਟੈਮਾਤ ਪੁੱਠੀ ਹੋਈ ਜਾ ਉਹਨਾਂ ਦੀ ਇੱਥੇ ਹੀ ਪਰੜ ਤਨੇ ਬਾਟ ਪਾੜੀ ਐ ਇੱਥੋਂ ਬਾਟ ਪਾੜੀ ਐ ਉਹਨਾਂ ਨੂੰ ਓਗੜਾਂ ਨੂੰ ਗੁਣ ਬਣ ਲਿਆ ਇਹ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਤਿੰਨੇ ਓਗੜ ਨੇ ਤਿੰਨਾਂ ਕੋਲੇ ਕਿਹ ਗੁਣ ਐ ਨਾ ਕੋਲ ਇੱਕ ਕੋ ਗੁਣਾ ਇੱਕ ਕੋ ਗੁਣਾ ਇੱਕ ਕੋ ਤਮ ਗੁਣਾ ਤਵਾੜ ਸ਼ਿਵ ਜੀ ਨੂੰ ਬਣਾਤਾ ਨਾ ਨੇ ਰੇ ਹੋੜ ਬ੍ਰਹਮਾ ਹੈਗਾ ਵਿਸ਼ਨੂੰ ਸਤੋਗੁਣ ਹੈ ਚਾਹੇ ਕੋਈ ਵਿਸ਼ਨੂੰ ਉਹ ਰੇਜ ਕੋਣ ਬੋਲਦਾ ਬ੍ਰਹਮਾ ਨੂੰ ਸਤੋਗੁਣ ਬੋਲਦਾ ਚਲੋ ਹੁਤਾ ਕੋਈ ਇਹਨੇ ਇਹ ਇਨ੍ਹਾਂ ਦੇ ਵਿੱਚ ਵੀ ਫਰਕ ਹੈ ਕੋ ਬ੍ਰਹਮ ਗਿਆਨੀ ਸਤੋਗੁਣ ਹੀ ਹੁੰਦਾ ਨਾ ਕੋਈ ਉਹ ਮੰਨਦਾ ਉਹਦੀ ਕੋਈ ਬਰਬਲ ਬਰਬਲ ਲੰਦਾ ਕੋਈ ਮੰਨੇ ਬਦਰਬਦਾ ਬੰਦਿਆ ਨੂੰ ਬੰਦਿਆ ਹੈ ਸਵਾਲ ਤਾਂ ਆਪਣਾ ਤਾਂ ਇਹ ਬੰਦਿਆ ਨੂੰ ਬੰਦਿਆ ਹੈ ਨਾ ਅਧੀਤਰ ਕੋਣਾਂ ਅਧੀਤੀ ਗੱਲ ਕਰਦੇ ਆ ਤਿੰਨ ਗੁਣਾ ਦੇ ਪਰ ਉੱਤੇ ਉੱਠ ਜਾਣਾ ਜਿਹੜਾ ਤਿੰਨ ਗੁਣਾ ਉੱਤੇ ਉੱਪਰ ਉੱਠ ਗਿਆ ਸੰਸਾਰਛਿ ਨਹੀਂ ਰਿਹਾ ਜਿਉਂਦਾ ਹੀ ਉਹ ਜੀਵਨ ਮੁਕਤ ਤ੍ਰਿਪੁਣ ਅਧੀਤ ਕਹੋ ਸਰਗੁਣ ਦੁਰਗਨ ਸਮੇਤ ਕੀਆ ਕੋਈ ਤਾਂ ajo devta hi hai devta hi ran kal da raj koi pahunch gaya jehda tere lutit ho gaya ugurbukh ho gaya jivan bhukt ho gaya oh jehda dua hai taaso vipreet kahu bedreet kahu taaso vipreet ohda vipreet ala oh do hai ohde ch ਉਹਦੇ ਦੇਵਤੇ ਵੀ ਉਹਦੇ ਵਿੱਚ ਨਾ ਰਾਖਸ਼ੀ ਉਹਦੇ ਵਿੱਚ ਹੀ ਨੇ ਉਹ ਜਿਹੜੇ ਦੇਵਤੇ ਵਿਗੜ ਗਏ ਨਾ ਜਿਹੜਾ ਦੁੱਧ ਉਹਦੇ ਦੇਵਤੇ ਕਹੋਂਦੇ ਨੇ ਨਾ ਧਾਰਮਿਕ ਬੰਦੇ ਕਹੋਂਦੇ ਨੇ ਤਾਂ ਗਾਂ ਤੁਰਦੇ ਨਹੀਂ ਉਹ ਕਹਣੇ ਚਾਲੇ ਤੇ ਯਾਰ ਮਿਲਣ ਕੋ ਬੀਚੇ ਅੜ ਗਿਆ ਚੀਤ ਜਿਹੜੇ ਉਹ ਨਾ ਨਾ ਬੰਦੇ ਉਹ ਰਾਖਸ਼ ਦੇਵਤੇ ਕੋਈ ਨਹੀਂ ਨੇ ਉਹਨਾਂ ਦੇ ਘੁੱਟ ਪੈਂਦੀ ਹੁੰਦੀ ਹੈ ਛੰਡੀ ਦੀ उड़े ਕੰਢੀ ਚਰਤਾਂ ਦੇ ਚਰਕੇ ਆ ਆਪਾਂ ਸਾਰਾ ਵਿਚਾਰ ਕੇ ਉਹ ਦੋਏ ਉਹ ਵਿਪਰੀਤ ਨਾ ਦੋਏ ਬੇਜਰੀਤ ਗੁਰਬਾਣੀ ਦੇ ਦੋਏ ਵਿਪਰੀਤ ਨੇ ਜਿੰਨੇ ਗੋਲਗਧਾਰੀ ਨੇ ਪਤਾ ਲੱਗੇ ਤੇ ਵੀ ਗੁਰਬਾਣੀ ਨੂੰ ਨਹੀਂ ਮੰਨਦੇ ਛੱਡਦੇ ਛੱਡਣੀ ਚਾਹੁੰਦੇ ਸੱਚ ਨੂੰ ਪੜਨ ਨਹੀਂ ਹੋਣ ਦੇਣਾ ਚਾਹੁੰਦੇ ਪਤਾ ਲੱਗੇ ਵਿਪਰੀਤ ਲੇਹੋ ਪਤਾ ਲੱਗੇ ਤੇ ਵੀ ਜਿਹੜੇ ਬੰਦੇ ਨੇ ਉਹ ਬੇਦਰੀਤ ਤੇ ਵਿਪਰੀਤ ਨਾ ਗੁਰਮਤ ਬੇਦਰੀਤ ਐ ਤੇ ਵਿਪਰੀਤ ਨਾ ਹੋ ਇਹਦੇ ਖਿਲਾਫ ਖੜੇ ਨੇ ਉਹ ਕਹੂੰ ਬੇਦਰੀਤ ਕਹੂੰ ਤਾਸਿਓ ਵਿਪਰੀਤ ਵਿਪਰੀਤ ਕਹੂੰ ਤੇਰ ਕੋਣ ਅਤੀਤ ਜਿਹੜੇ ਉਹ ਵਿਪਰੀਤ ਨਹੀਂ ਹੋਣਗੇ ਉਹ ਤੇਰ ਅਤੀਤ ਹੋ ਜਾਣਗੇ ਜਿਹੜੇ ਗੁਰਬਾਣੀ ਨੂੰ ਜਿਉਂ-ਜਿਉਂ ਸੱਚ ਦੇੜੇ ਆਉ ਕਬੂਲੀ ਜਾਣਗੇ ਜੋ ਜੋ ਸੱਚ ਦਾ ਪਤਾ ਲੱਗੂ ਕਬੂਲੀ ਜਾਣਗੇ ਉੱਤੇ ਟੋਣੇ ਤੀਤ ਹੋ ਜਾਣਗੇ ਇਹ ਕੈਟਾਗਰੀ ਹੋਰ ਦਸੀਓ ਇਹ ਤੋਂ ਕੋਈ ਹੋਰ ਕੈਟਾਗਰੀ ਨਹੀਂ ਜਿਹੜੇ ਡਟ ਕੇ ਵਿਰੋਧੀ ਹੋ ਜਾਣਗੇ ਉਹ ਖੁੱਲ ਕੇ ਵਿਰੋਧ ਕਰਨਗੇ ਵਿਰੋਧ ਅਸਲ ਦੇ ਵਿੱਚ ਬੇਦਰੀ ਦਾ ਨਹੀਂ ਕਰਦੇ ਹਨ ਦੇ ਵਿਰੋਧ ਰਾਖਸ਼ ਬੇਦਰੀ ਦਾ ਵਿਰੋਧ ਨਹੀਂ ਕਰਦੇ ਰਾਖਸ਼ ਉਸ মত ਦਾ ਵਿਰੋਧ ਕਰਦੇ ਨੇ ਜਿਹੜੀ ਬੇਦਰੀ ਤੇ ਉਲਟ ਪ੍ਰਚਾਰ ਕੀਤੀ ਜਾਂਦੀ ਹੈ ਦੇਵ ਤੇਵ ਲੋ ਪ੍ਰਚਾਰੀ ਜਾਂਦੀ ਜਿਵੇਂ ਆਪਣੇ ਹੁਣ ਧਰਮਾਂ ਚ ਪਰ ਸਾਰੇ ਜਿਵੇਂ ਸੰਤ ਪ੍ਰਚਾਰ ਕਰਦੇ ਨੇ ਉਹ ਪਰਮੇਸ਼ਰ ਹੈ ਉਹ ਨਹੀਂ ਹੈ ਪ੍ਰਚਾਰ ਕਰਦੇ ਨੇ ਜੇ ਹੈਗਾ ਤਾਂ ਦਰਸ਼ਨ ਕਰਾ ਕੇ ਦਿਖਾਉਣ ਜੇ ਹੈਗਾ ਤਾਂ ਦਰਸ਼ਨ ਕਰਾਉਣ ਉਹਦੇ ਸਮਝਾਉਣ ਉਹਦੇ ਬਾਰੇ ਗ੍ਰੰਥ ਲਿਖਣਾ ਲੈਕਚਰ ਕਰਨਾ ਕਿਤਾਬਾਂ ਸਾਬਤ ਕਰਨ ਉਹ ਗੱਲ ਸਾਬਤ ਨਹੀਂ ਹੁੰਦੀ ਜਿਹੜੀ ਇਹ ਕਹਿੰਦੇ ਨੇ ਆ ਗੱਲ ਸਾਬਤ ਹੁੰਦੀ ਹੈ ਜਿਹੜੀ ਉਹਦਾ ਇਹਨਾਂ ਨੂੰ ਪਤਾ ਕੋਈ ਨਹੀਂ ਜੋ ਗੱਲ ਕੁਰਬਾਨੀ ਸਾਬਤ ਕਰਦੀ ਉਹਦਾ ਗਿਆਨ ਕੋਈ ਨੀ ਜਿਹੜੀ ਉਹ ਕਹਿੰਦੇ ਨੇ ਉਹ ਹੈ ਕੋਈ ਨਹੀਂ ਜਿਹੜੀ ਹੈ ਕੋਈ ਨਹੀਂ ਉਹਨੂੰ ਮੰਨਦੇ ਨਹੀਂ ਜਿਹੜੇ ਉਹਨੂੰ ਸਾਰੀਆਂ ਹਮੇਸ਼ਾ ਹੀ ਰਹਿੰਦੀਆਂ ਨੇ ਦੀ ਗੱਲ ਕੀਤੀ ਹੈ ਪਾਸਦੀ ਨੀ ਨਾਲ ਹੈਗੀ ਇਹ ਕਿਰਗੁਣ ਆਤੀਤ ਕਹੋ ਸਰਗੁਣ ਸਮੇਤ ਹੋ ਹੁਣ ਹੈਗਾ ਹਰ ਵਕਤ ਰਹਿੰਦਾ ਹੈ ਪ੍ਰੈਜ਼ੈਂਟ ਟੈਂਸ ਦੀ ਗੱਲ ਹੈ ਐਨ ਵੀ ਸੀਗਾ ਹੁਣ ਹੈਰੀ ਇਹ ਹਮੇਸ਼ਾ ਹੀ ਐ ਰਹਿੰਦਾ ਔਰ ਐਵੇਂ ਹੀ ਰਹੂਗਾ ਜਿਹੜੇ ਮੰਨਦੇ ਨੇ ਨਾ ਇਹਨੂੰ ਬਾਣੀ ਭੱਜਣਗੇ ਤੇ ਜਾਦਾ ਭੱਜਣਗੇ ਉਹ ਇਹ ਜਾਦਾ ਛਾਲਾ ਜਗਾਊਗੀ ਕਿਉਂਕਿ ਸਿੱਧੀ ਇਹ ਗੱਲ ਹੈ ਅਕਾਲ ਉਸਤੇ ਤੈਨਾਂ ਕੋਈ ਚਿੰਤਾ ਕਰਦਾ ਕਿ ਇਹ ਨੂੰ ਬਣ ਕੇ ਦਿਖਾ ਲੋ ਉਹ ਤ੍ਰਿਯਾ ਜੀ ਦੇ ਕੋਲ ਪਾਸੇ ਰੱਖ ਦੋ ਤ੍ਰਿਯਾ ਜੀ ਤਾਂ ਤਾਂ ਬਾਤ ਦੀ ਗੱਲ ਹੈ ਪਹਿਲਾਂ ਇਹਨੂੰ ਤਾਂ ਬਣਨਾ ਤੇ ਇਹ ਸੌਖੀ ਗੱਲ ਨਹੀਂ ਫਿਰ ਜੇ ਇਹ ਨੂੰ ਗਏ ਤ੍ਰਿਯਾ ਜੀ ਦੇ ਤਰ ਤਾਂ ਰੜਕ ਲੈਣੀ ਅੱਖ ਚ ਪਾਇਆ ਹੋਇਆ ਫੇਰ ਨਹੀਂ ਤ੍ਰਿਯਾ ਜੀ ਦੇ ਕਹਿੰਦਾ ਉਹ ਕਹਿੰਦਾ ਹੀ ਉਹ ਨਾਲ ਜ ਰਹ ਜਣਾ ਇਹ ਨੂੰ ਨਹੀਂ ਬੰਦੇ ਜਿਹੜਾ ਤੇਰਹੋਣਾ ਦੀਦ ਉਹਨੂੰ ਕੁਛ ਵੀ ਨਹੀਂ ਹੈ ਉਹਦਾ ਸੰਸਾਰ ਨਾਲ ਸਰੀਰੋਂ ਜੁੜਿਆ ਹੋਇਆ ਹੀ ਨਹੀਂ ਤੇਰਹੋਣਾ ਦੀਦ ਇੱਥੇ ਹੀ ਹੋ ਜਾਣਾ ਜਾਬ ਸਾਹਿਬ ਤੇ ਬਾਅਦ ਆ ਜਿਹੜਾ ਹੈ ਨਾ ਅਕਾਲ ਉਸਤ ਇਹ ਤੇਰਹੋਣਾ ਦੀਦ ਇੱਥੇ ਹੋ ਗਿਆ ਤੇ ਗਾਂਹ ਜਾ ਉਹ ਤੇਰਹੋਣਾ ਹੋ ਗਈ ਫੜੂ ਨਾ ਫੇਰ ਉਹ ਜੇ ਤੇਰਹੋਣਾ ਦੀਦ ਹੋ ਕੇ ਨਹੀਂ ਬੜਦਾ ਫੇਰ ਉਹ ਰੜਕੂ ਗਈ ਇਹ ਤਾਂ ਸੰਸਾਰੀ ਆਦਮੀ ਹੈ ਪੇਤਾ ਸੰਸਾਰੀ ਐ ਸੰਸਾਰੀਆਂ ਨੂੰ ਐਦਾਂ ਹੀ ਭਗਤਾਂ ਦੇ ਜੋੜ ਕੇ ਦੇ ਨਾ ਆਇਆ ਗੱਲ ਭਗਤਾਂ ਦੀ ਐ ਪੜਦੇ ਸ ਸੰਸਾਰੀਆਂ ਤੁਸੀਂ ਦੇ ਪੜਨ ਵਾਲੀ ਉਹ ਗੱਲ ਨਹੀਂ ਐ ਉਹ ਭਗਤਾਂ ਦੇ ਪੜਨ ਵਾਲੀ ਖਾਲਸੇ ਦੇ ਪੜਨ ਵਾਲੀ ਐ ਪਹਿਲਾਂ ਤੇਰ ਕੋਣਾ ਅਤੀਤ ਹੋਵੇ ਫਿਰ ਪੜਿਓ ਫਿਰ ਪਤਾ ਲੱਗੂਗਾ ਵੀ ਉਹ ਕੀ ਐ ਹੁਣ ਕਹੂੰ ਦੇਵਤਾਨ ਕੇ ਦੀਵਾਨ ਮੈਂ ਬਿਰਾਜਮਾਨ ਕਹੂੰ ਦਾਨਵਾਨ ਕੋ ਗਮਾਨ ਮਤ ਦੇ ਤੋ ਕਹੂੰ ਦੇਵਤਾਨ ਕੇ ਦਿਵਾਨ ਮੇ ਦਿਵਾਨ ਮੇ ਬਰਾਜਮਾਨ ਕਿਤੇ ਦੇਵਤਿਆਂ ਦੇ ਦਿਵਾਨ ਦੇ ਵਿੱਚ ਬਰਾਜਮਾਨ ਜਿਹੜੇ ਬ੍ਰਹਮ ਗਿਆਨੀ ਹੁੰਦੇ ਨੇ ਦੇਵਤਾ ਦੇ ਦਰਬਾਰ 'ਚ ਜਾਂਦੇ ਹੀ ਰਹੇ ਨੇ ਗੁਰੂ ਸਾਹਿਬਾਨ ਜਾਂਦੇ ਹੀ ਰਹੇ ਨੇ ਗੁਰੂ ਦੇਵਤੇ ਹੀ ਹੁੰਦੇ ਨੇ ਜਿਹੜੇ ਸਿੱਖ ਸਤੂਦੀਏ ਸਾਰੇ ਦੇਵਤੇ ਹੀ ਸੀਗੇ ਜਿਹੜੇ ਅਰਦਾਸੇ ਬੈਠੇ ਹੁੰਦੇ ਸੀ ਉਹ ਦੇਵਤੇ ਤਾਂ ਬਣਾਈ ਸੀ ਉਹਨਾਂ ਨੇ ਕਿਸੇ ਦੀ ਗੱਲ नहीं ਗੱਲ गुरु ਘਰ ਦੀ ਹੈ ਸਾਰੀ ਇਹ ਇਹਨਾਂ ਨੂੰ ਲੱਗਦਾ ਪਤਾ ਨਹੀਂ ਕਿਹਦੀ ਗੱਲ ਹੈ ਗੱਲ ਹੰਡ ਵੀ ਇਹ ਸਾਰੀ ਗੁਰੂ ਘਰ ਦੀ ਹੋਈ ਹੈ ਆਪ ਦੇਵਤਾਂ ਦੇ ਦਵੰਚ ਦੀ ਵੰਦੇ ਦੱਸ ਪਾਸ਼ਾ ਜਿਹੜੇ ਲਿਖ ਰਹੇ ਨੇ ਕੀ ਆਤਮ ਕਥਾ ਦੀ ਹੈ ਉਹਨਾਂ ਦੀ ਉਹਨੇ ਖਾਲਸਾ ਸੀ ਦੇਵਤੇ ਨਹੀਂ ਦੀਵਾਨ ਮੈਂ ਬਿਰਾਜਮਾਨ ਦੀਵਾਨ ਮੈਂ ਬਿਰਾਜਮਾਨ ਕਹੂੰ ਦਾਨਵਾਨ ਦੇ ਤੋ ਉਹ ਦਾਨਵਾਨ ਕੋ ਗਵਾਨ ਤੋ ਉਹਦੇ ਵਿੱਚ ਵੀ ਤੂੰ ਸ਼ਬਦ ਪ੍ਰਗਟ ਹੈ ਕੀ ਪ੍ਰਗਟ ਹੈ ਜੋ ਕੁਝ ਕਹਿ ਰਹੇ ਨੇ ਦੱਸ ਪਾਚਾ ਕੀ ਕਹਿ ਰਹੇ ਨੇ ਉਹੀ ਤਾਂ ਕਹਿ ਰਹੇ ਨੇ ਜੋ ਹੁਕਮਾਂ ਹੁਕਮ ਦੀ ਵਿਆਖਿਆ ਕਰ ਰਹੇ ਨੇ ਕੋ ਆਪਣੇ ਕੋਲੋਂ ਕਹਿ ਰਹੇ ਨੇ ਉੜਕੀ ਬਾਣੀ ਉਹ ਦੱਸ ਰਹੇ ਨੇ ਉਹਨੂੰ ਭਾਈ ਜੋ ਹੁਕਮ ਆਇਆ ਹੁਕਮ 부ਝ ਕੇ 부ਝਾ ਰਹੇ ਨੇ ਨਾਨਕ ਗੁਰਮੁਖ ਪੂਜਾ ਪੂਜਾਏ ਇਹ ਗੁਰਮੁਖ ਦੇਸ ਦਿਖਾਏ ਜੋ ਨੇ ਦੇਖ ਲਿਆ ਹੁਕਮ ਉਹ ਦੂਸਰਾਂ ਦਾ ਦਰਸ਼ਨ ਕਰਾ ਰਹੇ ਹੋਰ ਕੀ ਸੀ ਹੁਕਮ ਸਾਰ ਹੈ ਹਾਂ ਜਗ੍ਹਾ ਹੋ ਵਰਤੇ ਹੈ ਜੋ ਵਰਤੇ ਸੋ 13 ਪਣ ਉਹੀ ਦੱਸ ਰਹੇ ਨੇ ਜੋ ਵਰਤ ਰਿਹਾ ਪਣ ਵੀ ਇੱਥੇ ਜੋ ਵਰਸਰੀ ਹੈ ਵਰਤ ਆਪਣੇ ਸਾਰੇ ਦੇ ਘਰ ਚ ਤੇ ਲਾਹੌਰ ਸ਼ਹਿਰ ਚ ਕੀ ਹੈ ਤੇ ਜਹਰ ਕਹਿਰ ਸਵਾ ਪਹਿਰ ਉੱਥੇ ਵੀ ਮਰਝ ਹੋ ਰਹੀ ਹੈ ਦੋਹੇ ਨਖਰੇ ਨੇ ਉੱਥੇ ਕੀ ਹੈ ਉੱਥੇ ਵੀ ਸੰਗਤ ਹੈ ਉੱਥੇ ਵੀ ਬੰਦੇ ਇਕੱਠਾ ਹੈ ਪਰ ਉਹਦੇ ਜਹਰ ਵਰਸ ਰਹੀ ਹੈ ਹਰ ਪਹਿਲ ਸਵਾਈ ਹੁੰਦੀ ਹੈ ਜ਼ਹਿਰ ਵਧਦੀ ਹੈ ਜਿਵੇਂ ਵੀ ਵਧੀ ਜਾਂਦਾ ਨਾ ਜੋਰ ਨਾਲ ਪਈ ਜਾਂਦਾ ਤੇ ਇੱਥੇ ਕੀ ਵਰਸਦਾ ਹੈ ਇੱਥੇ ਅਮਰਤ ਵਰਸਦਾ ਉਪਦੇਸ਼ ਦਾ ਨਾਮ ਵਰਸਦਾ ਤੇ ਅਮਰਤ ਵਰਸਦਾ ਕਹੂੰ ਦਾਮ ਦਾ ਸਾਡੇ ਸ਼ਿਫਤੀ ਸ਼ਿਫਤਾ ਪਰਮੇਸ਼ਰ ਤੇ ਸ਼ਿਫਤੀ ਦਾ ਕਾਰ ਹੈ ਸਰਤ ਵਰਸਦੀ ਗਏ ਉਥੇ ਅਮਰਤ ਵਰਸਦਾ ਤੇ ਲਹੌਰ ਦੇ ਵਿੱਚ ਹਕੂਮਤ ਹੈ ਸਰਕਾਰ ਹੈ ਪੈਸਾ ਜੋਰ ਹੈ ਜੋ ਲਵੇ ਉਹ ਤੇ ਜਹਰ ਵਰਸਦੀ ਔਰ ਕੀ ਵਰਸਦਾ ਇਹ ਗੱਲ ਸੀ ਰਕਸ਼ਾਇਤ ਖਾਇਆ ਸੀ ਉਹ ਉਸ ਵੇਲੇ ਦਾ ਹਰ ਵਕਤ ਨਹੀਂ ਜਹਰ ਕਹਰ ਵਰਸਦੀ ਔਰ ਵਰਸਦਾ ਉਸ ਵੇਲੇ ਵਰਸਦਾ ਸੀ ਉਸ ਵੇਲੇ ਦੀ ਗੱਲ ਕੀਤੀ ਸੀ ਵੀ ਇਸ ਵਕਤ ਆ ਹੋ ਰਿਹਾ ਹੈ ਕੀਤੀ ਸੀ ਉਦੋਂ ਹਾਂਜੀ ਕਹੂੰ ਦਾਨਵਾਨ ਕੋ ਗਮਾਨ ਮਤ ਦੇ ਤੋ ਕਿਤੇ ਦਾਨਵਾਨ ਨੂੰ ਗਵਾਨ ਮਤ ਦੇ ਨਾਲੇ ਦਾਨ ਕਰਾ ਲੈਣਾ ਉਤੇ ਨਾਲੇ ਉਹਨੂੰ ਹੰਕਾਰ ਹੋ ਜਾਂਦਾ ਉਹ ਹੂੰ ਓਈ ਗਿਆਨ ਕੋਲ ਗਿਆਨ ਹੋਈ ਹੈ ਦਾਨ ਵੀ ਕਰਤਾ ਉਸੇ ਗਿਆਨ ਹੋਇਆ ਗਿਆਨ ਦੇ ਕਰੀ ਵੀ ਬਣਾਤਾ ਦਾਨਵਾਨ ਕੋ ਗਮਾਨ ਮਤ ਦੇ ਤਾ ਗਿਆਨ ਮਤ ਦੇ ਦਾਨਵਾਂ ਦਾ ਇਹਨਾਂ ਬਤਾ ਕੀ ਕਰਦਾ ਇਹਨਾਂ ਦਾਨਵ ਕਰਦਾ ਉਹ ਦਾਨਵ ਤਾਂ ਦਾਨ ਕਰਦੇ ਹੀ ਨਹੀਂ ਦਾਨਤਾ ਬਦੇਵਤੇ ਕਰਦੇ ਹੁੰਦੇ ਨੇ ਧਰਮਗਤਮੀ ਕਰਦੇ ਹੁੰਦੇ ਨੇ ਦਰਵਾਦ ਇਹਨਾਂ ਗੱਲਾਂ ਉਹ ਨਹੀਂ ਮੰਨਦੇ ਬਈ ਹੁੰਦਾ ਦਰ ਹੁੰਦਾ ਹੈ ਦਾਨ ਕੋਈ ਚੀਜ਼ ਹੈ ਜਿਹੜਾ ਧਰਮ ਤੋਂ ਵਾਂਗ ਹੀ ਆ ਦਾਨ ਦੇ ਉਹ ਮਦਦ ਕਹਿੰਦਾ ਮੈਂ ਤੇਰੀ ਮਦਦ ਕੀਤੀ ਹੈ ਦਾਨ ਨਹੀਂ ਕਹਿੰਦਾ ਉਹ ਮਦਦ ਕਹੂਗਾ ਦਾਨ ਨਹੀਂ ਕਹਿੰਦਾ ਹੁੰਦਾ ਦਾਨਦਾਰ ਬੁੱਕਾ ਹੋਇਆ ਕਿਉਂ ਜੇ ਦਾਨ ਬਾਹਰ ਨੂੰ ਗਵਾਨ ਵਤ ਕਹਤਾ ਇਹਨੇ ਕਭੀ ਅਸੀਂ ਸਾਡਾ ਧਰਪਟਿਆ ਜਾਊਗਾ ਆ ਬੁਜਾ ਰਿਹਾ ਹੈ ਹੁਣ ਕਿਹਨੂੰ ਪਤਾ ਲੱਗੇ ਵੀ ਬੁਜਾ ਰਿਹਾ ਹੈ ਦਾਨ ਪੁੱਤ ਦੀ ਗੱਲ ਨੂੰ ਬੁਜਾ ਰਿਹਾ ਹੈ ਪੜ੍ਹ ਲਿਤਾ ਨਾ ਠੀਕਾਕਾਰ ਠੀਕਾਕਾਰ ਦਾਨਵਾਲ ਲਿਖਿਆ ਦਾਨਵਾਲ ਨੂੰ ਦਾਨਵ ਲਿਖਦਾ ਇਹਨੇ ਇਹ ਜੋੜੀਆਂ ਫੜਲੀਆਂ ਸੀਆਂ ਇਹ ਜੋੜੀਆਂ ਹੀ ਨੇ ਇਹਨਾਂ ਦੀਆਂ ਜਿਹੜੇ ਚੋਰੀਆਂ ਕੀਤੀਆਂ ਹੋਈਆਂ ਨੇ ਇਹਨਾਂ ਨੇ ਵੱਧ ਬੜਦੀ ਤੁਹਾਡੀ ਉਹ ਵਿਦਵਾਨ ਤਾਂ ਸੁੱਤੇ ਪਏ ਤੇ ਜਿਹੜੇ ਪਹਿਲੇ ਸੀ ਹੁਣ ਵਾਲੇ ਵੀ ਸੁੱਤੇ ਪਏ ਨੇ ਪਤਾ ਨਹੀਂ ਸਾਨੂੰ ਕਹਿੰਿਆ ਵੀ ਗੱਲ ਕੀ ਹੈ ਗੱਲੇ ਤੁਹਾਡੀ ਬਦਲਦੀ ਦਾਨਵਾਂ ਦਾ ਦਾਨ ਉਹ ਲਿਖਦਾ ਤੇ ਤੂੰ ਪੰਡਤ ਵੀ ਇਹ ਗੱਲ ਕੀ ਲਿਖਦੀ ਪੰਡਤ ਪਾੜੀ ਨਾ ਹੈ ਬੜਦਾ ਪੜ੍ਹਦਾ ਤਾਂ ਆਪਣੀ ਮਤਰੋ ਨੂੰ ਕਿਉਂ ਨਾ ਬਚਾਉਂਦਾ ਉਹਨੇ ਹਿੰਦੂਵਾਦ ਬਚਾਇਆ ਹਿੰਦੂਵਾਦ ਨਾਲ ਹੀ ਕੱਖ ਵੀ ਛੱਡਦਾ ਇਹ ਨੰਨੀ ਛੱਡਦਾ ਹੈ ਦਸ ਵਿੰਦੂ ਦਾ ਕੱਖ ਵੀ ਨਹੀਂ ਛੱਡਦਾ ਇਹ ਔਰ ਦਾਣ ਤੇ ਖਿਲਾਫ ਨਹੀਂ ਹੈ ਦਾਣ ਦਾ ਗੁਮਾਨ ਜੇ ਹੋ ਜਾਏ ਉਹ ਵੀ ਇਹ ਦੇਦੇ ਗੁਣਾ ਸੋਭ ਕਰੇ ਸੰਸਾਰ ਸੰਸਾਰ ਦੀ ਸੋਭਾ ਕਾਈ ਕਾ ਜਿਹੜੀ ਸੰਸਾਰ ਦੀ ਸੋਭਾ ਦੀ ਇੱਛਾ ਰੱਖਣੀ ਹੈ ਨਾ ਇਹ ਤੁਹਾਨੂੰ ਨਾਸ ਕਰ ਦੂਗੀ ਸਾਰੇ ਗੁਣ ਇਹਦੀ দান ਕਰਨ ਵਾਲਾ ਨਹੀਂ ਸੋਭਾ ਦੀ ਇੱਛਾ ਮੰਡੀ ਹੈ ਤੇ দান ਜੇ ਕਰੋਗੇ ਤੁਸੀਂ ਮੰਨ ਕੇ ਕਰੋਗੇ ਨਾ দান ਉਹਦਾ ਗਵਾਨ ਹੋ ਜਾਊਗਾ দান ਤੋਂ ਫਿਕਰ ਜਾਂ ਥੋੜਾ ਕੁਝ ਹੈ ਹੀ ਨਹੀਂ ਤੇ দান ਕਰਦਾ ਮੇਰੇ ਕੋਲ ਆਇਆ ਸੀ ਇਹਦਾ ਪੈਸਾ ਪਰ ਮੈਨੂੰ ਭੇਜਿਆ ਸੀ ਇਹ ਅੱਦ ਇਹਨੇ ਆਪਣਾ ਲੈ ਲਿਆ ਬਈ ਤਾਂ ਠੇਵਟੀ ਹੈ ਜੇ ਮੈਂ ਕਹਾਂ ਨਾ ਵੀ ਇਹਦਾ ਹੀ ਸੀ ਦਾਣੇ ਇਹਨੇ ਇਹਨੇ ਹੀ ਖਾਣੇ ਸੀ ਇਹਦੇ ਹੀ ਲਿਖੇ ਹੋਏ ਸੀ ਮੇਰੇ ਕੋਲ ਪਤਾ ਨਹੀਂ ਫਿਰ ਤਾਂ ਨਹੀਂ ਹੁਣ ਜੇ ਇਹ ਗੱਲ ਨਹੀਂ ਸਮਝੀ ਫਿਰ ਕਰ ਹੋਊਗਾ ਹੀ ਹੋਊਗਾ ਛੇ ਹੌਲੀ ਹੌਲੀ ਹੋ ਜਵੇ ਹਾਂਜੀ ਕਹੁਿੰਦਰ ਰਾਜਾ ਕੋ ਮਿਲਤ ਇੰਦਰ ਪਦਵੀ ਸੀ ਕਿਤੇ ਇੰਦਰ ਰਾਜੇ ਨੂੰ ਰਾਜਮਨ ਰਹਿ ਇੰਦਰ ਦੀ ਪਦਵੀ ਮਿਲ ਨਹੀਂ ਹੈ ਕਿਸੇ ਵਕਤ ਕਹੁਿੰਦਰ ਪਦਵੀ ਛਪਾਇਸ਼ੀਨ ਲੈ ਤੋ ਕਿਤੇ ਫਿਰ ਉਹ ਜਦ ਰਾਖਸ਼ ਨਜ਼ਰ ਆ ਜਾਂਦਾ ਇਧਰ ਵੇ ਮੋਰੇ ਮੋਰੇ ਰਾਖਸ਼ ਪਿੱਛੇ ਪਿੱਛੇ ਇੰਦਰ ਦਾ ਰਾਜ ਹੋਖੋ ਕਹਿੰਦੇ ਸੋ ਜੰਦਾ ਹੁਣੇ ਛਪਾਇਸ਼ੀਨ ਉਹ ਝੁਕਦਾ ਵਿਚਾਰਾ ਰਾਇ ਤਾਂ ਛਿੰਦਾ ਹੀ ਛਿੰਦਾ ਉਹ ਲੋਕ ਜਦ ਕਟਲੇ ਪੈਦਲੇ ਰਾਇ ਤਾਂ ਘੇ ਹੀ ਗਿਆ ਉੱਤੇ ਆਇਆ ਜੱਲੀ ਦੀ ਵਾਰ ਚ ਉਹੀ ਗੱਲ ਕਹਿ ਰਹੇ ਨੇ ਜੱਡੀ ਦੀ ਵਾਰ ਦਿਓ ਛੁਪਾਇ ਛੀਲ ਲੇ ਤੋ ਉਹਦਾ ਰਾਜ ਛਿੰ ਲਿਆ ਉਹ ਜਾਨ ਬਚਾਉਣਾ ਫਿਰਦਾ ਛੁਪਿਆ ਫਿਰਦਾ ਜੋ ਉੱਤੇ ਜੱਡੀ ਦੀ ਵਾਰ ਦੀ ਗੱਲ ਆ ਉਹੀ ਇੱਥੇ ਜੱਡੀ ਜਰਤ ਵਾਲੀ ਗੱਲ ਹੈ ਕਤੋਂ ਵਿਚਾਰ ਅ ਵਿਚਾਰ ਕੋ ਵਿਚਾਰ ਤੋਂ ਇੰਨਾ ਸੰਬੰਧ ਆਪਸ ਵਿੱਚ ਇਹਨਾਂ ਦਾ ਸਾਰੇ ਗ੍ਰੰਥ ਦਾ ਕੋਈ ਕਹਿ ਨਹੀਂ ਸਕਦਾ ਦੂਏ ਆਦਮੀ ਦੀ ਗੱਲ ਲਿਖੀ ਹੋਈ ਹੈ ਸਮਝੌਣੀ ਚਾਹੀਦੀ ਇਹਦਾ ਜਗਾ ਜਗਾ ਜਗਾ ਜਿਹਨੂੰ ਸਮਝ ਆਉ ਉਹ ਸਾਬਤ ਕਰ ਦੂਗਾ ਉਸੇ ਆਦਮੀ ਦੀ ਗੱਲ ਲਿਖੀ ਹੈ ਉਹ ਜਿਹੜਾ ਜੱਦੀ ਕਿਰਤਨ ਦਾ ਪਾਣਡਾ ਇੱਥੇ ਆ ਕੇ ਕਰਦਾ ਛਪਾਏ ਛੀਰ ਦੋਈ ਗੱਲਾਂ ਇਕੱਠੇ ਕਰਦੀ ਇਧਰ ਪਾਸ ਜਾਨ ਲਗੋਦਾ ਫਿਰਦਾ ਰਾਹੇ ਖੋਲੇ ਕਹੂੰ ਕਿਤੇ ਐਸੀ ਵਿਚਾਰ ਕਰਦਾ ਜਿਹੜੀ ਵਿਚਾਰਨ ਵਾਲੀ ਗੱਲ ਨਹੀਂ ਉਹਦੀ ਵਿਚਾਰ ਕਰਦਾ ਪੁੱਠੀ ਗੱਲ ਵਿਚਾਰਦਾ ਅੱਜ ਇਹ ਕਿਉਂ ਹੋ ਗਿਆ ਲਦਸ ਕੋਦ ਕਿਉਂ ਕਰਤਾ ਕੀ ਨਾ ਤਾਂ ਅੰਗੀ ਲੈਣਾ ਤੁਮਾ ਮਾ ਲੱਗਦਾ ਤੂੰ ਹਟਾ ਦੇਗਾ ਪੁੱਠੀ ਗੱਲ ਦੀ ਵਿਚਾਰ ਰ ਇਹ ਆ ਪੁੱਠੀ ਵਿਚਾਰ ਨਾ ਵਿਚਾਰ ਨਾਲ ਹੀ ਗੱਲ ਨਾ ਵਿਚਾਰ ਨਾਲ ਵਿਚਾਰੇ ਤੇ ਮਤ ਪੁੱਠੀ ਹੋ ਜਾਂਦੀ ਸਰਕਾਰਾਂ ਲੱਗੀਆਂ ਗਏ ਨੇ ਬਦਵਾਂ ਲੱਗੇ ਲਾਇ ਹੋਏ ਨੇ ਕਿਤੇ ਸਾਂ ਲਹਿਰਾਂ ਦਾ ਪਹਿਲਾਂ ਹੀ ਪਤਾ ਲੱਗ ਜੇ ਤੁਸੀਂ ਜਿੰਨਾ ਵਰਸੀ ਭੱਜ ਲੋ ਤੁਹਾਨੂੰ ਕੁਝ ਨਹੀਂ ਪਤਾ ਲੱਗਣਾ ਇਹ ਕੁ ਬਿਮਾਰੀ ਦਾ ਇਲਾਜ ਹੁੰਦਾ ਨਹੀਂ ਛੇ ਹੋਰ ਪੈਦਾ ਹੋ ਜਾਂਦੀਆਂ ਨੇ ਉਹ ਦੋ ਖਤਰਨਾਕ ਹੋ ਜਾਂਦੀਆਂ ਖਤਰਾ ਹੈ ਉਹ ਬਿਮਾਰੀਆਂ ਖੈ ਬੈਦਾ ਹੋ ਜਿਓ ਨੇ ਆਪ ਸੈਲ ਹੋ ਗਏ ਅੱਗੇ ਲੋਕ ਇਹਨੂੰ ਜਿਆਦਾ ਨੀ ਸੀ ਸਭਾ ਸਾਧੀਆਂ ਸਾਧੀਆਂ ਬਿਮਾਰੀਆਂ ਸੀ ਮਰਦੇ ਜਦਵੀ ਸੀ ਜੋ ਮਰਦੇ ਹੁੜ ਵੀ ਨੇ ਲੋਕ ਸੁਦੇਨ ਫਲੂ ਕਿਹੜਾ ਜਾਂਦਾ ਵਿਚਾਰ ਦੋ ਅਬ ਹੁੰਦਾ ਨਾ ਵਿਚਾਰਨ ਵਾਲੀ ਗੱਲ ਫਿਰ ਉਹ ਨੂੰ ਬਿਜਾਰ ਲੈ ਕਹੂੰ ਨਿੰਜਨਾਰ ਪਰ ਨਾਰ ਕੇ ਨਕੇਤ ਹੋ ਕਹੂੰ ਨਿੰਜਨਾਰ ਪਰ ਜਿਹੜੇ ਨਿੰਜ ਅਨਾਰ ਹੈ ਉਹਦਾ ਆਸਰਾ ਬਣਿਆ ਹੁੰਦੇ ਕਿ ਸਿਰਫ ਬੱਚੇ ਪਾਲਨੇ ਨੇ ਬਾਈ ਤੇ ਤਾਂ ਐਸੀ ਬੁਤਾਂ ਨਾ ਵਾਈ ਵਸ ਰੋਟੀ ਮਿਲੇ ਜਾਵੇ ਨਾਣੇ ਪਾਲ ਲਈਏ ਵਿਚਾਰਾ ਬਣਿਆ ਹੁੰਦੇ ਕਿਸੇ ਦਾ ਬੁਰਾ ਨਹੀਂ ਕਰਨਾ ਕਿਸੇ ਨਾਲ ਲੜਨਾ ਨਹੀਂ ਸਮਝਿਆ ਹੇ ਜੇ ਬਿਆਦ ਮੈਨ ਸੌ ਆਦਮੀ ਜਿਹਨੂੰ ਆਪਾਂ ਕਹਨੇ ਕਿ ਤੇ ਇਹ ਕਰਦੇ ਨਾਰ ਨਾਰ ਕੇ ਨਕੇ ਤੋ ਨਹੀਂ ਨਹੀਂ ਧਾਰ ਪਰ ਕਹੂਨੇ ਜੀ ਨਾਰ ਪਰ ਨਾਰ ਕੇ ਨਕੇ ਤੋ ਆਸਰਾ ਨਕੇ ਤੋ ਦਾ ਸਾਰਾ ਦਿਨ ਕਮਾਈ ਕਰਦਾ ਕੋਈ ਰਿਕਸ਼ਾ ਚਾਹਤ ਨਾ ਕੋਈ ਕੁਛ ਕਰਦਾ ਹੈ ਕੋਈ ਕੁਛ ਕਰਦਾ ਹੈ ਲਿ ਜਾ ਕੇ ਉਹਨਾਂ ਨੂੰ ਬੰਨਾ ਖਵਾ ਕੇ ਆਸਰਾ ਬਣਾਇਆ ਹੈ ਕਿ ਆਸਰੇ ਕਿਹਦੇ ਨਾਲ ਇਹ ਕਿਤੇ ਨਹੀਂ ਹੁੰਦੇ ਹਮ ਹਮ ਉੱਥੇ ਜਿਹੜੇ ਉਹਨਾਂ ਦੇ ਆਸਰੇ ਆਸਰੇ ਬਣਾ ਹੁੰਦੇ ਜਿੱਥੇ ਉਹਨਾਂ ਨੂੰ ਵਿਚਾਰੇ ਜਿਹਨਾਂ ਦੇ ਹੈਰੀ ਕੋਈ ਉਹਨਾਂ ਦੀ ਪਰਵਿਸ਼ ਹੁੰਦੀ ਪਰਵਿਸ਼ ਕਰਨਾ ਨਹੀਂ ਕਿਤੇ ਦੋਦੀ ਪਰਣਾ ਕਰਨਾ ਕਹੂੰ ਬੇਦਰੀਤ ਕਹੂੰ ਤਾਸ ਬਪਰੀਤ ਕਹੂੰ ਤਿਰਗੁਣ ਅਤੀਤ ਕਹੂੰ ਸੁਰਗੁਣ ਸਮੇਤ ਹੋ ਇਹ ਵੀ ਬੇਦਰੀਤ ਹੈ ਬੱਚੇ ਪਾਲਨੇ ਪਰ ਉਹਨੂੰ ਭੁੱਲ ਕੇ ਜੋ ਕਰ ਲਾਇਆ ਉਹਨੂੰ ਭੁੱਲ ਕੇ ਪਾਲਨੇ ਬੇਵਕੂਫੀ ਹੈ ਬੱਚੇ ਪਾਲਨੇ ਕੋ ਮਾੜੀ ਨਹੀਂ ਹੈ ਗੱਲ ਹੈ ਬੇਦਰੀਤ ਹੀ ਹੈ ਔਰ ਜਿਹੜਾ ਕੰਮ ਕਰਨਾ ਹੈ ਉਹਨੂੰ ਭੁੱਲ ਕੇ ਬਾਹਰ ਨੇ ਪਾਗਲ ਪਾਣ। ਅਪਰਾਧ ਕੋਈ ਨਹੀਂ ਇਹ ਪਾਗਲ ਪਾਣਾ। ਘਾਟਾ ਗਲਤੀ ਗੱਲ ਹੈ। ਉਹ ਜੋ ਹੱਥ ਪੈਰ ਕਰ ਖਪਸਾ ਵੀ ਚੀਤ ਨਾ ਜਣਾ। ਉਹ ਚੀਤ ਨਾ ਜਣਾ ਰੱਖਣ ਵਾਲੀ ਜਿਹੜੀ ਗੱਲ ਨੂੰ ਭੁੱਲਣਾ ਉਹ ਪਾਗਲ ਪਾਣਾ ਹੈ। ਬੱਚੇ ਪਾੜਨਾ ਕੋਈ ਬਾਣੀ ਦਾ। ਉਹ ਚੁੱਧੀ ਗੱਲ ਹੈ। ਪਾੜਨੇ ਚਾਹੀਦੇ। ਇਹ ਬੇਦੇਈ ਤੇ। ਉਦੂ ਹੀ ਵਿਪਰੀਤ ਨਹੀਂ ਐ ਪਰ ਬੂਰ ਖਾਲੀ ਗੱਲ ਐ ਥੋੜੀ ਜੀ ਘਾਟਕ ਵਾਲੀ ਗੱਲ ਐ ਸੁਤਿਆ ਨਾਲ ਬਹਿਣ ਦੀ ਗੱਲ ਐ ਕਰਦਾ ਨਹੀਂ ਹੁੰਦਾ ਰਹਿਣ ਬਹਿਣੀ ਸੁਤਾ ਗੱਲ ਹਾਂ ਕਹੂੰ ਸ਼ਸਤਰ ਕਹੂੰ ਵਿਦਿਆ ਕੇ ਵਿਚਾਰੀ ਕਿਤੇ ਸ਼ਸਤਰ ਧਾਰੀ ਕਿਤੇ ਵਿਦਿਆ ਕੇ ਵਿਚਾਰੀ ਔਰ ਦੋ ਕਹਾੜਾ ਕਰੀਏ ਸੀ ਸ਼ਸਤਧਾਰੀ ਵਿਦਿਆਕੇ के ਸੀ ਵਿਦਿਆਕੇ ਵਿਚਾਰੀ ਸ਼ਸਤਧਾਰੀ ਲਈ ਸੀ ਪਹਿਲਾਂ ਸ਼ਸਤਧਾਰੀ আর ਵਿਦਿਆਕੇ ਵਿਚਾਰੀ ਇਕੱਠੇ ਹੁੰਦੇ ਸੀ ਜਿਹੜਾ ਪੰਡਤ ਹੈ ਸ਼ਸਤਧਾਰੀ ਵੀ ਸੀ ਵਿਦਿਆਕੇ ਵਿਚਾਰੀ ਵੀ ਸੀ ਉਹ 라वण ਸੀਗਾ ਵਿਦਿਆਕੇ ਵਿਚਾਰੀ ਵੀ ਐ ਸ਼ਸਤਧਾਰੀ ਵੀ ਐ ਅਸਲ ਵਿੱਚ ਪੁਜੋਹਤ ਜਿਹੜਾ ਲਫਜ਼ ਹੈ ਪੁਜੋਹਤ ਪੰਡਤ ਰਾਜ ਕਰਦਾ ਰਿਹਾ ਹੈ ਸ਼ੁਰੂ ਵਿੱਚ ਪਹਿਲਾਂ ਯਾਦ ਮੈਂ ਕਹਿਣਾ ਨੇ ਪੰਡਤ ਬਾਮਣ ਜਿਹੜਾ ਰਾਜ ਹੈ ਜਿਆ ਰਾਵਣ ਦਾ ਚਲੇਗਾ ਪੰਡਨ ਦਾ ਰਾਜ ਜਿੱਤੇ ਖਤਮ ਹੋ ਗਿਆ ਪਰ ਸ਼੍ਰਾਮ ਛਤਰੀਆਂ ਦੇ ਖਿਲਾਫ ਰਿਹਾ ਪਰ ਸ਼੍ਰਾਮ ਵੀ ਕਹਾਣੀ ਬਣਾ ਲਈ ਕਿ ਉਹ ਸ਼ਤਤਧਾਰੀ ਉਹ ਵੀ ਇਹਨਾਂ ਨੂੰ ਜਾਣ ਕੇ ਬਣਾਈ ਹੋਈ ਹੈ ਜਿਹੜਾ ਲਫਜ਼ ਪ੍ਰੋਹਦ ਰਾਜ ਦੇ ਪਥਾਇ ਲਫਜ਼ਾਇਆ ਹੋਇਆ ਉਹਦਾ ਮਤਲਬ ਪਰੋ ਹਿਤ ਦਾ ਭਲਾ ਕਰਨਾ ਆਪਣਾ ਨਹੀਂ ਕਰਨਾ ਰਾਜਾ ਹਵੇਜਾ ਦੂਸਰੇ ਦੇ ਭਲੇ ਵਾਸਤੇ ਜਿਹੜਾ ਰਾਜਾ ਦੂਸਰੇ ਦੇ ਭਲੇ ਵਾਸਤੇ ਨਹੀਂ ਹੋ ਰਾਜਾ ਨਹੀਂ ਨੇ ਉਹ ਰਾਜਾ ਨਹੀਂ ਉਹ ਨੂੰ ਰਾਜਾ ਨਹੀਂ ਬਣਿਆ ਜਾ ਸਕਦਾ ਉਹ ਅਬਰਾਦੀ ਹੈ ਰਾਜ ਤੇ ਬੈਠ ਕੇ ਨਾਲ ਕੰਮ ਨਹੀਂ ਕਰਦਾ ਉਹ ਹੈ ਰਾਜ ਤਾਂ ਉਹ ਦੂਸਰਾਂ ਦਾ ਹਿੱਤ ਕਰਨ ਵਾਸਤੇ ਦਿੱਤਾ ਪਾਵਰ ਉਹਨੂੰ ਕਿਉਂ ਦਿੱਤੀਏ ਦੂਸਰੇ ਦਾ ਭਲਾ ਕਰਨ ਵਾਸਤੇ ਦਿੱਤੀਏ ਜੇ ਉਹ ਕਰਦਾ ਨਹੀਂ ਫਿਰ ਉਹ ਅਬਰਾਦੀ ਹੈ ਬੈਦਰੀ ਦੇ ਵਿਪਰੀਤ ਹਨ ਉਹ ਨਿਯਮ ਤੇ ਖਲਾਫ ਹੈ ਨਾ ਉਹ ਕੁਦਰਤ ਦੇ ਨਿਯਮ ਤੇ ਖਲਾਫ ਹੈ ਰਾਜ ਕਰਨਾ ਵਾਲਾ ਨਹੀਂ ਪਰ ਭੁੱਲ ਕੇ ਮਾਰੇ ਉਹ ਇਹ ਰਾਜ ਨਹੀਂ ਹੋ ਸਕਦਾ ਭਗਤੀ ਨਹੀਂ ਹੋ ਸਕਦੀ ਫਿਰ ਅੱਜ ਦੇ ਡੇਢ ਤੇ ਰਾਜ ਨਹੀਂ ਹੋ ਸਕਦਾ ਭਗਤੀ ਨੂੰ ਸੁਨਾ ਹੁੰਦਾ ਉਹ ਸਮਾਸੀਗਾ ਜਾਂ ਸਮਾ ਫੇਰ ਆਉ ਫਿਰ ਦੇਖੀ ਜੋ ਆਰਾਦੀ ਛੜ ਖੜੀ ਵੜੀ ਹੈ ਇੱਛਾ ਨਹੀਂ ਕਰਨੀ ਕੋਈ। ਇਹਨੂੰ ਇੱਛਾ ਹੀ ਨਹੀਂ ਹੈ। ਉਹਦੇ ਗਲ ਪਿਆ ਢੋਲ ਵਜਾਊਗਾ ਉਹ। ਉਹ ਗਲ ਪਿਆ ਢੋਲ ਵਜਾਉਂਦਾ ਹੁੰਦਾ। ਉਹ ਨਹੀਂ ਕਰਦਾ ਉਹ ਰਾਜ। ਜੇ ਦੀ ਇੱਛਾ ਲਈ ਸਰਤੇ ਰਾਜ ਚ ਰੋ। ਭਗਤੀ ਦੇ ਤੇ ਲਗੂ। ਸਿੱਖੀ ਦੇ ਤੇ ਵੀ ਸਰਤੇ ਲਗੂ। ਦੋਏ ਕੰਮ ਪਰਨਤ ਕਰਦਾ ਸੀ। ਰਾਜ ਕਰਨ ਵਾਸਤੇ ਸ਼ਾਸਤਰ ਤਾਂ ਹੋਣਾ ਪਊਗਾ। ਕੀ ਹੋਇਆ? ਉਹ ਤਵਾੜੇ ਹੌਲੀ ਹੌਲੀ ਹੌਲੀ ਹੌਲੀ ਪਹਿਲਾਂ ਇਹਨਾਂ ਨੇ ਵਿਰੋਧ ਕੀਤਾ ਆਰੰਭ ਚ ਦਲ ਦਾ ਤੇ ਰਗ ਨਹੀਂ ਦਿੱਤਾ ਫੜਨ ਦਾ ਵੀਰ ਅਪਰਮਾ ਤੇਰਾ ਦੋਸ ਹੈ ਤੇ ਪੰਡਤ ਮਾਰਿਆ ਨੇ ਬ੍ਰਾਹਮਣ ਮਾਰਿਆ ਰਾਵਣ ਮਾਰਿਆ ਸੀ ਤੋ ਆ ਅਗਰ ਇਹਨਾਂ ਦੀ ਪਾਵਰ ਖਤਮ ਹੋ ਗਈ ਭੁੱਖੇ ਮਾਰ ਲੱਗੇ ਹਥਿਆਰ ਫਿਰ ਤੇ ਫੇਰਾਂ ਦੇ ਕੰਪਰੋਮਾਈਜ਼ ਕਰ ਲਿਆ ਰਾਜੇ ਨਾਲ ਰਾਜੇ ਨੇ ਮੰਤਰੀ ਬਣਾ ਲਿਆ ਇਹਨਾਂ ਨੂੰ ਵੀ ਰਾਜ ਦਾ ਖਿਆਲ ਛੱਡ ਦੋ ਮੰਤਰੀ ਬਣ ਜਾਓ ਰਾਜਾ ਖਿਆਲ ਛੱਡਦਾ ਬੁਤਰੀ ਬਣਾਤਾ ਇੱਕ ਕਨਾਲ ਸ਼ਰਤ ਰੱਖਤੀ ਵੀ ਬੇਰ ਦੀ ਜਿਹੜੀ ਫਲਸਫੀ ਉਹ ਬਦਲ ਨਹੀਂ ਪਾਉਗੀ ਕੋ ਬੇਰ ਦਾ ਰਾਜਾ ਬੰਦਾ ਨਹੀਂ ਰਾਜੇ ਦਾ ਰਾਜ ਨਹੀਂ ਬੰਦਾ ਬੇ ਗੁਰਬਾਣੀ ਦਾ ਰਾਜ ਨਹੀਂ ਬੰਦਾ ਇਹ ਪ੍ਰਚਾਰ ਬਦਲੋ ਇਹ ਭੁੱਖ ਦੇ ਧੋਖੇ ਪੜਦਨੇ ਬਾਟ ਪੜੀਏ ਸਮਝ ਨਹੀਂ ਪੜਦ ਬਾੜੀ ਬਾਟ ਹੈ ਕੰਪਰੋਮਾਈਜ਼ ਕਰ ਲਿਆ ਢਿੱਡ ਨੇ ਕੰਪਰੋਮਾਈਜ਼ ਕਰਾ ਦਿੱਤਾ खरीदे गए पंडित बिश्रू ने ब्रह्म ज्ञानी खरीद के ए ब्राह्मण थी पहला पंडितरी सी ब्राह्मण तो पंडित हो गए रोए पंडित ज्ञान ज्ञान गवाए ज्ञान गवा लिया ज्ञान क्यों गवा लिया ज्ञान गवाया दूजे पाया गर्भ गले बख खैर खाली माया ने पीछे पे गए ਹਰ ਰਸ ਨੂੰ ਰਾਦਵੇਦਨੀ ਭਾਵੈ ਸੁਣੀਏ ਗਹਿਣ ਕਬੀਰ ਗਵਾਇਆ ਸਾਰਾ ਕੁਝ ਗਵਾ ਲਿਆ ਪਰ ਲੋਗ ਗਵਾ ਲਿਆ ਆ ਲੋਕ ਦੇਖ ਲਿਆ ਜਿਹੜੇ ਆ ਲੋਕ ਦੇਖਦੇ ਨੇ ਪਰ ਲੋਗ ਵਾਇ ਜਾਂਦਾ ਮਾਤਾ ਤਾਰੀਆਂ ਦਾ ਪਰ ਗਿਆ ਆ ਲੋਕ ਵੀ ਦੁਖੀ ਹੁੰਦੇ ਰਹਿੰਦੇ ਐਵੇਂ ਹੀ ਲੱਗਦਾ ਉਹਨਾਂ ਨੂੰ ਸੁਖਾਏ ਲੋਕ ਚਬ ਨਹੀਂ ਹੁੰਦਾ ਇਹ ਲੋਕ ਤਾਂ ਕਿਸੇ ਨੂੰ ਸੁਖਾਏ ਨਹੀਂ ਬਿਤਾ ਵੀ ਪਲੇਖਾ ਜਦੋਂ ਇਰਾਨ ने ਕੰਪਰੋਮਾਈਜ਼ ਕਰ ਲਿਆ ਉੱਥੇ ਕਹ ਪੰਡਤ 파ੜੀ ਬਾਟ ਇਹਨਾਂ ਨੇ ਫਿਰ ਕੀ ਲਿਖਿਆ ਉਹ ਰਮਾਂਡ ਛੱਡ ਕੇ ਦੂਜ ਰਮਾਂਡ ਤਿਆਰ ਕਰਾਈ ਪਹਿਲੀ ਛੱਡ ਕੇ ਪਾਲੂਜੀ ਕਾਲੀ ਉਹ ਪੜਦਾ ਨਹੀਂ ਕੋਈ ਤਾਂ ਹੀ ਨਹੀਂ ਪੜਦੇ ਉਹ ਸਾਰੇ ਦੂਏ ਸ਼ਾਸਤਰ 18 ਪਰੌਣ ਲਿਖੇ ਦੁਬਾਰਾ ਤਿਆਰ ਕਰਾਏ ਨੇ ਬੇਦ ਛੱਡ ਦਿੱਤਾ ਬੇਦ ਦਾ ਪ੍ਰਚਾਰ ਛੱਡਤਾ ਬੇਦ ਉਹ ਸੱਚਾ ਧਰਮ ਵੇਦਾ ਬਾਕੀ ਦੇ ਧਰਮ ਝੂਠੇ ਨੇ ਸਾਰੇ ਬੇਦਾਲੇ ਧਰਮ ਆਪਣੇ ਸਿੱਖ ਮਤ ਹੈ ਇਹ ਗੁਰਮਤ ਜਿਹੜੀ ਬੇਦਾਲੇ ਧਰਮ ਬੇਧਰਮ ਆ ਤਾਂ ਹੀ ਬੇਧ੍ਰਿਤ ਹੁੰਦਾ ਨਾ ਕੌਣ ਬੇਧ੍ਰਿਤ ਕਹੂੰ ਤਾਂ ਸਭ ਬਪਰੇ ਇਹਦਾ ਪ੍ਰਚਾਰ ਹੋਲਡ ਕੀਤਾ ਇਹਨਾਂ ਨੇ ਵੀ ਤਾਂ ਜੀ ਖਤਰਨਾਕ ਪ੍ਰਚਾਰ ਹੈ ਅਸੀਂ ਬੇਦ ਛੜਦਾ ਸਾਡੇ ਗੱਲ ਚ ਫੂਕ ਮਾਰਦੀ ਬੇਦ ਤਾਂ ਬਣਦਾ ਨਹੀਂ ਹੁੰਦੇ ਨੇ ਮੁਰਗ ਜਣ ਐਜਨ ਸਪੋਕਸਮੈਨ ਵਰਗੇ ਜ਼ਗਰਦਾਰ ਸਬਰ ਕੇ ਪਾਗਲ ਟੋਲਾ ਇਹਨੂੰ ਪਤਾ ਹੀ ਨਹੀਂ ਕਿ ਕੀ ਹੁੰਦਾ ਉਹਨਾਂ ਨੂੰ ਅਲੱਡੀ ਹੋ ਗਈ ਬੇਦ ਬੇਦ ਇੱਕ ਐਸੀ ਚੀਜ਼ ਹੈ ਗੁਰਬਾਣੀ ਦੇ ਵਿੱਚ ਬੇਦ ਦੀ ਕਿਤੇ ਨੂੰ ਤਿਆਰੀ ਕੀਤੀ ਹੋਈ ਉਹ ਕਹਿੰਦਾ ਬੇਦਾਂ ਮਨ ਆਉਂ ਤਬ ਸੋਲੇ ਨਹੀਂ ਫਿਰੇ ਜੋ ਬੇਤਾਲਿਆ ਬੜਦਰੂ ਗਿਆ ਨਾ ਮੋਤਮ ਦਿੱਤਾ ਮਾਇਆ ਤੁਹਾਨੂੰ ਉਤਮ ਲਿਆ। ਲక్ష్ਮੀ ਦੀ ਪੂਜਾ ਕਰਨ ਲੱਗਿਆ। ਕਾਂਦੀ ਪੂਜਾ ਕਰਨ ਲੱਗਿਆ। ਇਹ ਗਿਆਨਵਾਨ ਸੀ ਤੇਰਾ ਨਾਮ ਤਾਂ ਸੀ ਗਿਆਨੀ ਆਗਾ ਤਾਂ ਨਾਮ ਹੈ। ਗਿਆਨਗਵਾਲੇ ਉਹ ਤੇਰਾ ਤਾਂ ਸੰਸਾਰੀ ਤੁਹਾਨੂੰ ਹੋ ਗਿਆ। ਇਹ ਤਾਂ ਰਾਜਿਆਂ ਦਾ ਤਾਂ ਸੀ। ਬਿਸ਼ਰੂ ਦਾ ਤਾਂ ਸੀ ਇਹ। ਬ੍ਰਾਹਮਣ ਦਾ ਤਾਂ ਨਹੀਂ ਸੀ। ਕੀ ਕਰਿਆ ਖਬੀਰ ਕਾਹ ਰੇ ਪੰਡਿਆ ਕਬ ਕੇ ਬਹਾਮਣ ਹੋਏ ਉਹ ਤੂੰ ਮੁੜ ਕੇ ਬ੍ਰਾਹਮਣ ਆਪਣੇ ਆਪ ਨੂੰ ਫੇਰ ਕਹਿਣ ਲੱਗਿਆ ਬਹਾਮਣ ਯਾਰ ਤੂੰ ਗਿਆ ਤੂੰ ਫੇਰ ਬ੍ਰਾਹਮਣ ਬ੍ਰਾਹਮਣ ਹੋ ਗਿਆ ਤਾਂ ਬ੍ਰਹਮ ਦੀ ਗੱਲ ਕਰ ਬਹਾਮਣ ਕਾ ਕਾ ਜਨਮ ਬਤ ਖੋਏ ਕਿਉਂ ਜਨਮ ਖਰਾਬ ਕਰਦਾ ਬਹਾਮਣ ਕਹੀ ਜਾਂਦਾ ਆਪਣੇ ਆਪ ਨੂੰ ਜਿਵੇਂ ਅਸੀਂ ਸਿੱਖ ਕਹੀ ਜਾਂਦੇ ਸਿੱਖੀ ਤੋਂ ਹਜ਼ਾਰ ਕੋ ਦੂਰ ਖੜੇ ਕਈ ਜਨਸੀ ਸਿਕਾ ਜਰਾ ਸਿੱਖੀ ਦੇ ਬਰੋਚ ਖੜੇ ਆ ਕਈ ਜਨਸੀ ਸਿੱਖ ਇਹ ਉਹੀ ਪੰਡਤਾਲੀ ਗੱਲ ਹੈ ਬ੍ਰਾਹਮਣ ਵਾਲੀ ਗੱਲ ਹੈ ਮਨੂ ਤੇ ਚੱਲਣਾ ਬਹੁਤ ਔਖਾ ਹੈ ਮਾਇਆ ਦੀ ਚੱਲਣ ਦੀ ਜਿਹੜਾ ਗੋਲਕਵਲ ਚਾਕੂਗਾ ਮਾਇਆਵਲ ਚਾਕੂਗਾ ਰਾਜਵਲ ਚਾਕੂਗਾ ਦੁਨੀਆ ਦੀ ਵਿੜਾਈਵਲ ਚਾਕੂਗਾ ਤੇ ਪੈਰਾਂ ਫ੍ਰੀ ਦੇ ਸਕਦਾ ਭਗਤਾਂ ਨੇ ਦਿੱਤਾ ਪਰ ਰਵਦਾਸ ਨੇ ਦਤਾ ਪੈਰਾ ਤਨਨ ਨੇ ਦਤਾ ਪੈਰਾ ਕਿਨਾ ਕਮੇਰ ਸੀ ਕੰਨੀ ਉੱਤੇ ਕੀ ਬੋਲਣ ਕੀਤ ਮਾਰੀ ਇਹ ਪੈਰਾ ਤਾਂ ਬਹੁਤ ਔਖਾ ਹਾਂ ਵਾਇਆ ਵੀ ਰਹੀ ਐ ਮੈਂ ਤਾਂ ਵੀ ਕੋਈ ਗੱਲ ਨਹੀਂ ਛੱਡ ਵੀ ਆਂ ਦਿੱਤੀ ਪਤਾ ਹੀ ਨਹੀਂ ਕਿਵੇਂ ਛੱਡਦੀ ਜਾਂਨ ਸਦਾ ਛੱਡਿਆ ਪਰਵਾਹੀ ਕੀਤੀ ਪਰ ਉਹ ਨਹੀਂ ਛੱਡਿਆ ਆਪਣਾ ਕੰਪਰੋਮਾਈਜ਼ ਨਹੀਂ ਕੀਤਾ ਹੈ ਝੂਠ ਨਾਲ ਕੁਪਰੋਏ ਸੱਚ ਦੇ ਨਾਲ ਜੁੜੇ ਸੱਚਲੇ ਰਹੇ ਪ੍ਰਚਾਰ ਸੱਚ ਦਾ ਹੀ ਕਰਨਾ ਫਿਰ ਕੀ ਹੋਇਆ ਤਾਂ ਦਾ ਸਭ ਨੇ ਕਿਹਾ ਕਿ ਇਹ ਧਰਮ ਨਹੀਂ ਹੋ ਸਕਦਾ ਚੱਲ ਸਕਦਾ ਪਰਮੇਸ਼ਰ ਨੇ ਕਿਹਾ ਸ਼ਾਤਰਾਂ ਬਿਨਾਂ ਨਹੀਂ ਚੱਲਣਾ ਹੈ ਤਾਂ ਖਾਲਸਾ ਸ਼ਸਤਰ ਧਾਰੀ ਬਣਾਇਆ ਪੰਡਤਾਂ ਸੈਤਨ ਸਟ ਗਿਆ ਸੀ ਉਹਨੇ ਕਿਹਾ ਸ਼ਾਤਰ ਪਹਿਲਾਂ ਸ਼ਾਤਰ ਸਟ ਫਿਰ ਆਣਾ ਵੀ ਸ਼ੁਰੂ ਕਰਦਾ ਸ਼ਾਸਤਰ ਆਪਣੇ ਕੋ ਰੱਖ ਲੈ ਤਰ ਬਹੁ ਸਮਝਾਤਾ ਜਿੰਨਾ ਜਿਹੜੇ ਧਰਮ ਸ਼ਾਸਤਰ ਤਾਰੀ ਨਹੀਂ ਰਹੂਗਾ ਇਹ ਤੁਹਾਨੂੰ ਬਚਣ ਆਉਣ ਦੇਊਗਾ ਧਰਮ ਦੇ ਵਿਰੋਧੀ ਨੇ ਸਾਰੀ ਦੁਨੀਆ ਧਰਮ ਕਮੈ ਬਚੂਗਾ ਸੱਜੇ ਤਾਰ ਨੂੰ ਨਹੀਂ ਕੋਈ ਬਚਣ ਦਿੰਦਾ ਬਗਾਰ ਸ਼ਾਸਤਰਾਂ ਤੇ ਫਿਰ ਵੀ ਫਿਰ ਵੀ ਨਹੀਂ ਬੈਠਾ ਵੀ ਉਹਨੂੰ ਕੀ ਲੋੜ ਹੈ ਉਹਨੇ ਤਾਂ ਰਾਜ ਨਹੀਂ ਕਰਨਾ ਉਹਨੂੰ ਵੀ ਵਿਸ਼ਨੂੰ ਤੋਂ ਖਤਰਾ ਹੈ ਰਾਜਾ ਵਿਸ਼ਨੂੰ ਕਹਦੇ ਸਿਆਲ ਨਹੀਂ ਖੜਾ ਉਹ ਕਹਦੇ ਨੇ ਉਹ ਕਹਿੰਦੇ ਹਰਿ ਕ੍ਰਿਸ਼ਨ ਕੋ ਕਹਦੇ ਨੇ ਰਾਮ ਜੀ ਨੂੰ ਕਹਦੇ ਨੇ ਸੱਚ ਧਰਮ ਦੇ ਖਿਲਾਫ ਨੇ ਹਿਆਰ ਉਹਨਾਂ ਦੇ ਹੱਕ ਜਿਹੜੇ ਹਣਦੇ ਇਦਾਂ ਕਹਤੇ ਸਾਰੀਆਂ ਮੱਤਾਂ ਸੱਚ ਦੇ ਖਿਲਾਫ ਨੇ ਨਹੀਂ ਯਾਰ ਚਰਚਾ ਕਰ ਲੈਣ ਉਹਨਾਂ ਦੇ ਗ੍ਰੰਥਾਂ ਜੋ ਅਸੀਂ ਸਾਬਤ ਕਰਦੇ ਹਾਂ ਖਿਲਾਫ ਨੇ ਸ਼ਿਵ ਜੀ ਵੀ ਖਿਲਾਫ ਹੈ ਤੇ ਵਿਸ਼ਨੂੰ ਵੀ ਖਿਲਾਫ ਹੈ ਉਹ ਤਾਂ ਸਾਬਤ ਹੋ ਜਾਂਦਾ ਇਹ ਨਾਲ ਦਾ ਬ੍ਰਹਮਾ ਵੀ ਖਿਲਾਫ ਹੈ ਜਿਹੜਾ ਇਹ ਨਾਲ ਦਾ ਰੱਬ ਉਹ ਵੀ ਖਿਲਾਫ ਹੈ ਸੱਚ ਤੇ ਉਹ ਬ੍ਰਹਮਾ ਆਪਣ ਤੇ ਬ੍ਰਹਮਾ ਨਾਲ ਹੋਰ ਬ੍ਰਹਮਾ ਕਹੋਣ ਇਹ ਨਾਲ ਬ੍ਰਹਮਾ ਕਹੋਣੇ ਪੜਦੇ ਉਹੀ ਖਿਲਾਫ ਹੈ ਛਤਰੀ ਕਹੋਣੇ ਛਤਰੀ ਰਾਜਾ ਇਹ ਤੇਨੇ ਖਿਲਾਫ ਨੇ ਕਾਂ ਦਸ ਪਾਸ਼ਾ ਨੇ ਉਹਨਾਂ ਪਰਮੇਸ਼ਰ ਨੇ ਕਿਹਾ ਪੰਥ ਚਲਾ ਤੂੰ ਨਹੀਂ ਚਲੇ ਇਹਨਾਂ ਨੇ ਜਿਉਣ ਦੇਣਾ ਫਖਤ ਪੈਦਾ ਹੋਏ ਜਦ ਹੀ ਮਿੱਟੀ ਭਾਤੀ ਚਲਣੇ ਤੇ ਤਬੰਦ ਤਾਂ ਜਲਾਇਆ ਪੰਥ ਚਲਾ ਪੰਥ ਚਲਾ ਤਬ ਤੂੰ ਕਰੋ ਆਰਗੇਨਾਈਜੇਸ਼ਨ ਕੁ ਬਣਾਈਏ ਇਹ ਆਰਗੇਨਾਈਜੇਸ਼ਨ ਹਮਲਾਵਨਯ ਡਿਫੈਂਸਿਵ ਹਥਿਆਰ ਤੇ ਨਸ਼ਤਰ ਪ੍ਰਚਾਰ ਕਰਨਾ ਪ੍ਰਚਾਰ ਦਾ ਜੇ ਮੂੰਹ ਬੰਦ ਕਰੇ ਉਹਨੇ नहीं बंद करना. ਵੀ ਚਲਾਉਣਾ ਛੇ ਉਹ ਛਾਤਰ ਚਲਾ ਕੇ ਉਹ ਬੰਦ ਕਰਦੇ ਨੇ ਫਿਰ ਡਿਫੈਂਸ ਵਾਸਤੇ ਕੁਝ ਵੀ ਕਰ ਲੀਏ ਜਿੰਨਾ ਜੇ ਉਹ ਛਾਤਰ बार करते नहीं, ਨਹੀਂ ਉਹਨੇ ਅਸੀਂ नहीं कर सकते. ਕਿਸੇ ਦਮ ਨਹੀਂ ਕਰ ਸਕਦੇ ਗੱਲ ਵੀ ਜਿਹੜੀ ਕਰਨੀ ਏ ਉਹ ਹੱਕ ਇਨਸਾਫ ਦੀ ਉਹ ਕਰਨੀ ਚੁੱਪ ਵੀ ਗੱਲ ਨਹੀਂ ਕਰਨੀ ਫਿਰ ਸਾਡੇ ਚੁੱਪ ਵੀ ਗੱਲ ਤਨ ਉਹ ਸਿੱਖਿਆ ਦੇਣੀ ਜੁਤੀ ਕੇ ਸਿੱਖਿਆ ਜੋ ਵੀ ਗੱਲ ਲਾ ਕੇ ਮਤਲਬ ਤਾਂ ਨਾ ਵੜਾ ਦੀ ਰੁਤ ਉਹ ਮਜ਼ਾਕ ਕਰਿਆ ਅਕਬੀਰ ਨੇ ਗਾਹ ਕਾਰੇ ਪੱਡੀਆਂ ਵਾਹਮਣ ਕਬਕੇ ਹੋਏ ਕਹਿੰਦੇ ਬ੍ਰਾਹਮਣ ਜੋ ਜੋ ਬ੍ਰह्मਚਾਰ ਬ੍ਰਾਹਮਣ ਤਾਂ ਜੇ ਬ੍ਰह्मਚਾਰ ਹੈ ਤਾਹ ਹੀ ਅਸੋ ਹਾਂਜੀ ਕਹੂੰ ਸਸਰਤਾਰੀ ਕਹੂੰ ਵਿਦਿਆ ਕੇ ਵਿਚਾਰੀ ਕਹੂੰ ਵਿਦਿਆ ਕੇ ਵਿਚਾਰੀ ਕਿਤੇ ਵਿਦਿਆ ਦਾ ਵਿਚਾਰੀ ਉਹਨਾਂ ਸ਼ਾਸਤਰੀ ਆਰਬਿੰਦਿਆਂ ਦਾ ਵਿਚਾਰੀ ਸਾਡੇ ਖਾਲਸ ਇਕੱਠਾ ਹੀ ਹੈ। ਤਾਂ ਇਹ ਕਹ 70 ਸਵੇ ਕਰਤ ਬਿਪਨ ਕੀ ਦਸ ਪਾਸ਼ਾ ਕਹ ਰਹੇ ਨੇ। ਪੰਡਤ ਨੂੰ ਕਹ ਰਹੇ ਨੇ। ਜਿਹੜੇ ਛਤਰੀ ਨੇ ਬਿਪਰਾਂਲੇ ਕੰਮ ਦੇ ਤੇਰਾ ਨੂੰ ਇਹਨੂੰ ਤੇ ਕਟਾਸ਼ ਕੇ ਦਿਖਾਰੋ ਹੁਣ ਕਿਰਪਾ ਦ੍ਰਿਸ਼ਟੀ ਕਰ। ਤੈਨੂੰ ਉਥੇ ਦਾਨ ਦੇ ਦਮ ਹੁਣ ਮੇਰਾ ਦਾਨ ਦੇਣ ਨੂੰ ਕਿਸੇ ਹੋਰ ਨੂੰ ਜੀ ਨਹੀਂ ਕਰਦਾ। ਸੋ ਪੰਜਾਬੀ ਕਹਿੰਦਾ দান ਦਿਓ ਇਨਹੀ ਕੋ ਭਲੋ ਕਹਿੰਦਾ ਹੁਣ দান ਦੇਣਾ ਮੈਨੂੰ ਇਹਨਾਂ ਨੂੰ ਚੰਗਾ ਲੱਗਦਾ ਮੇਰੇ ਦਿਲ ਨੂੰ ਐ ਚੰਗਾ ਲੱਗਦਾ ਜਿਹੜਾ ਖਾਲਸਾ ਹੈ ਇਹਦੀ ਉਹ ਸੇਵਾ ਕਰਨਾ ਮੈਂ ਜਿਹੜਾ দান ਦੇਣਾ ਨਾ ਪੜਦਰੂ ਇਹਨਾਂ ਦੀ ਉਹ ਸੇਵਾ ਕਰਨਾ ਦਾਨ ਦਿਓ ਇਨਹੀ ਕੋ ਭਲੋ ਔਰ ਆਨ ਕੋ দান ਨਾ ਲਾਗਤ ਦੀ ਹੋਰ ਨੂੰ ਦਿੱਤਾ ਹੈ ਰਾਨ ਮੈਨੂੰ ਜਗਾਈ ਨਹੀਂ ਲੱਗਦਾ ਮੇਰਾ ਬਰੇ ਨਹੀਂ ਬੰਦਾ ਔਰ ਆਗੇ ਭਲਾ ਇਨਹੀ ਕੋ ਦੇਓ ਕਦੇ ਗੇਵਾਤ ਨੂੰ ਵੀ ਫੜੋ ਤਾਂ ਇਹਨਾਂ ਨੂੰ ਦਿਓ ਹੱਕਦਾਰੇ ਨੇ ਜਿਹੜਾ ਲੜਾਈ ਲੜੂ ਸੱਚ ਦੀ ਉਹੀ ਹੱਕਦਾਰ ਹੈ ਦੂਆ ਕੌਣ ਲੱਕਦਾਰ ਆਗੇ ਫਲਾਏ ਨਹੀਂ ਕੋ ਦਿਓ ਇਹ ਤਾਂ ਲਾ ਦੇਣਗੇ ਠਕਾਣੇ ਸੱਚ ਦੀ ਲੜਾਈ ਹੈ ਇਦੀ ਇਹ ਕੋ ਦਿਓ ਜਗਮਾਇ ਜਸ ਔਰ ਦਿਓ ਹੋਰ ਨੂੰ ਦਵੋਗੇ ਜਗ ਦਾ ਜਸ ਤਾਂ ਹੋਊਗਾ ਜ਼ਰੂਰ ਜ਼ਰੂਰ ਹੋਰ ਨੂੰ ਦਾਨ ਦਿੱਤੇ ਤਾਂ ਸੰਸਾਰੀ ਜਸ ਹੋਊਗਾ ਦਰਗਾਹ ਦਾ ਜਸ ਨਹੀਂ ਹੁੰਦਾ ਸੰਸਾar ਦਾ ਜਸ ਫਿੱਕਾ ਜਸ ਹੁੰਦਾ ਫਿੱਕਾ ਲੰਗਾ ਨਾ ਥੋੜੇ ਦੰਦ ਹੁੰਦੇ ਜੱਗ ਮੈਂ ਜਸ ਔਰ ਦਿਓ ਸਭ ਫੀਕੋ ਵੋਗ ਰਹੇ ਮੋ ਤਨ ਤੇ ਮਨ ਤੇ ਸਿਰ ਲੋ ਤਨ ਤੇ ਸਭ ਹੀ ਇਨਹੀ ਕੋ ਪਾਈਗਾ ਨਾ ਮੈਂ ਆਪਣੇ ਘਰ ਦਾ ਤਨ ਬੂਤਾਨਾ ਮੇਰਾ ਸਿਰ ਮੈਂ ਦਾ ਦਿੱਤਾ ਇਹਨਾਂ ਨੂੰ ਤੁਸੀਂ ਜੀਹਾਂ ਦੇਣਾ ਦਿਓ ਨਹੀਂ ਦੇਣਾ ਦਿਓ ਵਸੀਅਤ ਕਰਤੀ ਖਾਲਸਾ ਨੂੰ ਇਹ ਵਸੀਅਤ ਦਿਖਾ ਕੇ ਕਦਮ ਜਿੱਤੇ ਅਸੀਂ ਨੋ ਨੋ ਦਸਵਗ੍ਰੰਥ ਦੇ ਵਿੱਚ ਪਈ ਹੈ ਵਸੀਅਤ 300 ਵਈਏ ਨੇ ਪੜਾਂਗੇ ਫਿਰ ਇਹਦੇ ਵਿੱਚ ਹੈ ਵਿਚਾਲੇ ਦਾ ਉਸ ਗ੍ਰੰਥ ਦੇ ਵਸੀਅਤ 300 ਵਈਏ ਨੇ ਸੈਂਟਰ ਚ ਆਉਂਦੇ ਨੇ ਕੋਹ ਹੁ ਮਾਰਤ ਆਹਾਰੀ ਕੋਹ ਨਾਰਕੇ ਨਕੇਤ ਕੋਹ ਮਾਰਤ ਆਹਾਰੀ ਕੀ ਕਰਦਾ ਸ਼ਸਤ ਹੋ ਕੇ ਸ਼ਿਕਾਰ ਖੇੜਦਾ ਵਰੁਸ਼ਗਾਰ ਨਹੀਂ ਖੇਡਦੇ ਰਹੇ ਕੌਣ ਕਹਿੰਦਾ ਮਾਸਰੀ ਨਹੀਂ ਕਹਿੰਦੇ ਅਭਾਰਦਾਹਰੀ ਲਿਖਿਆ ਹੈ ਇਹ ਤਾਂ ਸਾਧਾਂ ਦਾ ਪ੍ਰਚਾਰ ਕੀਤਾ ਹੋਇਆ ਯਾਰ ਬੰਦਾਂ ਦਾ ਰਲ ਕੇ ਵੀ ਇਹਨਾਂ ਨੂੰ ਆਪਣੇ ਵਰਗਾ ਹੀ ਬਣਾ ਲੋ ਕਹੂੰ ਮਾਰਤ ਅਹਾਰੀ ਕਹੂੰ ਨਾਰਕਨ ਕੇਤੋ ਘਰ ਵਾਲਿਆਂ ਦਾ ਆਸ਼ਰਮ ਬੱਚਿਆਂ ਦਾ ਆਸ਼ਰਮ ਕਹੂੰ ਮਾਰਤ ਅਹਾਰੀ ਕਹੂੰ ਨਾਰਕਨ ਕਹੂੰ ਦੇਵ ਬਾਣੀ ਕਹੂੰ ਸ਼ਾਰਦਾ ਦਾ ਤਰਾਤੋਂ ਕਰ ਲਈ ਭਵਾਨੀ ਐਡ ਕਰ ਲਿਆ ਨੇ ਇਹਨਾਂ ਦੀਆਂ ਭਵਾਨੀਆਂ ਫਿਰ ਜੇ ਦੋ ਕਾਲੀਆਂ ਦੋ ਡੁਪਲੀਕੇਟ ਵਰਜਨ ਕਿਉਂ ਜੇ ਕਹੂ ਉਹ ਠੀਕ ਬਣੂਗੀ ਤਾਂ ਹੈ ਸਾਰਦਾ ਹੀ ਸਾਰਦਾ ਹੈ ਸਾਰਦਾ ਭਵਾਨੀ ਸਾਰ ਰੂਪ ਗਿਆਨ ਵਾਲੀ ਬੱਤ ਕਹੂੰ ਦੇ ਬਾਣੀ ਕਹੂੰ ਸਾਰਦਾ ਭਵਾਨੀ ਉਹ ਦੇ ਬਾਣੀ ਹੈ ਦੇ ਬਾਣੀ ਦੇ ਅੱਗੇ ਬਿਉ ਬਣੀ ਹੈ ਇਹ ਦੇ ਬਾਣੀ ਜਿਹੜੀ ਇਹ ਤਾਂ ਆਵਾਜ਼ ਉਹ ਆਖਰੀ ਧੁਰਕੀ ਬਾਣੀ ਹੈ ਉਹ ਸਾਰਦਾ ਭਵਾਨੀ ਹੈ ਸਾਰ ਗਿਆਨਨ ਹੋਤੇ ਸਾਰ ਰੂਪ ਸਾਰ ਰੂਪ ਗਿਆਨ ਉਹ ਜੀ ਬਾਣੀ ਉਹ ਵੀ ਹੈ ਇਹ ਵੀ ਹੈ ਦੇ ਬਾਣੀ ਹੈ ਉਹ ਵੀ ਬਾਣੀ ਉਸਾਰ ਦਾ ਭਵਾਨੀ ਉਹ ਬਾਣੀ ਦਾ ਰੋਈ ਹੈ ਸੋਈ ਭਵਾਨੀ ਦਾਉ ਕਾਹੇਉ ਕਹੂੰ ਮੰਗਲਾ ਮੜਾਣੀ ਕਹੂੰ ਸ਼ਾਮ ਕਹੂੰ ਮੰਗਲਾ ਮੜਾਣੀ ਮੰਗਲਾ ਮੜਾਣੀ ਕੌਣ ਹੈ ਸ਼ਿਵਜੀ ਆ ਨਾ ਉਹ ਬਗਲਾ ਇਹ ਸਮਝਦੇ ਨੇ ਬਗਲਾ ਮੜਾਣੀ ਉਹ ਬਗਲਾ ਕਹਿੰਦੇ ਬੜੀ ਖੁਸ਼ੀ ਖੁਸ਼ੀਆਂ ਖੁਸ਼ੀਆਂ ਬਖਸ਼ਣ ਵਾਲੀ ਹੈ ਉਹ ਕਹਿੰਦੇ ਜੇ ਖੁਸ਼ੀਆਂ ਵੀ ਬਖਸ਼ਣ ਵਾਲੀ ਹੈ ਕੀ ਬਖਸ਼ੂਗੀ ਰੁਦਰ ਭਗਤ ਜਗਤ ਬਾਹੇ ਸੋਕੇ ਦੇ ਬਸਾ ਪਰ ਸੁਖ ਸ਼ਾਂਤੀ ਦੇ ਤੂੰ ਸੰਸਾਰ ਦੀ ਦੇ ਤੂੰ ਉਹ ਉਹੀ ਬੰਗਲ ਹੈ ਹੋਰ ਕੁਛ ਨਹੀਂ ਬੰਗਲਾ ਬਣਾਣੀ ਕਹੂੰ ਸ਼ਾਮ ਕਹੂੰ ਸੇਤੋ ਕਹੂੰ ਸ਼ਾਮ ਕਹੂੰ ਕਿਤੇ ਕੀ ਹੈ ਸੇਤ ਗੁਣ ਸੇਤ ਹੁੰਦਾ ਚਿੱਟਾ ਸ਼ਾਮ ਹੁੰਦਾ ਕਾਲਾ ਕਿਤੇ ਚਿੱਟਾ ਹੋ ਰਿਹਾ ਕਿਤੇ ਕਾਲਾ ਹੋ ਰਿਹਾ ਜੇ ਤਾਂ ਮੰਗਲਾ ਬਣਾਣੀ ਨਾਲ ਜਿਹੜੇ ਡੋੜਿਆ ਹੋਇਆ ਫੇਰ ਤਾਂ ਹੋਰ ਸ਼ਾਮ ਹੋ ਰਿਹਾ ਹੈ ਡੇਰਾ ਹੋ ਰਿਹਾ ਫੇਰ ਤਾਂ ਪਰਪਲਾ ਹੋ ਰਿਹਾ ਜੇ ਜੇ ਸਾਰ ਦਾ ਭਵਾਨੇ ਜੁੜੇ ਐਵੇਂ ਨੇ ਸ਼ਾਮ ਕਹਿੰਦੇ ਉਹਨੂੰ ਕ੍ਰਿਸ਼ਨ ਨੂੰ ਮਨ ਕਾਲਾ ਹੋ ਰਿਹਾ ਹੈ ਆਤਮਾ ਕਾਲੀ ਹੋ ਰਹੀ ਹੈ ਗਲਬੜਾੜੀ ਨਾਲ ਜੁੜ ਕੇ ਉਹ ਸਿਆਮ ਦਾ ਭਵਾਨੀ ਨਾਲ ਜੁੜ ਕੇ ਚਿੱਟੀ ਹੋ ਰਹੀ ਕਹੂੰ ਸਿਆਮ ਕਹੂੰ ਸੇਤੋ ਦੋ ਚੀਜ਼ਾਂ ਹੋ ਰਹੀਆਂ ਨੇ ਕਹੂੰ ਧਰਮ ਧਾਮੀ ਕਹੂੰ ਸਰਬਠੌਰ ਗਾਮੀ ਕਹੂੰ ਧਰਮ ਧਾਬੀ ਕਿਤੇ ਧਰਮ ਦਾ ਧਾਮ ਧਰਮ ਦਾ ਪ੍ਰਚਾਰ ਕਰ ਰਹੇ ਹੋ ਧਰਮ ਦਾ ਹੀ ਧਾਮ ਹੈ ਧਰਮ ਹੈ ਉੱਥੇ ਹੋਰ ਅਹੀ ਕੱਖ ਦੀ ਧਰਮੰਦੀ ਨਗਰੀ ਚ ਰਹਿਣ ਵਾਲਾ ਨਾਨਕ ਧਰਮਤਾਬੀ ਨਾਨਕ ਕੇ ਕਰ ਕੇਵਲ ਨਾਮ ਮੇਰੇ ਘਰ ਸਤਖੰਡ ਵਾਸੀ ਤਰਮਤਾ ਵੀ ਹੈ ਹੀ ਕੁਝ ਨਾਨਕਾ ਕਰਕੇ ਬਲ ਨਾਮ ਰੱਖੇ ਕੱਖ ਨਹੀਂ ਕਰ ਨਾਮੇ ਰੱਖੇ ਤਰਮਤਾ ਵੀ ਕਹੂੰ ਸਰੋਠੌਰ ਗਾਮੀ ਕਹੂੰ ਸਰੋਠੌਰ ਗਾਮੀ ਕਿਤੇ ਜਫੇਰ ਗੜੀਆਂ ਜਫੇਰ ਗੜੀਆਂ ਗੱਗਾ ਗੰਦਾ ਰਾਮ ਜਬ ਨਾ ਗਏ ਜਉਨਾਂ ਦਾ ਕਿਤੇ ਅਜਨ ਸਰੋਠੌਰ ਗਾਮੀ ਹੈ ਜਿੱਥੇ ਗੱਡੀਆਂ ਚ ਲੈ ਜਾਵਾਂ ਥਾਈ ਟੇਕਣਾ ਸਾਰੇ ਦੇਵੀ ਦੇਵਤਾਂ ਨੂੰ ਬੋਲਦੇ ਜੀ ਅਸੀਂ ਤਾਂ ਸਾਰੇ ਇੱਕੋ ਨੇ ਸਾਡੇ ਵਾਸਤੇ ਤਾਂ ਸਾਰੇ ਤਰੂ ਇਹ ਸਰ ਉਠਾਲ ਕਾਮੀ ਕਹੂੰ ਹਾਂ ਕਹੂੰ ਜਤੀ ਕਹੂੰ ਕਮੀ ਕਿਤੇ ਜਤੀ ਇਹ ਜਦ ਰੱਖਿਆ ਹੋਇਆ ਉਹ ਵੀ ਬਲਦੀ ਬਾਤ ਹੈ ਕਿਤੇ ਕਾਮੀਆਂ ਕਦੇ ਕਾਮਨਾ ਦੇ ਬਸ ਪਿਆ ਹੈ ਰਾਜਾ ਬਣਿਆ ਹੋਇਆ ਮਨਵਰਦਾ ਨਾ ਕਹੂੰ ਦੇਤ ਕਹੂੰ ਕਹੂੰ ਦੇਤ ਕਹੂੰ ਤੋ ਕਿਤੇ ਦਾਨ ਦੰਨਾ ਕਿਤੇ ਲੈਣਾ ਕਿਤੇ ਕੋਈ ਚੀਜ਼ ਗਾਂ ਦੰਨਾ ਕਿਤੇ ਲੈਣਾ ਦੇਰ ਲੰ ਦਾ ਸਬੰਧ ਬੜਿਆ ਹੋਇਆ ਗਿਆ ਪੰਡਤ ਦਾ ਕਹੂ ਦੇਦ ਕਹੂ ਲੈਥੋ ਕਹੂ ਬੇਦ ਰੀਤ ਕਹੂ ਤਾਸੋ ਬਪਰੀਤ ਕਹੂ ਬੇਦ ਰੀਤ ਕਹੂ ਤਾਸੋ ਬਪਰੀਤ ਕਹੂ ਤਿਰਗੁਣਾ ਤੀਤ ਕਹੂ ਸੁਰਗਣ ਸਮੇਤ ਕਹੂ ਜਟਾਧਾਰੀ ਕਹੂ ਕੰਠੀ ਕਿਤੇ ਜਟਾ ਰੱਖੀ ਹੋਈਆਂ ਨੇ ਕਿਤੇ ਕਠੀ ਕੰਟ ਡਾਰੀ ਪ੍ਰਭੂ ਕੀ ਕਰਿਆਨ ਕਛੂ ਵਿਚਾਰੀ ਇਹ ਕੌਣ ਸੀ ਕੰਠੀ ਕਾਠ ਦੀ ਦਾਸ ਬੜਾ ਇਹ ਸੀ ਉਹ ਜਿਹੜੇ ਕਬੀਰ ਨੇ ਜਿਹਨੂੰ ਕਬੀਰ ਨੂੰ ਜਿਹਨੇ ਵੜਾ ਫੜਾਈ ਸੀ ਰਾਮਰੰਦ ਸਾਬੀ ਇਹਨੇ ਇੱਕ ਮੱਤ ਚਲਾਇਆ ਸੀ ਤੁਲਸੀ ਦੀ ਬਾੜਾ ਗੱਲ ਸੁਭਾ ਕੇ ਰੱਖਦੇ ਸੀ ਕਾਠ ਦੀ ਕੱਠੀ ਕਹਿੰਦੇ ਸੀ ਉਹਨੂੰ ਕੰਠ ਵਿੱਚ ਪਾਉਣ ਵਾਲੀ ਪਰ ਕਹਨ ਪ੍ਰਭ ਕੀ ਕਰਿਆ ਕਛੁਦੋ ਵਿਚਾਰੀ ਪਰਬੁ ਦੀ ਕਰਿਆ ਕੀ ਹੈ ਪਰਬੁ ਦੀ ਕਰਿਆ ਹੁਕਮ ਹੈ ਹੋਰ ਪਰਬੁ ਦੀ ਕਰਿਆ ਕੀ ਹੁੰਦੀ ਪਰਬੁ ਦੀ ਕਰਿਆ ਹੁਕਮ ਹੈ ਹੁਕਮ ਨਾ ਜੋ ਹੋ ਰਿਹਾ ਇਹ ਹੋਰ ਵਿਚਾਰਿਆ ਹੁਕੂਨੀ ਵਿਚਾਰਿਆ ਪਾਣਾ ਨੇ ਵਿਚਾਰਿਆ ਕਹੂੰ ਜਟਾ ਧਾਰੀ ਕਹੂੰ ਕੰਠੀ ਧਰੇ ਹਾਂ ਬ੍ਰਹਮਚਾਰਿਆ ਰਖਣਾ ਇਹ ਬ੍ਰਹਮਚਾਰੀ ਰਖਣਾ ਤਾਂ ਪ੍ਰਭ ਕੀ ਕਰਿਆ ਦਾ ਵਿਚਾਰ ਲੰਦਾ ਉਲੂ ਤੈਨੂੰ ਪ੍ਰਭ ਕੀ ਕਰਿਆ ਦੇ ਖਿਲਾਫ ਹੈ ਕੰਮ ਬ੍ਰਹਮਚਾਰੀ ਰਹਿਣਾ ਉਹ ਕੁਮਤੇ ਖਲਾਫ ਹੈ। ਜੇ ਤੇਰੀ ਮਗਰ ਸੰਸਾਰ ਲੱਗ ਜਵੇ ਸੰਸਾਰ ਦੇ ਵਿੱਚ ਜੀਵ ਪੈਦਾ ਹੀ ਨਹੋਣ ਇਹ ਬਨੁੱਖਾ ਜਨਮੋ ਸਫਲਾ ਲੋਕ ਛੁੱਟਣਗੇ ਕਿਵੇਂ ਸੰਸਾਰ ਤੋਂ ਤੂੰ ਤਾਂ ਬੰਦ ਕਰ ਰਿਆਂ ਸੰਸਾਰ ਨੂੰ ਛੁੱਟਣ ਤੋਂ। ਜੇ ਸੰਸਾਰ ਦੀ ਉਤਪਤੀ ਬੰਦ ਹੋ ਜਵੇ ਇਹ ਰਸਤਾ ਹੀ ਬੰਦ ਕਰ ਲੈ ਤੂੰ ਤਾਂ ਨਿਕਲਦਾ ਸੰਸਾਰ ਤੋਂ ਨਿਕਲਦਾ ਰਸਤਾ ਬੰਦ ਕਰ ਰਿਆਂ। ਮਾਨਸ ਰਾਂ ਜਮੂਗਾ ਨਾ ਇਹ ਬੁੱਤੀ ਨੂੰ ਮਿਲੂਗੀ ਵਿਚਾਰੇ ਇੱਕ ਪਾਸੇ ਦਾ ਵੀ ਇਹ ਵਸਾ ਜਾਨੂ ਮਿਲਦਾ ਤੂੰ ਇਹ ਜਨਮ ਰੰਗ ਬੰਦ ਕਰ ਰਹੇ ਹੋ ਬੁੜ ਵਿਚਾਰੀ ਹੋ ਜੋ ਜੀ ਸਾਰੀ ਫਿਰ ਰਾਇ ਬੰਦ ਹੋ ਗਿਆ ਪ੍ਰਭ ਦੀ ਗਰਿਆ ਨਾ ਕਸ਼ੂਨਾ ਵਿਚਾਰੀ ਇਹ ਆਗਲ ਲੈ ਵਿੱਚ ਤਾਂ ਲਿਖੀ ਹੈ ਉੱਥੇ ਇਹ ਕਿੱਥੇ ਲਿਖੀ ਹੈ ਬਰਾ ਇਹ ਹੀ ਵਿੱਚ ਤਨਾਰਡ ਲਿਖੀ ਹੋਈ ਹੈ ਉੱਥੇ ਜਿੱਥੇ ਕਹਿੰਦੇ ਨੇ ਹੈ ਨਹੀਂ ਜੀ ਉਹ ਉੱਥੇ ਲਿਖੀ ਹੋਈ ਹੈ ਇਹ ਗੱਲ ਇੱਥੇ ਕੁਝ ਹੋਰ ਹੈ ਉੱਥੇ ਹੋਰ ਹੈ ਉੱਥੇ ਨਾਲ ਲਿਖੀ ਹੋਈ ਹੈ ਕੰਠੀ ਕੰਠ ਕਾਠ ਪ੍ਰਭ ਦੀ ਕਿਰਿਆਨ ਕਛੂ ਵਿਚਾਰੀ ਵੀ ਫਿਰ ਫਲਾਣਾ ਭੇਜਿਆ ਡੇਕੜਾ ਭੇਜਿਆ ਉਹ ਭੇਜਿਆ ਫਿਰ ਮੈਨੂੰ ਭੇਜਿਆ ਇਹ ਤਾਂ ਸਾਰੇ ਦੂਜੀਆਂ ਬੱਤਾਂ ਨੇ ਇਹ ਦੂਜੀਆਂ ਬੱਤਾਂ ਤਾਂ ਹੁਕਮ ਤੋਂ ਖਿਲਾਫ ਨੇ ਸਾਰੀਆਂ ਹੀ ਕਹੂੰ ਸਾਧੀ ਕਹੂੰ ਸਾਧਨਾ ਕਰ ਤੋਹੁ ਖੁਬ ਸਾਧੀ ਕਿੱਤੇ ਯੋਗ ਸਾਧਨ ਕਰ ਲੈ। ਸਰੀਰ ਦੀ ਸਾਧਨਾ ਕਰ ਰਹੇ ਨੇ ਯੋਗ ਸਾਧਨ ਨੂੰ। ਕਿਤੇ ਜੋ ਸਾਧਨਾ ਕਰਨ ਲੱਗੇ ਆਇਆ ਕਿਤੇ ਯੋਗ ਸਾਧਨ ਕਰ ਚੁੱਕੇ ਸਿੱਧ ਬਣਿਆ ਬੈਠਾ ਕਿਤੇ ਜੋ ਸਾਧਕ ਹੈ। ਯੋਗ ਸਾਧੀ ਹੈ ਜੋ ਸਾਧਕ ਹੈ। ਜਿਹੜਾ ਸਾਧਲੇ ਆ ਉਹ ਸਿੱਧ ਹੈ। ਕਹੂੰ ਕਾਨ ਫਾਰੇ ਕਹੂੰ ਢੰਡੀ ਹੋਏ ਪਧਾਰੇ। ਕਿਤੇ ਨਾ ਕੰਨ ਬਾੜ ਲੈ। ਕਿ ਤੇ ਡੰਡੀ ਸਾਬੀ ਉਹ ਡੰਡੀ ਸਾਬੀ ਨੇ ਲਿਖਿਆ ਨਹੀਂ ਕੌਣ ਡੰਡੀ ਹੋਏ ਭਧਾਰੇ ਡੰਡੀ ਸੁੱਕਵੀ ਸੀ ਇਹ ਸਦਾਸੀ ਨੇ ਡੰਡੀ ਸਾਬੀ ਕਹਿੰਦਾ ਨੇ ਆਪਣੇ ਆਪ ਨੂੰ ਸਦਾਸੀ ਕੀ ਨੇ ਇਹਨਾਂ ਦੀ ਫਲਸਫੀ ਕੀ ਹੈ ਇਹ ਕਹਿੰਦਾ ਆਸ ਨੂੰ ਸੁਣ ਕਰ ਆਸ ਖਤਮ ਕਰ ਲਈਏ ਉਧਰੋਂ ਆਸ ਖਤਮ ਨਹੀਂ ਹੋ ਸਕਦੀ ਆਸ ਖਤਮ ਹੋ ਜਾਂਦੀ ਹੈ ਵੈਕੂਮ ਪੈਦਾ ਹੁੰਦਾ ਡੈੱਡ ਹੋ ਜਾਂਦਾ ਅੰਦਰ ਡੈੱਡ ਹੋਏ ਤੇ ਸੁੱਤੇ ਪਏ ਤੇ ਆਸ ਖਤਮ ਹੁੰਦੀ ਹੈ ਬੇਹੋਸ਼ੀ ਦੀ ਹਾਲਤ ਹੁੰਦੀ ਹੋਈ ਨਹੀਂ ਸਕਦੀ ਨਹੀਂ ਪੋਸੀਬਲ ਹੈ ਗੁਰਬਾਣੀ ਕੇ ਮੈਂ ਖਤਮ ਕਰ ਲਈ ਆਸਾਂ ਮਾਹਿੰ ਨਰਾਸੋ ਇੱਕ ਆਸ ਰੱਖੋ ਮਨ ਮਾਹਿੰ ਬਸ ਉਹਦੇ ਦਰਸ਼ਨ ਦੀ ਆਸ ਰੱਖੋ ਮਿਲਣ ਦੀ ਆਸ ਰੱਖੋ ਸੱਚ ਦੀ ਆਸ ਰੱਖੋ ਜਿਹੜੀਆਂ ਆਸਾਂ ਛੱਡਣੀਆਂ ਨੇ ਉਹ ਛੱਡ ਦਿਓ ਉਹ ਦਾ ਰੱਖੋ ਨਹੀਂ ਪ੍ਰਾਪਤੀ ਕੀ ਕਰਨੀ ਹੈ ਫਿਰ ਤੁਸੀਂ ਜੇ ਐਸੇ ਹੀ ਖਤਮ ਕਰ ਲਈਏ ਕਾਦੇ ਵਾਸਤੇ ਆਸਾਂ ਖਤਮ ਕਰ ਲਈਏ ਇਹਦਾ ਮਤਲਬ ਅੱਧੀ ਅਕਲ ਸੀ ਉਹਨਾਂ ਨੂੰ ਬੁੱਧੀ ਘੱਟ ਸੀ ਜੇ ਆਦਾ ਛੱਡਨੀ ਆ ਕਾਦੇ ਵਾਸਤੇ ਛੱਡਨੀ ਏ ਕ ਵਾਸਤੇ ਨਹੀਂ ਆ ਕਾਦੇ ਵਾਸਤੇ ਛੱਡਨੀ ਪੇ ਛੁੱਟੂ ਕਿਉਂ ਪੜਨਾ ਕਿਉਂ ਪੜਨੇ ਜੇ ਪੜਨੇ ਦਾ ਲਾਭ ਨਹੀਂ ਪੜ੍ਹੇ ਲੋਕਾਂ ਨੂੰ ਜਿਹੜੇ ਕੰਮ ਚੋਂ ਕੋਈ ਲਾਭ ਨਹੀਂ ਉਹਨੂੰ ਕਰੂ ਕਿਉਂ ਬਈ ਐਸਾ ਕੋਈ ਆਦਮੀ ਨਹੀਂ ਦੇਖਿਆ ਅਗੇ ਖੂ ਜਲਦੇ ਸੀ ਤਾ ਬਈ ਚਲੋ ਹੱਟਦਾ ਚਲੀ ਜਾਂਦਾ ਹੋਵੇ ਪਰ ਪੁੱਠਾ ਜਲਾਵੇ ਹੋ ਟੰਡਾ ਖਾਲੀ ਆਉਣ ਗਿਆ ਪੱਭੇ ਜ਼ੋਰ ਘੱਟ ਲੱਗਦਾ ਇਹ ਆ ਪਾੜਸ਼ਾ ਚੱਕ ਕੇ ਚਲਾਵੇ ਕੋਹ ਦਾ ਪਾਣੀ ਖੂਜੇ ਡਿੱਗੀ ਜਾਵੇ ਕੋਈ ਦੇਖਾ ਜਲਾਉਂਦਾ ਫਿਰ ਉਹਦਾ ਹੋਗਾ ਲੋਈ ਖੂਜੇ ਪਾਣੀ ਖੂਜੇ ਡਿੱਗੀ ਜਾਂਦਾ ਹੱਲ ਚੱਲਦਾ ਜ਼ੋਰ ਲੱਗਦਾ ਪੂਰਾ ਉਹ ਭਗਤੀ ਨੂੰ ਜ਼ੋਰ ਤਾਂ ਪੂਰਾ ਲੱਗਦਾ ਲਾਭ ਕੋਈ ਨਹੀਂ ਇਹ ਜਾਂ ਕਦੇ ਕੋਈ ਕਰਦਾ ਨਹੀਂ ਹੁੰਦਾ ਜਿੰਨੇ ਇਹ ਜਾਂ ਕਭ ਸ਼ੁਰੂ ਕੀਤਾ ਬੁੱਢੀ ਹੀਂਦੀ ਸੀ ਔਰ ਠੀਕੀ ਇਸ ਕਰਕੇ ਬੁੱਢੀ ਹੀਂਦ ਹੋਇਆ ਇਹਨਾਂ ਨੂੰ ਕੀ ਹੋਇਆ ਸਾਬਤ ਕੀਤਾ ਹੈ ਕਾਇਦਾ ਲੋਕਾਂ ਨੇ ਬੰਤਾ ਛੱਡ ਤੀਆਂ ਉਹਨਾਂ ਦੀ ਬੰਤਾ ਕਿਉਂ ਛੱਡਤੀ ਐ ਕਿਉਂ ਨਹੀਂ ਜੱਲੀਆ ਬੁੱਧੀ ਇੰਦਰ ਦੀਆਂ ਬੰਤਾਂ ਸੀ ਉਹਨਾਂ ਛੱਡਦਿਆਂ ਲੋਕਾਂ ਨੇ ਜਾਦੂਆਂ ਨੇ ਸਮਝਾਇਆ ਓਏ ਤਾਂ ਬੁੱਧੀ ਇੰਦਰ ਦੀ ਬੰਤ ਛੱਡਦਣ ਅਵੇਗਰ ਵੇਗਰ ਵਾਲਿਆਂ ਦੀ ਵਗਰ ਕਿਉਂ ਨਹੀਂ ਹੁਣ ਲੱਗਦੇ ਨਵੇਂ ਆਦਮੀ ਪਤਾ ਲੱਗ ਗਿਆ ਵੀ ਇਹ ਇਹਨਾਂ ਨੂੰ ਈ ਕੁਝ ਮੜਿਆ ਤੁਹਾਨੂੰ ਕੀ ਮਿਲੂਗਾ 60 60 ਸਾਲ ਦਾ ਇਹਨਾਂ ਨੇ ਕੀਤਾ ਉਹਨਾਂ ਨੂੰ ਈ ਕੱਖ ਮੜਿਆ ਤੁਹਾਨੂੰ ਕੀ ਮਿਲਣਾ ਹਾਂ ਉਹਨਾਂ ਨੂੰ ਕੀ ਮਿਲਿਆ ਉਹਨਾਂ ਨੂੰ ਮਿਲਿਆ ਕਰੋਦ ਉਹਨਾਂ ਵaile ਉਹ ਜੱਟ ਪੜਨਾ ਗੁੱਸਾ ਜੱਟ ਹੁਣ ਨਹੀਂ ਹੁੰਦਾ ਜਿਹੜਾ ਆਦਮੀ ਉਹ ਜੱਟਾ ਉਹਨਾਂ ਨੂੰ ਗੁੱਸਾ ਹੋਊਗਾ ਗਰਮਾਨੂ ਹੋ ਸਕਤ ਹੋਊਗਾ ਉਹਨਾਂ ਵaile ਹੰਕਾਰ ਹੰਕਾਰ ਬਨ ਖਰੋਦ ਨਹੀਂ ਹੁੰਦਾ ਕਰੋਦਾ ਤਾਂ ਬੁੱਲ ਕਾਰੇ ਹਣ ਹੂੰ ਹੂਗ ਪਾਵਣ ਕੋ ਪ੍ਰਥੀ ਪੈ ਧਰਤ ਹੋ ਕਿਤੇ ਕਹਿੰਦਾ ਲੱਗੇ ਪੈਰੇ ਫਿਰ ਉਹ ਜੁੱਤੀ ਨਹੀਂ ਪਾਉਦੇ ਭੂਗ ਭੂਗ ਪੈਰ ਤਰਦਾ ਫਿਰਤੀ ਤੇ ਪੈਰ ਜੜਦੇ ਨੇ ਵਿਚਾਰੇ ਦੇ ਕਹਿੰਦੇ ਪੈਰ ਥਲੇ ਆ ਕੇ ਕੋਈ ਕੀੜਾ ਮਰ ਜਾਊਗਾ ਕੋਈ ਆਹ ਹੋ ਕੋਈ ਉਹ ਹੋ ਜੇ ਤਾਂ ਤਰਨਾਲ ਕੀੜੇ ਨੇ ਆਉਣਾ ਜਿਹਨੇ ਆਉਣਾ ਉਹ ਭੇਜਣਾ ਉਹਨੇ ਉਹਦੀ ਮੁਕਤੀ ਹੋਣ ਵਾਸਤੇ ਭੇਜਣਾ ਜੇ ਮਰਨਾ ਹੋਣਾ ਨंगे ਪੈਰ ਨਾਲ ਵੀ ਮਰ ਜਾਣਾ ਉਹ ਤਾਂ ਉਹ ਨਹੀਂ ਹੈ ਚੁੱਤੀ ਦਾ ਵਾਧਾ ਉਹ ਨਹੀਂ ਹੁੰਦਾ ਜੋਤੀ ਦਾ ਬਹੁਤ ਜ਼ਿਆਦਾ ਨਹੀਂ ਹੁੰਦਾ ਸਰੀਰ ਦੇ ਉਹ ਇਹਨਾਂ ਦੇ ਮੰਨ ਰਹੇ ਜਮਨ ਤੇ ਜੇ ਨਹੀਂ ਵਰਨਾ ਜੋਤੀ ਨਾਲ ਨਹੀਂ ਵਰਨਾ ਉਹ ਬਚਾਲੇ ਰਹਿ ਜਾਣਾ ਉੱਤੇ ਧੁੱਧੜ ਹੋਣੀ ਜਾਂ ਕੁਝ ਹੋਣਾ ਜ਼ਬੀਰ ਦੇ ਸਖਤ ਨਹੀਂ ਹੋਣੀ ਜੇ ਤੁਸੀਂ ਕਹੋਗੇ ਤੇ ਆ ਨਾ ਹੋ ਜਾਏ ਉਹ ਨਾ ਹੋ ਜਾਣਾ ਇਹ ਹੈ ਕੇਰਕਿਲਡ ਦੀ ਕੈਟ ਦੀ ਕੈਟ ਜੇ ਜ਼ਿਆਦਾ ਘਨ ਧਿਆਨ ਰੱਖਿਆ ਰੱਖਿਆ ਬਿੱਲੀ ਦਾ ਬੱਚਿਆਂ ਨੂੰ ਪਾਲੀ ਬਿੱਲੀ ਮਾਰਦੀ ਧਿਆਨ ਜ਼ਿਆਦਾ ਰੱਖਿਆ ਨਾ ਬਿੱਲੀ ਪਾਲ ਲਈ ਨਿਆਣਿਆਂ ਨੇ ਇੰਨਾ ਧਿਆਨ ਰੱਖਿਆ ਬਿੱਲੀ ਮਾਰਦੀ ਜਿਆਦਾ ਕੇਅਰ ਰੱਖੀ ਨਾ ਕੇਅਰ ਕਰਦੀ ਕੈਟ ਇਹ ਉਹ ਧਰਮ ਸੀ ਇੰਨਾ ਧਿਆਨ ਰੱਖਿਆ ਨਾਸਵਾਨ ਲਿਆ ਲਿਆ ਬੁੱਧੀ ਉਹ ਹੀ ਬਿੱਲੀ ਇਹ ਕ ਤੋਣ ਨਾਲ ਮਰ ਗਈ ਉਹ ਤੋਣ ਨਾਲ ਨਹੀਂ ਉਹ ਰਿਚੋਣ ਨਾਲ ਮਰ ਗਈ ਕੈਟ ਕੇਅਰ ਕਰਦਾ ਕੈਟ ਕਉਨ ਭੂਖ ਭੂਖ ਪਾਵਣ ਕੋ ਪ੍ਰਿਥੀ ਪੈ ਧਰਤ ਹੋ। ਹੂੰ ਕਦੋਂ ਹੂੰ ਸਪਾਈ ਹੋ ਕੇ ਸਾਧਤ ਸਲਾਹਨ ਕੋ ਕਿਤੇ ਸਪਾਈ ਹੋ ਕੇ ਸਾਧਤ ਸਲਾਹਨ ਕੋ ਉਸ ਸਾਧਨਾ ਸ਼ਾਸਤਰ ਚ ਚਲਾਉਣੇ ਸ਼ਾਸਤਰ ਭਰਤੀ ਹੋਊਗਾ ਸ਼ਾਸਤਰ ਵਿਦਿਆ ਦਾ ਸਿੱਖਣੀ ਭੂਖ ਕਿਤੇ ਕੁਝ ਕਰ ਰਹੇ ਫੌਜਾਂ ਜੋ ਹੋ ਰਹੀਆਂ ਕਰੇ ਰਹੇ। ਸਾਰੀ ਉਸ ਆ ਜਾਣੀ ਵਿੱਚ। ਰੱਖਿਆ ਸਾਰਿਆਂ ਦਾ ਹੀ ਆ ਜਾਣਾ ਵਿੱਚ ਵਟਣਾ ਕੋਈ ਵੀ ਨਹੀਂ ਕਹੂੰ ਛਤਰੀ ਹੋਏਗਾ ਔਰ ਮਾਰਤ ਮਰਤ ਹੋ ਕਦੇ ਛਤਰੀ ਹੋ ਕੇ ਮਾਰਦਾ ਜਾਂਦਾ ਕਰਦਾ ਮਾਰਦਾ ਵੀ ਵਰਦਾ ਵੀ ਛਤਰੀ ਦਾ ਧਰਮ ਹੈ ਮਾਰਨਾ ਜਿਹੜਾ 30 ਸਾਲ ਦਾ ਹੋ ਗਿਆ ਕਹਿੰਦੇ ਛਤਰੀ ਹੁੰਦਾ ਹੀ ਨਹੀਂ 30 ਸਾਲ ਤੋਂ ਪਹਿਲਾਂ ਹੀ ਵਰ ਜਾਣਾ ਚਾਹੀਦਾ ਛਤਰੀ ਨੂੰ ਰਾਜਸਥਾਨ ਇੱਥੋਂ ਹੀ ਭਰਿਆ ਰਾਜਸਥਾਨ ਦਾ ਇੱਥੇ ਤੱਕ ਹੰਕਾਰ ਵੱਧ ਗਿਆ ਜੀ ਬੰਦਾ ਜਿਹੜਾ 30 ਸਾਲ ਟੱਪ ਕੇ ਛਤਰੀ ਨਹੀਂ ਹੁੰਦਾ ਈਦਾਲ ਦੇ ਪਹਿਲੇ ਪਹਿਲਾ ਕੋਈ ਨਾ ਕੋਈ ਪੱਕਾ ਖੜਾ ਹੋ ਜਾਣਾ ਉਹ ਨਾ ਮਰ ਜਾਣਾ ਲੜਕੇ ਮਰ ਲੜਕੇ ਮਰ ਜਾ ਤੇ ਮੂਰਖ ਨਹੀਂ ਦਾ ਹੋਰ ਕੀ ਸਭ ਮੂਰਖਤਾਈ ਦੀਆਂ ਗੱਲਾਂ ਨੇ ਇਹੋ ਜਿਹਾ ਸਮਾਂ ਆ ਗਿਆ ਗੱਲ ਕਰ ਰਿਹਾ ਇਸ਼ਾਰਾ ਉਸ ਗੱਲ ਵੱਲ ਕਰ ਰਿਹਾ ਇਹ ਤਾਂ ਇਸ਼ਾਰੇ ਮਾਤਰ ਨੇ ਮੁਝਣ ਵਾਲੀ ਹੈ ਸਾਰੀ ਗੱਲ ਜਿਹਨੂੰ ਹਿਸਟਰੀ ਦਾ ਪਤਾ ਹੈ ਪਿਛਲਾ ਪਤਾ ਉਹ বুঝ ਲੈਂਦਾ ਗੱਲ ਕੀ ਹੈ ਕਿੱਥੇ ਕਹੀ ਐਵੇਂ ਥੋੜੀ ਇੱਥੇ ਤਾਂ 2-3 ਗੱਲਾਂ ਕਹੀਆਂ ਜਾਂਦੀਆਂ ਵਿਆਕਰ ਕੀ ਹੁੰਦੀ ਹੈ ਵਿਆਕਰ ਕੀ ਮਤਲਬ ਹੁੰਦਾ ਵਿਆਕਰ ਕਾ ਨੂੰ ਗਿਆਨ ਹੋਣਾ ਚਾਹੀਦਾ ਇਹ ਗੱਲ ਕਿੱਥੇ ਕਹੀ ਹੋਈ ਹੈ ਕਹੁ ਪੂਮ ਭਾਰ ਕੋ ਉਤਾਰ ਤੋ ਮਹਾਰਾਜ ਕਹੁ ਪੂਮ ਭਾਰ ਕੋ ਉਤਾਰ ਤੋ ਪ੍ਰਿਥੀ ਦੇ ਬੋਝ ਹੈ ਪ੍ਰਿਥੀ ਦੇ ਬੋਝ ਫੜ ਜੂਗਾ ਇਹ ਆਦਮੀ ਕੋਈ ਫੜ ਗਿਆ ਪ੍ਰਿਥੀ ਦੇ ਬੋਝ ਤੌ ਨਹੀਂ ਹੈ ਪਹਿਲਾਂ ਤਾਂ ਆਪਣਾ ਚੱਕੀ ਫਿਰਦਾ ਫਿਰ ਤੂੰ ਚੱਕੇਗਾ ਉਹਨੂੰ ਦੋ ਚੱਕਣੇ ਪ੍ਰਿਥੀ ਦੇ ਬੋਝ ਕਹਦਾ ਕਿ ਆਤਮਾ ਦਾ ਕੋਈ ਬੋਝ ਨਹੀਂ ਦੁੱਦਾ ਪ੍ਰਿਥੀ ਦੇ ਪਿੱਤੇ ਬੋਇਤਾ ਸਿਰਦਾ ਉਹ ਤਾਂ ਫਿਰ ਵੀ ਇੱਥੇ ਰਹਿੰਦਾ ਨਾ ਕੁਛ ਆਈ ਉਹ ਨਾ ਅਸਲ ਦੇ ਵਿੱਚ ਜਿਆਦੇ ਭਾਰ ਉਤਾਰਨ ਤੇ ਹਟ ਗਏ ਲੋ ਇਹਦੇ ਅਰਥ ਬਦਲਦੇ ਉਹ ਆਏ ਹਰਦਾ ਪੋਏ ਨਾ ਭਾਰ ਉਤਾਰਨ ਕਹਿੰਦਾ ਬੋਝ ਤੇ ਬੋਝ ਕਹਿੰਦਾ ਮੇਰੇ ਮਨ ਤੇ ਬੜਾ ਬੋਝ ਹੈ ਇਹ ਕੌਣ ਉਤਾਰੇ ਇਹ ਉਤਾਰਨ ਦਾ ਬੰਦ ਕਰਤਾ ਇਹ ਕਹਿੰਦੇ ਹੁਣ ਆਖਿਸ਼ ਹੋ ਗਏ ਜੀ ਧਰਤੀ ਤੇ ਬੋਝ ਵੱਧ ਗਿਆ ਹੁਣ ਮਰਾ ਬਧਾਰੂ ਹੋਇਆ ਇਹਨਾਂ ਨੂੰ ਬੋਝ ਲੱਗਦਾ ਜਿਹੜਾ ਇਹਨਾਂ ਨੇ ਬੋਝ ਪਾਇਆ ਲੋਕਾਂ ਦੇ ਮਨਾਂ ਤੇ ਉਹ ਨਹੀਂ ਲੱਗਦਾ ਵੀ ਸਾਨੂੰ ਸਜ਼ਾ ਮਿਲਿਆ ਨਹੀਂ ਮੰਨਦੇ ਇਹ ਨਹੀਂ ਮੰਨਦੇ ਭਗਵਾਨ ਉਤਾਰਨ ਦੇਵਤੇ ਆ ਬੈਠਾ ਸੁਭਾ ਪਾਇਆ ਇਹ ਤਾਂ ਨਹੀਂ ਮੰਨਦੇ ਕਹਿੰਦੇ ਪਾਪ ਵਧ ਗਿਆ ਹੁਣ ਪਰਮੇਸ਼ਰ ਇਹਦਾ ਇਲਾਜ ਕਰੂਗਾ ਐਂ ਕਹਿ ਰਹੇ ਸੀ ਅਸੀਂ ਪਾਪ ਵਧਾਇਆ ਆਪਣਾਂ ਦੀ ਨਜ਼ਰ ਆਇਆ ਪਾਪੇ ਨੂੰ ਦੱਸੋ ਦੱਸੋ ਪਾਸ਼ਾ ਨਕਸ਼ਾ ਦਿਖਾਇਆ ਪੁਰ ਪੋਮ ਪਾਰ ਕੀਆ ਪੋਮ ਹਮੇ ਵੋ ਪਰਮ ਪੈ ਪਾਰ ਤੁਸੀਂ ਹਮੇ ਵਧਾਤੀ ਸੰਸਾਰ ਚ ਵੋ ਵਧਾਤਾ ਪਰਮ ਵਧਾਤਾ ਭੈਵ ਬਨ ਗਈ ਇਹ ਪਾਰ ਹੈ ਉਤਾਰੋ ਇਹ ਉਤਾਰਨਾ ਸੀ ਧਰਮ ਨੇ ਧਰਮ ਇਹ ਉਤਾਰਦਾ ਹੁੰਦਾ ਨੋਵੇਂ ਪਾਸ਼ਾ ਨੇ ਇਹੀ ਕਿਹਾ ਪੈ ਕਾਹੂ ਕੋ ਦੇਤਨਾ ਨਾ ਪਹਿਮਾਨ ਤ ਨਾ ਗਰੇ ਨੂੰ ਪੈ ਦੰਨੇ ਨਾ ਪੈ ਬੰਦਿਆ ਜੇ ਪੈ ਨਹੀਂ ਦਾ ਭਾਰ ਉਤਰ ਗਿਆ ਜਦ ਤਨ ਭਾਰ ਉਤਰ ਪੈ ਮੁਕਤ ਹੋ ਜਾਊਗਾ ਜੇ ਪਾਇਆ ਉਹ ਹੀ ਭਾਰ ਹੈ ਰਿਜ਼ਲਟ ਕੀ ਹੈ ਭਾਰ ਦਾ ਪੈ ਜਿਹੜਾ ਮਨ ਤੇ ਬੋਝ ਆ ਪੈ ਦਾ ਬੋਝ ਹੈ ਜਿਹਦੇ ਪੈ ਹੈ ਹੀ ਉਹਦੇ ਭਾਰ ਕੋਈ ਵੀ ਨਹੀਂ ਨਾ ਹੋ ਕੋਈ ਤੇ ਬੰਦਾ ਉੱਦਦਾ ਹੀ ਨਹੀਂ ਕਿਸੇ ਚੀਜ਼ ਨੂੰ ਹੋ ਕਿਸੇ ਦਾ ਕੋਈ ਦਿਨਾਈ ਨਹੀਂ ਮੈਂ ਨਹੀਂ ਕਿਸੇ ਦਾ ਲੈਣਾ ਉਹ ਬੰਗੂ ਸੰਤ ਲੈਣਾ ਮੈਂ ਨਹੀਂ ਕਿਸੇ ਦਾ ਦੇਣਾ ਉਹ ਹੈ ਢਿਰ ਭਾਰ ਹੁਣ ਉਹ ਕਰ ਰਿਹਾ ਹੈ ਧਰਤੀ ਦਾ ਭਾਰ ਧਰਤੀ ਦਾ ਭਾਰ ਹਟਾਉਂਦਾ ਧਰਤੀ ਦਾ ਭਾਰ ਹਟਾਤਾ ਦਾ ਭਾਰ ਵਧਾਈਦਾ ਹੁੰਦਾ ਤੂੰ ਆਪ ਧਰਤੀ ਦਾ ਭਾਰ ਬਣਿਆ ਹੋਇਆ ਐ ਨਹੀਂ ਪਤਾ ਵੀ ਧਰਤੀ ਦੇ ਭਾਰ ਅਸੀਂ ਬਣੇ ਹੋਇਆ ਜਾਂ ਤੈਨੂੰ ਪੰਡਤ ਨੇ ਬਾੜ ਪਾੜੀ ਹੈ। ਧਰਤੀ ਦਾ ਭਾਰ ਤਾਂ ਉਦੋਂ ਲਥੂ ਬਣਾਉਣ ਲੱਗਿਆ। ਤੂੰ ਬੇਦ ਛੱਡ ਕੇ ਸਾਚੀ ਛੱਡ ਕੇ ਸਾਜ ਛੱਡ ਲੈ ਚੂੜ ਸੰਗ ਬਚਾ। ਰਤਨ ਤਿਆਗ ਕੌਡੀ ਸੰਗ ਰਚਾ। ਕੌਣ ਰਚਾ? ਪੰਡਤ ਰਚਾ, ਪੰਡਤ ਦੀ ਗੱਲ ਹੈ। ਪੰਡਤੇ ਕਰ ਰਿਆ ਸੀ ਬੇਦ ਦਾ। ਪ੍ਰਚਾਰ ਹੋਣ ਕਿਨੇ ਕਰਨਾ ਸੀ। ਪਰ ਲਦੀ ਡਿਊਟੀ ਸੀ ਨਾ ਬੇ ਦ ਪ੍ਰਚਾਰ ਕਰਨਾ ਆ ਸੱਚ ਦਾ ਪ੍ਰਚਾਰ ਕਰਨਾ ਪਰ ਕਰਦਾ ਕੀ ਆ ਉਹ ਇਹ ਗੁੱਜੀਆਂ ਗੱਲਾਂ ਨੇ ਇਸ਼ਾਰੇ ਨੇ ਸਾਡੇ ਸਾਡੇ ਪ੍ਰਚਾਰਕ ਰਤਨ ਤਿਆਗ ਕੌਡੀ ਸੱਜ ਅੱਛਾ ਪ੍ਰਚਾਰ ਦੀ ਆਵਾਜ਼ ਛੱਡਦੀ ਆ ਸਰੀਰ ਕੌਡੀ ਇਹਦੇ ਨਾਲ ਹੋ ਗਿਆ ਇਹ ਕੌਡੀ ਤਾਂ ਬੰਦ ਨਹੀਂ ਹੈ ਸਰੀਰ ਕੌਡੀ ਵੀ ਨਹੀਂ ਬੁੱਲ ਪੈਣੀ ਫਿਰ ਤਾਂ ਮਹਿੰਗਾ ਪੈ ਜਾਣਾ ਲੱਕੜਾਂ ਵੀ ਕਈ ਸੌਦੀਆਂ ਆਉਂਦੀਆਂ ਨੇ ਹਮੇ ਕੋ ਮਰ ਜਾ 5-7000 ਰੁਪਏ ਨੂੰ ਕਰਨਾ ਹੋਵੇ ਤਾਂ 5-4000 ਰੁਪਏ ਦਾ ਲੱਗ ਜਾਂਦਾ ਤੇ ਪਿੱਛੋ ਕਰਨਾ ਆਵੇ ਜੇ 2 ਲੱਖ ਲਾ ਲਉ ਕਰਦਿਆਂ ਪੁੱਛ ਕੇ ਦੇਖੋ ਕਹਿੰਦਾ ਦੁਖੀ ਕਰਤੇ ਲੋਕਾਂ ਨੇ ਆਉਣ ਵਾਲਿਆਂ ਨੇ ਕਦੇ ਨਹੀਂ ਕਰ ਲੈਂਦੇ ਸਾਨੂੰ ਇੱਕ ਤਾਂ ਉਹਨਾਂ ਦਾ ਬੰਨਾ ਵਰਗਾ ਇੱਕ ਉਹਨਾਂ ਨੂੰ ਲੋਕ ਦੁਖੀ ਕਰੀ ਜਾਂਦੇ ਰਿਹਾ ਕੇ ਸਭ ਨੇ ਕਹੂੰ ਭਾਉ ਭੂਤਨ ਕੀ ਭਾਵਨਾ ਪਰਤੋ ਇਹ ਗਾਣੋਂ ਦਰ ਪਰ ਕਾਇ ਸੰਤ ਬਰੇ ਕਿਉਂ ਰੋਈਏ ਹੋਰ ਰੋਈਏ ਜੋ ਗ੍ਰਹਿ ਅਪਣੇ ਜਾਏ ਰੋ ਸਖਤ ਬਪੜੇ ਜਾਂ ਹਾਟੇ ਹੱਡ ਬੁਕਾਇ ਸਖਤ ਕਿੱਥੋਂ ਪੈ ਰਕੀਤੇ ਸਖਤ ਕਿੱਤੇ ਪੜਦਨੇ ਪੈਦਾ ਸਾਰੀ ਜ਼ਿੰਮੇਵਾਰੀ ਇਹਦੇ ਤੇ ਸਾਰੀ ਜ਼ਿੰਮੇਵਾਰੀ ਇਹਦੇ ਤੇ ਇਹ ਇਹਦਾ ਇਹ ਜੋ ਮੇ ਵਾਰੀ ਜਿਹਦਾ ਜਿਹੜਾ ਕੰਮ ਆਪਣਾ ਛੱਡ ਗਿਆ ਜਿਵੇਂ ਵਾਰੀ ਤਾਂ ਉਹਦੀ ਸੀ ਲੋ ਅੱਜ ਸਾਡੇ ਜੁਮੇਵਾਰੀ ਹੈ ਜਿਹਨਾਂ ਨੂੰ ਦਿੱਤਾ ਸੀ ਡਿਊਟੀ ਦਾ ਸੰਪਾਸ਼ਾ ਨੇ ਸੱਤਰ ਸਭਾ ਕਰਤਾ ਪੇਪਰ ਨਹੀਂ ਪੇਪਰ ਕੀ ਇਹਨੂੰ ਉਪਰ ਕਟਾਸ਼ ਕਰpa ਕੇ ਨਿਹਾਰੋ ਉਹਨੇ ਲਗਾ ਦਾਨ ਦੇ ਉਹ ਨਹੀਂ ਕੋ ਭਲੋ ਔਰ ਆਨ ਕੋ ਦਾਨ ਨਾ ਲਾਗਤ ਨਹੀਂ ਕੋ ਦਾਨ ਤੋ ਨਹੀਂ ਖਾਣ ਵਾਸਤੇ ਦਿੱਤਾ ਤੁਹਾਨੂੰ ਕੁਝ ਕਰਨ ਵਾਸਤੇ ਦਿੱਤਾ ਉਹਦੀ ਡਿਊਟੀ ਲਈ ਸੀ ਉਹ ਕੌਣ ਕਰੂਗਾ ਤੂੰ ਹੀ ਬਣਾਉ ਲਾ ਕੇ ਕਾਲੀ ਉਹਦੇ ਨਾਲ ਉਹ ਡਿਊਟੀ ਔਖੀ ਹੈ ਕਾਲੀ ਬਣਾਉ ਨੂੰ ਦਿੱਤਾ ਸੀ ਦਾਨ ਗੁਰੂ ਨੂੰ ਦਿੱਤਾ ਸੇ ਕਾਲੀ ਬਣਾਉਣਾ ਗੁਰੂ ਵਾਲੇ ਬਣਾਓ ਕਾਲੀ ਇਦ ਗੁਰਮੁਖ ਪੈਦਾ ਹੋ ਕੇ ਨਿਕਲਣਾ ਤੇ ਗੁਰਮੁਖਤਾਈ ਦਾ ਪਾਠ ਪੜਾਇਆ ਜਾਵੇ ਉਹ ਪੜਾਓ ਮਨਮੁਖ ਖਾਣ ਦਾ ਆਪਣੇ ਵਾਲੇ ਬਣੋੜੇ ਨੇ ਮਨਮੁਖ ਗੋਲਕ ਹੁਰੂਦੀ ਲਾਗੀ ਮਨਮੁਖਾਂ ਦੇ ਹੱਥ ਮਨਮੁਖ ਆ ਰਹੇ ਹੋ ਆਪਣੇ ਵਾਲੇ ਕੰਮ ਕਰਨ ਤੇ ਸ਼ੁਰੂ ਕਰ ਲੈ ਜੇ ਸੰਗਤ ਘਟਦੀ ਹੈ ਵਿਸੇ ਬਣਾ ਦਿਓ ਗੁਰਦੁਆਰਿਆਂ ਨੂੰ ਹੋਰ ਸਜਾ ਦਿਓ ਸੰਗਤ ਆਵੇ ਇੰਡਸਟਰੀ ਮੰਗੂ ਬਣਾ ਰਹੇ ਨੇ ਗੁਰਦਾਰਾ ਜਮੀਨ ਇੰਡਸਟਰੀ ਹੁੰਦੀ ਬੰਦੇ ਧਰਮਕ ਹੈ ਨਹੀਂ ਉਹ ਇੰਡਸਟਰੀ ਮੰਗੂ ਕਰ ਰਹੇ ਨੇ ਧਰਮਪੰਦੇ ਨੂੰ ਗੋਲਕਾ ਮੈਂ ਪ੍ਰਚਾਰਕ ਕਹਿ ਜਾ ਚਾਹੀਦਾ ਨਾਲ ਗੋਲਕ ਕਿਉਂ ਘਟ ਗਈ ਸਲਾਨੀ ਕੇਂਦਰ ਬਣਾਉਣਾ ਆਹ ਪਾਰਕਿੰਗ ਦਾ ਵੀ ਰੰਗ ਕਰੋ ਕਹੂੰ ਭਵ ਭੂਤਨ ਕੀ ਭਾਵਨਾ ਪਰਤੋ ਕਹੂੰ ਬਾਪੂਤਨ ਕੀ ਵਿਚਾਰੇ ਉਹਨਾਂ ਦੇ ਅੰਦਰ ਜੋ ਭੁੱਖ ਹੈ ਉਹਦੀ ਭੁੱਖ ਪੂਰੀ ਕਰ ਰਹੇ ਹਨ ਸਭੀ ਕਾਦੀ ਨਾਮ ਦੀ ਭੁੱਖ ਪ੍ਰਚਾਰ ਕਰਕੇ ਭਾਵਨਾ ਭਾਵਨਾ ਕਹੇ ਜੀ ਹੋ ਸਕਦੀ ਹੈ ਭਾਵਨਾ ਕੋਈ ਇਹ ਨਹੀਂ ਹੈ ਵੀ ਨਾਮ ਦੀ ਹੋਵੇ ਭਾਵਨਾ ਕਈ ਕਿਸਮ ਦੀ ਹੈ ਸਾਰੇ ਬੱਤਾਂ ਚਲਦੀਆਂ ਨੇ ਜਿਹੜੀ ਕਲਾਸ ਦਾ ਬੰਦਾ ਹੁੰਦਾ ਉਹੀ ਕਲਾਸ ਨੂੰ ਸਮਝ ਚਲਦੀ ਹੈ ਉਹ ਇਹ ਗਾਣ ਨੂੰ ਸਮਝ ਚਲਦਾ ਹੈ ਬਾਕੀ ਦੇ ਸਾਰੇ ਇਹ ਤਾਂ ਬਰਲੇ ਨੇ ਇਸ ਗਾਣ ਵਾਲੇ ਬਰਲੇ ਨੇ ਬੱਲੇ ਨੇ ਸਮਝਾਉਗੀ ਬਾਕੀ ਹੋਰ ਹੈਗੇ ਥੱਲੇ ਵਾਲੇ ਪਰ ਥੱਲੇ ਵਾਲੇ ਲੋਕ ਜਦੋਂ ਇਹ ਕਹਿੰਦੇ ਨੇ ਵੀ ਸਾਡੇ ਵਾਲਾ ਫਾਈਨਲ ਗਿਆਨ ਇੱਥੇ ਆ ਕੇ ਗੜਬੜਾ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਭਾਈ ਸਾਡੇ ਉਹਦਾ ਘਟਿਆ ਠੀਕ ਹੈ ਤਾਂ ਚੌਥੀ ਕਲਾਸ ਆ ਸਾਡੇ ਕੋਲ ਤਾਂ ਆ ਜਾ ਦਾਖਲ ਹੋ ਜਾ ਪੰਜਵੇਂ ਹੋ ਜਾਏਗਾ ਹੋਰ ਕਹਾਂ ਚਲੇ ਜਾਏ ਸੱਚ ਬੋਲਣ ਚ ਕੀ ਹਰਜ ਹੈ ਹਰ ਕੋਈ ਇਹ ਕਹਿੰਦਾ ਵੀ ਮਾਇਆ ਗੁਰੂਆਂ ਦਾ ਮੇਰੇ ਕੁਝ ਨਹੀਂ ਰੌੜਾ ਇਸ ਗੱਲ ਦਾ ਸੱਚ ਬੋਲਣ ਨੂੰ ਤਿਆਰ ਕੋਈ ਸੱਚ ਬੋਲਦਾ ਘਟਿਆ ਹੁੰਦਾ ਘਟਿਆ ਵੱਡ ਨੂੰ ਤਿਆਰ ਬਧੀਆ ਗਿਆਨ ਹੈ ਨਹੀਂ ਘਟਿਆ ਵੱਡ ਨੂੰ ਚਾਹਦਾ ਇਹ ਬੇਈਮਾਨੀ ਹੈ ਸਤਨਾਮੇ ਬੇਈਮਾਨੀ ਕਾਨੂੰਨ ਕਹਿੰਦਾ ਜਿੱਥੇ ਬੇਇਮਾਨੀ ਆਗੀ ਤਰ ਬੁਲੀ ਰਿਆ ਐਸ ਗੱਲ ਦਾ ਝਗੜਾ ਹੋਰ ਗੱਲ ਦਾ ਕਿਸੇ ਦਾ ਝਗੜਾ ਨਹੀਂ ਇੱਕੋ ਜਿਹਾ ਤਾਂ ਹੈ ਨਹੀਂ ਥੱਲੇ ਵੀ ਤਾਂ ਸਕੂਲ ਥੱਲੇ ਜਾਂਦੇ ਨੇ ਪੜਦੇ ਯੂਨੀਵਰਸਿਟੀ ਤਾਂ ਕੋਈ ਕੋਈ ਪਹੁੰਚਦਾ ਹੈ ਤਰੀਕੇ ਦੀ ਗੱਲ ਕਰਨ ਫਿਰ ਕੋਈ ਰੌਲਾ ਨਹੀਂ ਹੈ ਰੌਲਾ ਇਸ ਗੱਲ ਦਾ ਗੁਮਰਾ ਕਰਦੇ ਨੇ ਗੁਮਰਾ ਕਰਦੇ ਰਹਿ ਜਿਵੇਂ ਸਪੋਕਸਨ ਗੁਮਰਾ ਕਰਦਾ ਨਾਂਕਦੇ ਨਾਉਤੇ ਗੁਮਰਾ ਕਰ ਰਿਹਾ ਹੈ ਉਹ ਜਿਹੜੇ ਬੇਵਕੂਫ ਨੇ ਉਹ ਕਹਿ ਰਹੇ ਨੇ ਗੁਰਮਤਿ ਦਾ ਪ੍ਰਚਾਰ ਕਰ ਰਹੇ ਉਹਨਾਂ ਨੂੰ ਕੀ ਪਰੇ ਘਬਰਾ ਕਰ ਰਹੇ ਪ੍ਰਚਾਰਕ ਉਹ ਆਪ ਨਹੀਂ ਉਹਨਾਂ ਨੂੰ ਪਤਾ ਇਹਦਾ ਥੱਲੇ ਨੇ ਜਿਹੜੇ ਨੇ ਕਰ ਰਹੇ ਆ ਇਹ ਕਿੱਡਾ ਬੜਾ ਪਲਾਨ ਆ ਜੇ ਇੱਕ ਗੱਲ ਵੀ ਬਦਲੀ ਰਹਿ ਨਾ ਇਹਨਾਂ ਦੀ ਇੱਕ ਗੱਲ ਬੜੀ ਜੀ ਬਦਲ ਨਹੀਂ ਦੇ ਜਿਵੇਂ ਅਸੀਂ ਇੱਕ ਲਗਭਗ ਤਾਂ ਨਹੀਂ ਬਦਲ ਸਕਦੇ ਗੁਰੂ ਗ੍ਰੰਥ ਸਾਹਿਬ ਚੋਂ ਨਾ ਬਦਲ ਸਕਦੇ ਆ ਇਹਦੇ ਚੋਂ ਇਹਨਾਂ ਨੂੰ ਕੀ ਪਤਾ ਧਰਮ ਗ੍ਰੰਥ ਤੇ ਚ ਇੱਕ ਵੀ ਜਰਾ ਬਦਲੀ ਖਤਮ ਹੋ ਜਾਂਦਾ ਸਾਰਾ ਕੁਝ ਇਹ ਕਹਿੰਦੇ ਨੇ ਵੀ 10.5 ਆ ਜਾਂਦ ਸਿਗੇ ਉਦੋਂ ਉਹਨਾਂ ਦੇ ਵਿੱਚ ਇੱਕ ਗ੍ਰੰਥ ਨਹੀਂ ਸੀ ਤਿਆਰ ਠੀਕ ਆ ਨਹੀਂ ਸੀ ਤਿਆਰ ਕੌਣ ਕਹਿੰਦਾ ਤਿਆਰ ਸੀ ਕੋਈ ਕਹਿੰਦਾ ਤਿਆਰ ਸੀ ਇਹ ਕੋਈ ਵੀ ਨਹੀਂ ਕਹਿੰਦਾ ਤਿਆਰ ਸੀ ਪਰ ਅਬਰ ਜ਼ਦਾ ਪਹਿਲਾਂ ਤਿਆਰ ਹੋ ਗਿਆ 1900 ਨੇ 1690 ਰੁਪਏ ਬਾਣੀ ਦਾ ਤਾਂ ਪਹਿਲਾਂ ਹੀ ਵੜਤੀ ਆ ਬਾਣੀਆ ਤਾਂ ਤੈਨੂੰ ਪਹਿਲਾਂ ਹੀ ਆ ਗਿਆ ਦਾ 1690 ਰੁਪਏ ਚੱਲੀਆਂ ਆਉਂਦੀਆਂ ਨੇ ਬਸਮਾਨਤਾ ਤਾਂ ਉਹਦਾ ਦੇਤੀ ਦੀ ਆਬਰਸ਼ਾ 1690 1690 ਰੁਪਏ ਵਿੱਚ ਮਿਲਦਾ ਦੇ ਗ੍ਰੰਥ ਕਦੇ ਤਿਆਰ ਹੋ ਜਵੇ ਜੇ ਗੁਰੂ ਨਾਨਕ ਦੇ ਟਾਈਮ ਗ੍ਰੰਥ ਨਹੀਂ ਤਿਆਰ ਹੋਇਆ ਫਿਰ ਕੀ ਹੋ ਗਿਆ ਕਿ ਕਬੀਰ ਵੇਲੇ ਗ੍ਰੰਥ ਨਹੀਂ ਸੀ ਤਿਆਰ ਹੋਇਆ ਫਿਰ ਕੀ ਹੋ ਗਿਆ ਉਹ ਬਾਣੀ ਦੀ ਵੈਲਿਊ ਘਟ ਗਈ ਜਾਂ ਉਹਦੇ ਸ਼ੱਕ ਕਰੀਏ ਕਬੀਰ ਦੀ ਬਾਣੀ ਦੇ ਕਦੀ ਸ਼ੱਕ ਕਰਦੇ ਵੀਰ ਰਲਾ ਬਹਿ ਗਿਆ ਨਾਨਕ ਦੀ ਬਾਣੀ ਦੇ ਕਦੀ ਸ਼ੱਕ ਕਰਦੇ ਰਲਾ ਬਹਿ ਗਿਆ ਨੋਵੇਂ ਪਾਸ਼ਾ ਦੀ ਬਾਣੀ ਬਾਅਦ ਚ ਪਈ ਹੈ ਇਹ ਸਭ ਚਲਾਕੀ ਹੈ ਇਹਨਾਂ ਦੀ ਨਾਂਬਰ ਦਰ ਰਹੇ ਤੁਹਾਡਾ ਉਹ ਤਾਂ ਇੱਥੇ ਤੱਕ ਬਦਗਦੀ ਉਹਨਾਂ ਨਾਂਬਰ ਤੋਂ ਵਿਚ ਬਾਣੀ ਨਹੀਂ ਕਾਲਾ ਭਗਾਨਾ ਉਹਦੇ ਜੇਲੇ ਨੇ ਸਾਰੇ ਪਿਛੇ ਆ ਰਹੇ ਐਸਾ ਐਸਾ ਵੀਰ ਐਸਾ ਸ਼ੱਕ ਪਾ ਦੋ ਨਾਗਾ ਡੀਰ ਦਾ ਪਰ ਤੁਪ ਭਗੋਤੀ ਸੁਬਰਕ ਗੋਦਾਨ ਲਈਤੇ ਪੁਰਾਣੇ ਅਰਦਾਸ ਬਣਾਈ ਸੀ ਨਾਕਾਰੀਆਂ ਇਹ ਤਾਂ ਵਿਰੋਧੀਆਂ ਦੀਆਂ ਸਾਜਸ਼ਾ ਨੇ ਸ਼ੁਰੂ ਦੀਓ ਕਿਸ ਤਰੀਕੇ ਨਾਲ ਜਰਾ ਕੁ ਕਹਿ ਦੀਏ ਪਹਿਲਾਂ ਇਹਨੂੰ ਤੋੜੀਏ ਫਿਰ ਆਦ ਨੂੰ ਤੋੜੀਏ ਉਹ ਜੀ ਵੀ ਬਹੁਤ ਕੁਝ ਹੈ ਇਹ ਨਾਕਾਰੀ ਕਰ ਦੀਏ ਸਭ ਕੁਝ ਇਹਨਾਂ ਦੀ ਕੌਣ ਮਾਲੂਕ ਹੈ ਪਾਗਲਾਂ ਦੀ ਗੱਲ ਕੋਈ ਨਾਲ ਇਹ ਕਦੇ ਸਿੱਖ ਨੇ ਉਹਨੂੰ ਪੁੱਛਿਆ ਕਿ ਤੂੰ ਸਿੱਖੀ ਤਾਂ ਤਾਂ ਖਾਰੀ ਕੀਤਾ ਤੈਨੂੰ ਬੋਲਣਾ ਦਾ ਕਰ ਕੀ ਦਿੱਤਾ ਕਿੰਦਰ ਸੇ ਨਮੋ ਅੱਜ ਕਿਦਰ ਸੇ ਨੂੰ ਕੀ ਦਾਅਦ ਕਰ ਰਹੇ ਦੂਏ ਤਰ ਜੋ ਧਾਰਮਿਕ ਬੰਦਾ ਹੀ ਨਹੀਂ ਸਾਡਾ ਉਹ ਸਾਡੇ ਤਰ ਤੇ ਜਿਪੜੀ ਕਭੀ ਕਰ ਸਕਦਾ ਉਹ ਕਰ ਸਕਦਾ ਹੈ ਬੋਲਣ ਦੀ ਆਜ਼ਾਦੀ ਦਾ ਮਤਲਬ ਇਹ ਨਹੀਂ ਹੈਗਾ ਵੀ ਜੋ ਮਰਜੀ ਬੋਲੀ ਜਾਓ ਜੇ ਗਲਤ ਬੋਲੋਗੇ ਕੈਸ ਵੀ ਹੋ ਜਾਂਦਾ ਤਰਜ ਬਾਹਰ ਗਲੇ ਝੂਠ ਦਾ ਕੇਸ ਨਹੀਂ ਕਰਦੇ ਇਹਨੂੰ ਗੁਰਮਤਿ ਸੋਝੀ ਨਹੀਂ ਹੈ ਇਹ ਸਾਬਿਤ ਕਰ ਦੀਏ ਕੁਰਬਾਨੀ ਦੀ ਸੋਚੀ ਨਹੀਂ ਫਿਰ ਕੀ ਕਰੂਗਾ ਸਾਬਿਤ ਕਰ ਦੇਣਾ ਹੋ ਹੋ ਗਿਆ ਸਾਦਰੋਂ ਕੋ ਕਰ ਸਰ ਭੱਜ ਕੇ ਕੱਲ ਇਹ ਹੁਣ ਕਿਆ ਕਿਆ ਤੋਂ ਭਜਦੇ ਨੇ ਚਾਚਾ ਇਹਨਾਂ ਦਾ ਕਰੂਗਾ ਖਾਣੇ ਨਾਲ ਕੋ ਹੈ ਕੀ ਅਮਰਸਰ ਇਹਨਾਂ ਨੇ ਕਿਹਾ ਵੀ ਜਿੱਥੇ ਮਰਜ਼ੀ ਚਰਚਾ ਕਰੋ ਸਾਡੇ ਨਾਲ ਦਸਵੰਗਣ ਤੇ ਹੁਣ ਕਹਿੰਦੇ ਚਰਚਾ ਕੀ ਕਰਨੀ ਹੈ ਜੀ ਇਹ ਤਾਂ ਨਿਕਲਣਾ ਇਹਦਾ ਇਹ ਸਾਧਨੇ ਵੇਲੇ ਨੇ ਜੀ ਇਹ ਕਰਦੇ ਨਹੀਂ ਉਹਦਾ ਦਸਾਣਾ ਹੁੰਦੀ ਤੂੰ ਦਸਾਣਾ ਹੁੰਦੀ ਕਮਾਈਓ ਕਰਦਾ ਠੱਗੀਆਂ ਮਾਰਦੇ ਲੋਕਾਂ ਨੂੰ tras ki tras mere no hai mera kade vishwas nahi tu ta lokan de rupiye apne naukri baithe te te ਔਰ ਉਹਨਾਂ ਨੂੰ ਟ੍ਰਾਂਸਫਰ ਹੋਣ ਤਾਂ ਉਹ ਉੱਥੇ ਜਵੀਲ ਲਊਗਾ। ਜਵੀਲ ਸਸਤੀ ਬਿਲਜੂਗੀ। ਵੀ ਚੱਲ ਫਿਰ ਉਹ ਵੇਚ ਲਾਂਗੇ ਜੇ ਦੁਵਾਲਾ ਨਿਕਲਿਆ। ਅਰੇ ਅੱਜ ਕਿਹਦੇ ਜਾਣਦੇ ਵੀ ਤੂੰ ਕਿੱਥੇ ਬੈਠਾ। ਸਾਰੇ ਜਾਣਦੇ ਆ। ਕਿਧਰ ਬੰਲੀ ਜਾਏ। ਹਾਂ। ਕਹੂੰ ਗੀਤ 나ਦ ਕੇ ਨਿਦਾਨ ਕੋ ਬਤਾਵਤ ਹੋ। ਕਹੂੰ ਗੀਤ 나ਦ ਨਿਦਾਨ ਕੋ ਬਤਾਵਤ ਹੋ। 나ਦ ਕੇ ਹੋ। ਅਗੁਰਬਾਣੀ ਹੈ ਗੁਰਬਾਣੀ ਜਿਹੜੀ ਹੈ ਨਾਦ ਉਹਦਾ ਹੈ ਲੋਕਾਂ ਇਹਦਾ ਜਿਹੜਾ ਰਹੱਸ ਹੈ ਰਹੱਸ ਕਿਤੇ ਵਿਚਾਰ ਕਰਦੇ ਇਹ ਦੱਸ ਰਹੱਸ ਬ੍ਰह्मਚਾਰ ਕੋਹੂ ਨਿਰਤਕਾਰੀ ਚਿੱਤਰਕਾਰੀ ਕੇ ਨਿਦਾਨ ਹੋ ਕਿਤੇ ਨਿਰਤਕਾਰੀ ਔਰ ਚਿੱਤਰਕਾਰੀ ਉਹ ਵੀ ਧਰਮਸੀਰ ਦੇ ਉਧਰ ਸੀ ਉਹ ਤਾਂ ਇਨਾ ਉਹਨਾਂ ਨੇ ਝੂਠ ਬੋਲਿਆ ਕਹਿੰਦਾ ਜਿਹੜਾ ਰਾਗ ਹੈ ਰਾਗ ਜੀ ਪੱਥਰ ਪਿਘਲ ਜਾਂਦਾ ਹੈ ਉਹ ਹੋ ਜਾਂਦਾ ਹੈ ਹੋ ਜਾਂਦਾ ਪਗੜਾ ਕੇ ਦਿਖਾਓ ਮੈਂ ਪਾੜੀ ਜੀ ਵੀ ਪੈਣ ਲੱਗ ਜਾਂਦਾ ਉਹ ਰਾਜਸਥਾਨ ਚ ਪਾਉਣ ਫੇ ਵੀ ਉਹ ਜਦ ਵੀ ਪੈ ਜਾਂਦਾ ਹੋਰ ਕੀ ਚਾਹੀਦਾ ਇਹ ਸਭ ਝੂਠ ਹੈ ਗੁਰਬਾਣੀ ਕੋਈ ਰਕਾਸੜੀ ਗੇਰਦੀਆਂ ਇਹਨਾਂ ਨੂੰ ਨਾ ਨਿਤਕਾਰੀਆਂ ਨੂੰ ਨਾ ਚਿਤਰਕਾਰੀਆਂ ਨੂੰ ਨਾ ਚਿਤਰਕਾਰੀਆਂ ਨੂੰ ਦਾਏ ਜਿਹੜੇ ਰਾਗੀ ਰਹੇ ਦਰੂਹ ਇਹ ਚੂੜਦੇ ਖੜੇ ਨੇ ਸਾਰੇ ਕੋਤੋਂ ਰਾਗੀ ਦਾ ਤਾਂ ਮਰਨੀ ਬੈਠ ਸਕਦਾ ਕਭੀ ਜੈ ਰਾਗੀ ਨਾ ਦੀ ਰਾਗ ਦੇ ਪਰਿਆ ਰਾਗ ਨਾ ਰੰਗ ਨਾ ਰੂਪ ਨਾ ਰੇਖ ਨਾ ਰੋਗ ਨਾ ਸੋਗ ਨਾ ਭੋਗ ਨਾ ਰਾਗ ਤਾਂ ਹੈ ਹੀ ਰਾਗ ਤੇ ਪਰੇ ਹੋ ਹੁਣ ਅਸੀਂ ਬਿਰਾਗੀ ਹੋ ਗਏ ਰਗੀ ਕਦੋਂ ਹੂੰ ਪਯੂਕ ਹੋਏ ਕੇ ਪੀਵਤ ਪਿਵਾਵਤ ਹੋ ਹਾਂ ਕਦੋਂ ਪੀਹੂ ਪਯੂਖ ਹੋ ਕੇ ਪਿਊਖ ਅਮਰਤ ਆਪੇ ਗਿਆ ਕਦੋਂ ਪਯੂਖ ਹੋਏ ਕੇ ਪਿਵਾਵਤ ਹੋ ਪਯੂਖ ਹੋ ਗਿਆ ਆਪੇ ਅਮਰਤ ਬਣ ਗਿਆ ਅਮਰਤ ਧਾਰਾ ਆਪ ਵੀ ਬਿਨੇ ਬੇਉਦਾ ਵੀ ਸਤਗੁਰ ਅਮਰ ਦਸਰੋਵਰ ਹਨ ਸਤਗੁਰ ਨੂੰ ਅਮਰ ਦਸਰੋਵਰ ਹੈ ਸਤਗੁਰ ਹੀ ਨੂੰ ਜਾਣ ਲਿਆ ਸਤਗੁਰ ਆ ਵੀ ਪਲਾਵੀ ਰਿਹਾ ਵੀ ਵੀ ਰਿਹਾ ਆਪ ਨੂੰ ਆਪ ਰੂਹ ਕਹਿ ਰਹੇ ਨੇ ਇਹ ਵਸਾਦੇ ਉਹਨਾਂ ਦੀ ਆਪੇ ਜਿਹਾ ਲਿਖ ਰਿਹਾ ਕਦੋਂ ਪੀਉ ਕੋ ਕੇ ਅਬਰ ਦੋ ਕੇ ਆ ਵੀ ਪੀ ਰੇ ਅਬਰ ਲੋਕਾਂ ਨੂੰ ਵੀ ਬੁਲਾ ਰਹੇ ਵਡ ਵੀ ਰੇ ਉਹ ਕਹਿੰਦੇ ਨੇ ਜਦੋਂ ਜਿਹੜਾ ਕੋਈ ਗਿਆਨ ਦਿੰਦਾ ਉਹਨੂੰ ਆਪ ਨੂੰ ਗਿਆਨ ਮਿਲਦਾ ਮਿਲਦਾ ਨਾ ਜਿਹੜਾ ਗਿਆਨ ਦਿੰਦਾ ਹੈ ਨਾ ਉਹ ਨੂੰ ਜਦਾਂ ਖਰਚਦੇ ਆ ਉਹਨਾਂ ਨੂੰ ਮਿਲਦਾ ਹੈ ਉਹੀ ਤਾਂ ਗੱਲ ਹੈ ਹੋਰ ਨਾਮ ਦਿੰਦਾ ਉਹਨੂੰ ਉਹ ਨਹੀਂ ਵੀ ਮਿਲਦਾ ਅਲੱਗ ਉਹ ਜਿੰਨਾ ਵੱਧਦਾ ਉਹਨਾਂ ਉਹਦਾ ਵਾਧਾ ਘਟਦਾ ਨਹੀਂ ਹੁੰਦਾ ਉਹ ਗੱਲ ਇਹ ਕਹਿ ਰਹੇ ਨੇ ਪਲਟ ਕੇ ਤੂੰ ਮਯੂਖ ਊਖ ਕਹੂ ਮਦ ਪਾਨ ਕਾ ਤੂੰ ਬਿਯੂਖ ਬਿਯੂਖ ਇਹਨੇ ਸ਼ਾਇਦ ਲਿਖਿਆ ਵੇ ਸ਼ਾਇਦ ਨਹੀਂ ਬਿਯੂਖ ਦਾ ਅਰਥ ਹੈ ਮਿੱਠਾ ਬਿਯੂਖ ਕਾ ਤੂੰ ਮਯੂਖ ਊਖ ਊਖ ਇਕੜਾ ਇਕੜਾ ਖੱਟਾ ਵੀ ਹੁੰਦਾ ਨਾ ਰਸ ਇਹ ਭਾਦੋ ਚ ਪੀਣ ਲਈ ਪਹਿਲਾਂ ਹੀ ਖਟਾ ਹੁੰਦਾ ਉਹ ਖੱਟਾ ਹੁੰਦਾ ਜਦੋਂ ਬਿਯੂਖ ਹੋ ਜਾਂਦਾ ਹੈ ਰਸ ਗੰਨੇ ਦਾ ਬਹੁਤ ਜ਼ਿਆਦਾ ਮਿੱਠਾ ਉਹ ਨਹੀਂ ਗੱਲ ਹੈ ਬਿਯੂਖ ਕਾ ਤੂੰ ਮਯੂਖ ਊਖ ਕਹੂ ਮਦ ਪਾਨੋ ਕਹੋ ਮਦ ਪਾਨੋ ਉਹਦੇ ਰਸ ਨੂੰ ਰੱਖ ਲਿਓ ਜੋ ਸ਼ਰਾਬ ਬਣ ਜਾਂਦੀ ਹੈ ਕਦੇ ਕੋਈ ਰਸ ਪੀ ਲੈਂਦਾ ਕਦੇ ਕੋਈ ਉਹਦੀ ਸ਼ਰਾਬ ਬਣਾ ਕੇ ਪੀ ਲੈਂਦਾ ਐਂ ਕਹਿ ਰਹੇ ਨੇ ਸ਼ਾਇਦ ਆਹਨੂੰ ਕਹਤਾ ਸ਼ਾਇਦ ਦਾ ਮਤਲਬ ਮਿਠਾ ਇੱਥੇ ਆਪਾਂ ਕਹਿੰਦੇ ਸ਼ਾਇਦ ਵਰਗਾ ਮਿਠਾ ਆ ਦੀ ਸੈンス ਵਿਚ ਸ਼ਾਇਦ ਇਹ ਵੀ ਜਰਾ ਤੂੰ ਮਯੂਖ ਕਹ ਹੂੰ ਮਦ ਹੋ ਕਹ ਮਦ ਪਾਨ ਹੋ ਕਹ ਹੂੰ ਮਹਾ ਕ ਮਾਰਤ ਮਵਾਸਣ ਕੋ ਕਦੇ ਵਾ ਸੂਰਬੀਰ ਹੋ ਕੇ ਆਪਣੇ ਜਿਹੜੇ ਵਿਰੋਧੀ ਨੇ ਆਕੀ ਨੇ ਉਹਨਾਂ ਨੂੰ ਗਾ ਉਹਨਾਂ ਨੂੰ ਕੋਟ ਕੋਟ ਨੇ ਮਵਾਸਨ ਜਿਹੜੇ ਆਕੀ ਹੋਏ ਮਰਦਾ ਮਗਰ ਖਤਮ ਕਰਨਾ ਨਹੀਂ ਹੁੰਦਾ ਖਤਮ ਕਰਨਾ ਨਹੀਂ ਗੁਰਬਾਨੀ ਬੰਦੀ ਆਤਮਾ ਖਤਮ ਨਹੀਂ ਹੁੰਦੀ ਹੈ ਉਹਨਾਂ ਦਾ ਹੰਕਾਰ ਤੋੜਨਾ ਫੇ ਤੋੜ ਕੇ ਹੰਕਾਰ ਦੇ ਤੋੜ ਨਹੀਂ ਇਹ ਬਾਣੀ ਵੀ ਪਰਮੇਸ਼ਰ ਵੀ ਹੰਕਾਰ ਤੋੜ ਕੇ ਆਪਣੇ ਜ਼ਿਹਰੇ ਕਰ ਰਿਹਾ ਹਦੀਰੇ ਕਰ ਰਿਹਾ ਗਰਮ ਪ੍ਰਹਾਰੀਓ ਲਿਖਿਆ ਗਰਮ ਤੇ ਪ੍ਰਹਾਰ ਕਰਕੇ ਆਪਣੇ ਅਧੀਨ ਕਰਦੇ ਹਨ ਪਰਮੇਸ਼ਰ ਹੁਕਮ ਦੇ ਵਿੱਚ ਚੱਲਣ ਦੀ ਗੱਲ ਹੈ ਆਹੀ ਗੱਲ ਹੈ ਇਹ ਰਾਜ ਤੂੰ ਹੀ ਸਾਡੇ ਅਧੀਨ ਹੈ ਖਰਚਾ ਹੋਤੇ ਲੈ ਲੈਣਾ ਫੌਜ ਸਿਬਦ ਕਰ ਦੇਣੀ ਇਦੋਂ ਵੱਧ ਫੌਜੀ ਨਹੀਂ ਰੱਖ ਸਕਦਾ ਪਵਨ ਲਾ ਦੇਣੀ ਕਹੂੰ ਮਹਾਦੇਵ ਦੇਵਤਾਨ ਕੇ ਸਮਾਨ ਹੋ ਕਹੂੰ ਮਹਾਦੇਵ ਕਦੇ ਮਹਾਦੇਵ ਕਹੂੰ ਦੇਵਤਾਂ ਦੇ ਸਮਾਨ ਹੈ ਪਰ ਦੇਵਤਾਂ ਦੇ ਬਰਾਬਰ ਹੀ ਹੋਰ ਕੁਝ ਨਹੀਂ ਹੈਗਾ ਮਹਾਦੇਵ ਦੇਵਤਾਂ ਦੇ ਸਮਾਨੋ ਦੇਵਤਾਂ ਦੇ ਬਰਾਬਰ ਹੀ ਹੈ ਮਹਾਦੇਵ ਨੂੰ ਉਹ ਰੂਪ ਜਿਹੜਾ ਇਹਨਾਂ ਨੇ ਦਿੱਤਾ ਹੈ ਉਹ ਖੋ ਕੇ ਪਦਵੀ ਦੇਵਤਾਂ ਦੇ ਸਮਾਨ ਕਰਤਾ ਯਾ ਯਾ ਹੋਰ ਦੇਵਤਾਂ ਹੋ ਜਾ ਤੂੰ ਮਹਾਦੇਵ ਕਹਿੰਦੇ ਨੇ ਪਰ ਇਹਨਾਂ ਨੇ ਦੇਵਤਾਂ ਦੇ ਸਮਾਨ ਕਰਤਾ ਦੇਵਤਾਂ ਦੇ ਸਮਾਨੋ ਡਿਗਰੀ ਖੋਲੀ ਬਹੁਦੇ ਵਾਲੀ ਕੋਈ ਨਾ ਬਿੱਲਾ ਲੱਗਾ ਨਾ ਮਾਂ ਦੇਵਤਾ ਉਹ ਲਾ ਲਿਆ ਨਾ ਕੇ ਕਹਿੰਦੇ ਦੇਵਤਾਂ ਦੇ ਸਮਾਨ ਨੂੰ ਤੇ ਬਿੱਲਾ ਲਾਇਆ ਉਹਦਾ ਜਿਹੜਾ ਤਾਜ਼ਾ ਨਾ ਫालतू ਦਾ ਕਹੂੰ ਮਹਾਦੀਨ ਕਹੂੰ ਦਰਬ ਕੇ ਅਧੀਨ ਕਹੂੰ ਵਿਦਿਆਮੇ ਪ੍ਰਵੀਨ ਕਹੂੰ ਭਰਮ ਕਹੂੰ ਭਾਨ ਉਹ ਕਹੂੰ ਮਹਾਦੀਨ ਕਿਤੇ ਮਹਾਦੀਨ ਮਹਾਦੀਨ ਦਾ ਵਦਲਾ ਸੰਧਾਰਤ ਤਾਂ ਤਕਰੀਬ ਨਹੀਂ ਹੈ ਉਹਨਾਂ ਨੇ ਕਹਿੰਦੇ ਡੁਬਰਤਾ ਹੈ ਹੱਦ ਤੋਂ ਜ਼ਿਆਦਾ ਡੁਬਰ ਹੈ ਡੁਬਰ ਹੈ ਡੁਬਰ ਸੁਭਾਅ ਵਾਲਾ ਕਹੂੰ ਮਹਾਦੀਨ ਕਹੂੰ ਦਰਬਕੇ ਦੀਨ ਕਿਤੇ ਦਰਬਕੇ ਦੀਨ ਦਰਬਕੇ ਦੀਨ ਆਵਾਯਾ ਦੇ ਦੀਨ ਪੰਡਿਤ ਕੋਈ ਰਾਜਾ ਬਹੁਤ ਬੁੱਧਵਾਨ ਹੈ ਪਰ ਦਰਬਕੇ ਦੀਨ ਬੜਾ ਬੜੇ ਵਿਦਵਾਨ ਦਰਬਕੇ ਦੀਨ ਬੜੇ ਬੜੇ ਸੰਤ ਦਰਬਕੇ ਦੀਨ ਹੋ ਜਾਂਦੇ ਆਵਾਜ਼ ਨਹੀਂ ਦੀ ਗੱਲੇ ਨਹੀਂ ਕਰਦੀ ਬਾਣੀ ਬਾਣੀ ਤੇ ਟੋਪ ਦੇ ਬੰਦੇ ਦੀ ਗੱਲ ਕਰਦੀ ਹੈ ਹਾਂ ਜਿਹੜਾ ਦਰਬ ਕਹਦੀ ਇਹਨ ਤਨ ਤਨ ਧਨ ਕੋ ਪਾਕੀ ਹੈ ਜਾਂ ਕੋ ਜਗਤ ਗੁਲਾਮ ਕਹਿੰਦਾ ਜਿਹੜਾ ਸੰਸਾਰੀ ਤਾਹਨਾ ਵੀ ਤਨ ਸੰਸਾਰ ਸਾਰਾ ਗੁਲਾਮ ਹੈ ਦਾ ਛੋਟੀ ਗੱਲ ਹੈ ਜੀ ਦਾ ਸਾਰਾ ਸੰਸਾਰ ਗੁਲਾਮ ਹੈ ਉਹਦੀ ਤਾਕਤ ਨੂੰ ਥੋੜੀ ਮੰਨਣਾ ਥੋੜੀ ਗੱਲ ਹੈ ਉਹ ਸ਼ਕਤੀ ਤੋਂ ਬਾਹਰ ਕਿਵੇਂ ਆਣੇ ਉਦੀ ਤਾਕਤ ਤੇ ਬਾਹਰ ਕਮੇ ਹੋੜ ਇਹ ਹੈ ਧਰਮੁਤ ਇਹਨੂੰ ਧਰਮ ਕਹਿੰਦੇ ਨੇ ਉਦੀ ਗੁਲਾਮੀ ਜੋ ਬਾਹਰ ਕਮੇ ਹੋੜ ਇਤਿਆਗ ਨਹੀਂ ਚੱਲਣੀ ਆ ਭਈ ਮਾਇਆ ਜਦੋਂ ਤਿਆਗਤਾ ਚੜਨੋ ਜੋ ਫਿਰਦੀਆ ਫਿਰ ਫਿਰ ਇਹ ਤੁਸੀਂ ਤਾਂ ਨਾਮਾ ਕੀ ਦਸੀ ਦਸੀ ਇਹ ਤਾਂ ਪਿਛੇ ਪਿਛੇ ਵਰਦੀ ਹੈ ਮਾਇਆ ਦਾਸੀ ਭਗਤਾਂ ਦੀ ਕਾਰ ਕਮਾਵੇ ਹਾਂ ਮਾਇਆ ਦਾਸੀ ਭਗਤਾਂ ਦੀ ਕਾਰ ਕਮਾਵੇ ਕੋ ਦਰਬ ਕੇ ਅਧੀਨ ਦਰਬ ਕੇ ਅਧੀਨ ਨਹੀਂ ਆਉਹੋ ਗੁਰੂ ਘਰ ਸ਼ਮਾਇਆ ਸੀ ਦਰਬ ਕੇ ਅਧੀਨ ਸੀ ਪਰ ਉਹ ਬਸ ਆ ਗੱਲ ਹੈ ਦਰਬ ਮਾਇਆ ਹੋਣੀ ਕੋਲ ਹੋਰ ਗੱਲ ਹੈ ਦਰਬ ਕੇ ਅਧੀਨ ਹੋਣੂ ਹੋਰ ਗੱਲ ਹੈ ਦਰਬ ਕੇ ਅਧੀਨ ਹੋਣਾ ਹੋਰ ਗੱਲ ਹੈ ਕਹੂੰ ਵਿਦਿਆਮੇ ਪ੍ਰਵੀਨ ਕਹੂੰ ਵਿਦਿਆਮੇ ਪ੍ਰਵੀਨ ਕਿਤੇ ਵਿਦਿਆਚ ਪ੍ਰਵੀਨ ਦੇ ਨਿਪੁੰਨ ਵਿਦਿਆਲੇ ਵਿੱਚ ਕਹੂੰ ਭੂਮ ਕਹੂੰ ਬਾਣ ਹੋ ਕਿਤੇ ਭੂਮ ਹੈ ਕਿਤੇ ਬਾਣ ਭੂਮ ਲੜਦੇ ਨੇ ਕਰਦਾ ਧਰਤੀ ਬਸ ਭੂਮ ਧਰਤੀ ਕਾਹਨੂੰ ਹੁੰਦੀ ਐ ਭੂਮ ਉਹ ਹੈ ਹਿਰਦਾ ਜੀ ਤੇ ਸੂਰਜ ਦੀਆਂ ਕਰਨਾ ਪੈਂਦੀਆਂ ਨੇ ਧਰਤੀ ਤਾਂ ਹਿਰਦਾ ਹੁੰਦੀ ਐ ਜਿੱਥੇ ਢੇਰਾ ਹੈ ਸੂਰਜ ਹੈ ਕਿਤੇ ਤੂੰ ਬਾਣ ਉਦੇ ਭੱਜ ਜਾ ਬਚੀ ਨਾ ਪਾਣੇ ਸੂਰਜ ਨੂੰ ਕਹਿੰਦੇ ਹੀ ਨਹੀਂ ਇਹਦੇ ਚਾਨਣ ਕਰਨ ਵਾਲਾ ਆਹ ਕਹਿੰਦੇ ਇਹਦੇ ਚਾਨਣ ਕਰਨ ਵਾਲਾ ਤੂੰ ਕਿਤੇ ਗੁਰਮੁਖਾਂ ਗੁਰਮੁਖ ਉਹ ਬਹਨੇ ਹੁੰਦਾ ਉਹ ਕਹੂੰ ਅਕਲਾਂਕ ਕਿੰਨੇ ਕਰਾਉਣ ਵਾਲਾ ਕਿਤੇ ਚਾਨਣ ਕਰਨ ਵਾਲਾ ਜਿੱਥੇ ਚਾਨਣ ਹੋ ਰਿਹਾ ਉਹ ਭੂ ਹੋਇਆ ਜਿੱਥੇ ਚਾਨਣ ਕਰ ਰਿਹਾ ਜਿਹੜਾ ਕਰ ਰਿਹਾ ਭਾਨ ਚਾਨਣ ਕਰਨ ਵਾਲਾ ਭਾਨਾ ਜਿੱਥੇ ਚੰਨ ਹੋ ਰਿਹਾ ਉਹ ਭੂਗ ਬੋਗ ਤੋਂ ਉਹ ਕਹੂ ਭਾਨੋ ਕਹੂ ਅਕਲੰਕ ਕਹੂ ਮਾਰਤ ਮਯੰਕ ਕਹੂ ਅਕਲੰਕ ਕਿਤੇ ਕਲੰਕ ਤੋਂ ਰਹਿਤ ਹੈ ਕਲੰਕ ਨਹੀਂ ਲੱਗਦਾ ਦੇਕਲੰਕ ਕੀ ਹੈ ਦੇਕਲੰਕ ਕੀ ਕਹਦਾ ਜਾਂ ਹੁਕਮ ਦੇ ਵਿੱਚ ਹੈ ਫਿਰ ਇਹਨੂੰ ਪੁੰਨ ਪਾਪ ਨਹੀਂ ਲੱਗਦਾ ਜਾਂ ਪੁੰਨ ਪਾਪ ਦਾ ਲੈਪ ਨਹੀਂ ਨਾ ਲੱਗਦਾ ਦੇਕਲੰਕ ਹੈ ਵੇਗਲਾ ਅੰਕ ਕਵਤਾਰ ਕਉ ਮਾਰਤੋ ਮਯੰਕ ਹਾਂ ਕਿਤੇ ਕਉ ਮਾਰਤੋ ਮਯੰਕ ਕਿਤੇ ਆਪਣੇ ਬਨ ਜਿਹੜਾ ਹੈਗਾ ਉਹਨੂੰ ਜਿੱਤ ਰਹੇ ਹਨ ਕਉ ਪੂਰਨ ਪ੍ਰਜੰਕ ਕਿਤੇ ਪੂਰਾ ਜਤਨ ਕਰ ਰਹੇ ਹਨ ਜਤਨ ਚ ਲੱਗਿਆ ਹਨ ਕਉ ਸੁੱਧਤਾ ਕੀ ਸਾਰ ਹੋ ਕਉ ਸੁੱਧਤਾ ਕੀ ਸਾਰ ਕਿਤੇ ਕਿਤੇ ਲੱਗਿਆ ਹੋਇਆ ਕਿਤੇ ਕਾਮਯਾਬ ਹੋ ਗਿਆ ਇਹਦੇ ਪੁੱਠੇ ਭਗਤੀਆਂ ਚ ਦੂਜੀਆਂ ਭਗਤੀਆਂ ਵੀ ਜਤਨ ਵਾਲੀ ਭਗਤੀ ਜਿਹੜੀ ਆ ਉਹ ਕੁਰਬਾਨੀ ਨੇ ਹੁਣ ਮਿਲਦੀ ਕਿਤੇ ਸ਼ੁੱਧਤਾ ਕੇ ਸਾਰ ਹੋ ਕਿਤੇ ਸ਼ੁੱਧਤਾ ਜਿਹੜੀ ਹੈ ਨਾ ਸ਼ੁੱਧ ਕਿਵੇਂ ਕਰਨਾ ਇਹ ਸਭ ਹੈ ਸੋਧਤਾ ਦੀ ਸਮਝ ਹੈ ਕਿਤੇ ਸ਼ੁੱਧਤਾ ਦੀ ਸਮਝ ਦੇ ਰਹੇ ਕਿਤੇ ਸ਼ੁੱਧਤਾ ਦਾ ਪਤਾ ਹੀ ਨਹੀਂ ਜਤਨ ਕਰ ਲੈ ਜਲਤਾਰੇ ਕਰ ਰਹੇ ਹਨ ਤੀਰਥ ਯਾਤਰਾ ਕਰ ਰਹੇ ਹਨ ਕਹੂੰ ਦੇਵ ਧਰਮ ਕਹੂੰ ਸਾਧਨਾ ਕੇ ਹਰਮ ਕਿਤੇ ਦੇਵ ਧਰਮ ਦੇਵਤਿਆਂ ਨਾਲ ਦਾ ਧਰਮ ਦੇਵਤਿਆਂ ਨਾਲ ਦਾ ਕਿਤੇ ਸਾਧਨਾ ਕੇ ਹਰਮ ਕਿਤੇ ਸਾਧਨਾ ਦੇ ਪਾਸੇ ਪਿਆ ਜਿਵੇਂ ਸ਼ਿਵ ਜੀ ਵਾਲਾ ਧਰਮ ਸਾਧਨਾ ਦਾ ਧਰਮ ਸਾਧਨਾ ਕੇ ਹਰਮ ਹਾਂ ਕਹੂੰ ਸਹਾਰ ਬਣ ਬਨਹਰਿਆ ਹੋਇਆ ਸਾਧਨਾ ਜੇ ਮਾਨਹਰਿਆ ਹੋਇਆ ਉਹ ਭਲੇਖੇ ਨਾਲ ਸਾਧਨਾ ਕਰ ਰਿਹਾ ਮਤਲਬ ਤਾਂ ਇਹ ਹੈ ਹੈ ਸਾਧਨਾ ਦਾ ਪਰ ਸਾਧਨਾ 'ਚ ਲੱਗਿਆ ਹੋਇਆ ਭਲੇਖੇ 'ਚ ਸਾਧਨਾ 'ਚ ਪ੍ਰਾਪਤ ਕੁਝ ਨਹੀਂ ਪਰ ਫੇਰ ਵੀ ਲੱਗਿਆ ਹੋਇਆ ਕਹੂੰ ਕੁਤ ਸਤ ਕੋ ਕਰਮ ਕਹੂੰ ਕੁਤ ਸਤ ਕੋ ਕਰਮ ਕੁਤ ਸਤ ਕੋ ਕਰਮ ਕਹੂੰ ਧਰਮ ਕੇ ਪ੍ਰਕਾਰ ਸਤ ਕਰਮ ਹੁੰਦਾ ਸੱਚ ਤੋਂ ਪਰੇ ਸੱਚ ਤੋਂ ਉਹ ਡਾਇਨ ਕੁ ਸੱਤ ਜਿਹਨੂੰ ਕੁਸੱਤ ਕੇ ਸੱਚ ਵੀ ਤਾਂ ਆਪਣੇ ਆਪਣੇ ਡੈਫੀਨੇਸ਼ਨ ਨੇ ਕੁ ਕਰਮ ਉਹ ਕੋ ਕਰਮ ਨੇ ਸਤ ਰਵ ਨੇ ਨੋਤੇ ਕਿਲੇ ਜ਼ੁਲਮ ਹੋ ਰਿਹਾ ਨੇ ਪਾਪ ਹੋ ਰਿਹਾ ਨੇ ਉਹ ਕੁਤ ਸੱਤ ਕੋ ਕਰਮ ਨੇ ਤਾਨੂੰ ਦੇ ਰੋਤੇ ਤਰਮ ਦੇ ਨਾਤੇ ਬਹੁਤ ਕੁਝ ਹੋ ਰਿਹਾ ਧਰਮ ਦੇ ਨਾਤੇ ਲੋਕਾਂ ਨੂੰ ਲੋਕਾਂ ਨੂੰ ਪੁੱਠੇਰਾ ਪਾਉਣਾ ਇਹ ਕੁਤ ਸਤ ਕੋ ਕਰਮ ਸੱਚ ਨੂੰ ਛੱਡ ਕੇ ਸੱਚ ਨੂੰ ਪਤਾ ਲੱਗੇ ਦੇ ਬਾਅਦ ਵੀ ਉਹੀ ਕੰਮ ਕਰੀ ਦੱਸੀ ਜਾਣਾ ਲੋਕਾਂ ਨੂੰ ਫਸਾਈ ਜਾਣਾ ਜਮ ਜਾਲ ਚ ਇਹ ਕੁ ਹੈ ਬਹੁਤ بڑا ਕੁਤ ਸਤ ਕਰਮ ਹੈ ਕਹੋ ਧਰਮ ਕੇ ਪ੍ਰਕਾਰ ਹੋ ਕਹੋ ਧਰਮ ਕੇ ਪ੍ਰਕਾਰ ਕਿਤੇ ਅਸਲੀ ਧਰਮ ਦਾ ਪ੍ਰਕਾਰ ਅਸਲੀ ਧਰਮ ਦੀ ਅਨੁਸਾਰ ਸਿੱਖਿਆ ਦੇ ਰਹੇ ਹਨ ਅਸਲੀ ਧਰਮ ਦੇ ਅਨੁਸਾਰ ਸਿੱਖਿਆ ਦੇ ਰਹੇ ਹਨ ਕਿਤੇ ਨਕਲੀ ਧਰਮ ਜਾਣਬੁੱਝ ਕੇ ਫੈਲਾ ਰਹੇ ਸੱਚੇ ਧਰਮ ਦੇ ਮੁਕਾਬਲੇ ਜਿ ਨਕਲੀ ਧਰਮ ਜਾਣਬੁੱਝ ਕੇ ਫੈਲਾ ਰਹੇ ਉਹ ਕੁਝ ਸਤ ਕੋ ਕਰਮ ਦੇਖਣ ਵਾਲੋਂ ਧਰਮ ਹੈ ਕੁਕਰਮ